ਕੇਆਰਪੀ ਰੇਡੀਓ 1550 ਏਐਮ ਤੇ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਦਿਲ 11:13 ਹੋਏ ਨੇ 23 ਜਨਵਰੀ ਦਾ ਦਿਨ ਹੈ ਬਰਾ 2017 ਦਾ ਸੋਮਵਾਰ 10 ਮਾਗ ਨਾਨਕਸ਼ਹੀ ਸਮਤ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਲੋਕ ਸਭਾ ਦੇ ਵਿੱਚ ਅਮਕ ਸਾंबा ਗੱਲਬਾਤਾਂ ਕੀ ਸੰਗੀਤ ਸੁਰਗ ਦੇ ਮਸਲੇ ਤੇ ਗੱਲਬਾਤ ਹੋਣੀ ਹੈ ਪਹਿਲੇ ਹਿੱਸੇ ਦੇ ਵਿੱਚ ਖਬਰਾਂ ਤੁਹਾਡੇ ਸਾਹਮਣੇ ਕਰਦਾ ਹਾਂ ਤੋਂ 1 ਵਜੇ ਤੱਕ ਪੰਜਾਬ ਦੇ ਪਾਣੀਆਂ ਦੇ ਰੁਟ ਖਸੁੱਟ ਬਾਰੇ ਦੂਜੀ ਕੜੀ ਜਿਸ ਦੇ ਵਿੱਚ ਸੱਜ ਸ੍ਰਿੰਦਰ ਸਿੰਘ ਸੁਨੀਲ ਸ਼ਰਮਾ ਜੀ ਤੁਹਾਡੇ ਸੰਮਖੋਂਗੇ ਸਿੰਘ ਪੰਜਾਬ ਦੇ ਪਾਣੀਆਂ ਦੀ ਗੱਲਬਾਤ ਹੋਵੇਗੀ 1 ਤੋਂ 2 ਵਜੇ ਤੱਕ ਰਿਟਾਇਰਮੈਂਟ ਦੀ ਉਮਰ ਦੇ ਬਾਰੇ ਕੋਈ ਇਨਕਸ਼ਾਫ ਹੋ ਰਿਹਾ ਨਵੇਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਹੋਣਾ ਹੈ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਹਰ ਇੱਕ ਦੀ ਜ਼ਿੰਦਗੀ ਦੇ ਪਰ ਫੇਰ ਵੀ ਜਦ ਕੋਸ਼ਿਸ਼ ਕੀਤੀ ਜਾਵੇ ਤਾਂ ਕੋਈ ਹੀਲਾ ਹੋ ਸਕਦਾ ਤੁਸੀਂ ਸ਼ਾਮਲ ਹੋਣਾ 1843 247 1550 1844 2471550 ਉਹ ਨੰਬਰ ਹੈ arp radio.com ਤੇ ਸਿੱਧਾ ਪ੍ਰਸਾਰਣ ਚੱਲਦਾ ਨਾਲੇ ਨਾਲ arp radio.com ਤੇ ਨਾਲ ਹੀ ਐਪ ਡਾਊਨਲੋਡ ਕਰਕੇ ਸਿੱਧਾ ਪ੍ਰਸਾਰਣ ਜੇ ਗੱਲ ਨਾ ਬਣੇ ਤਾਂ ਲੋਕ ਸਾਥ LOKSATEH ਇਹ ਸੇਵਾਵਾਂ ਸਾਰੇ ਤੁਹਾਡੇ ਲਈ ਸੁਰੱਖਿਅਤ ਨੇ ਤੇ ਤੁਸੀਂ ਇਸਨੂੰ ਬਾਅਦ 'ਚ ਵੀ ਸੁਣ ਸਕਦੇ ਹੋ ਬਾਅਦ 'ਚ ਜਦ ਵੀ ਸਮਾਂ ਮਿਲੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਜਦ ਗੱਲ ਕਰਨੀ ਹੈ ਔਨ ਲਾਈਨ ਮੈਨੇਜਰ ਸਾਹਿਬਾ ਨਾਲ ਗੱਲਬਾਤ ਕਰਨੀ ਹੈ ਤਾਂ 604 440 6462 ਨਿੰਮੀ ਡੋਲਾ ਜੀ ਇਨਫੋ ਐਟ ਕੇਆਪੀਆ ਰੇਡੀਓ ਡਾਟ ਕਾਮ ਉਹਨਾਂ ਦੀ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਸੋਖਸਲੇ ਹੱਕ ਕਰਦੇ ਹੋ ਕੋਈ ਮਸ਼ਵਰਾ ਕਰਦੇ ਹੋ harjeet.g@skrpioradiio.com ਇਹ ਈਮੇਲ ਹੈ ਜਿੱਥੇ ਤੁਸੀਂ ਈਮੇਲ ਕਰ ਸਕਦੇ ਹੋ ਕੱਲ ਦਾ ਪ੍ਰੋਗਰਾਮ ਹੈ ਕਿ 1 ਤੋਂ 2 ਵਜੇ ਬਹੁਤ ਖਾਸ ਪ੍ਰੋਗਰਾਮ ਹੋਣਾ ਹੈ ਤੁਹਾਨੂੰ ਯਾਦ ਹੋਣਾ ਪ੍ਰਜਿਤ ਕਾਂਥ ਇੱਕ ਅੰਟੈਰੀਓ ਦੇ ਵਿੱਚ ਟਾਂਟੋ ਦੇ ਵਿੱਚ ਰਹਿੰਦੀ ਇਸ ਲੜਕੀ ਨੇ ਛੋਟੀ ਉਮਰ ਦੇ ਵੱਡੀਆਂ ਮੱਲਾਂ ਮਾਰੀਆਂ ਪਾਣੀਆਂ ਤੇ ਰਿਸਰਚ ਕੀਤੀ ਉੱਥੇ ਪੜ੍ਹਾਈ ਕੀਤੀ ਇੱਕ ਬਹੁਤ ਵੱਡਾ ਕੈਂਪ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਾਉਣ ਜਾ ਰਹੇ ਨੇ ਉਸ ਪਿੰਡ ਦੇ ਵਿੱਚ ਬਚੇ ਅਪਾਹਜ ਜਮ ਰਹੇ ਨੇ ਬਹੁਤ ਮੰਦਬੁੱਧੀ ਜਮ ਰਹੇ ਨੇ ਉਸ ਦੇ ਬਾਰੇ ਕਲ ਜਾਣਕਾਰੀ ਏਕ ਤੋਂ ਦੋ ਵਿੱਚ ਇੱਕ ਕੌਰ ਕੈਂਥ ਦੇਣਗੇ ਮੈਕਮੈਸਟਰ ਦੇ ਕੁਝ ਡਾਕਟਰ ਨੇ ਜਿਹੜੇ ਉਹ ਦੇ ਨਾਲ ਹੁਣ ਜਾ ਰਹੇ ਨੇ ਇਹ ਵਧੀਆ ਤੇ ਵੱਖਰੂ ਯੂਨੀਵਰਸਿਟੀ ਤੋਂ ਵੀ ਵੀ ਕੁਝ ਡਾਕਟਰ ਇਸ ਦੇ ਨਾਲ ਨੇ ਬਹੁਤ ਜ਼ਿਆਦਾ ਛੋਟੀ ਉਮਰ ਵੱਡੀਆਂ ਪਲੰਘਾਂ ਇਸ ਲੜਕੀ ਨੇ ਪੱਟੀਆਂ ਪਿਛਲੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਨੂੰ ਸਪான்ਸਰ ਕੀਤਾ ਕੁਝ ਹੁਣ ਫਿਰ ਕੱਲ ਨੂੰ ਕੁਝ ਪ੍ਰੋਜੈਕਟ ਦੇ ਬਾਰੇ ਦੱਸਣਗੇ ਕਿੰਨਾ ਉਹਦਾ ਖਰਚਾ ਕਿਸ ਤਰ੍ਹਾਂ ਹੈ ਪਟਿਆਲੇ ਦੇ ਨੇੜੇ ਕੋਈ ਪਿੰਡ ਹੈ ਖਰਿਆਲੇ ਤੇ ਪੰਜਾਬ ਦੇ ਬਾਰਡਰ ਤੇ ਆ ਨਾ ਤਾਂ ਹਰਿਆਣੇ ਵਾਲੇ ਮਾਫਰਦੇ ਨੇ ਪੰਜਾਬ ਵਾਲੇ ਫਰਦੇ ਆ ਪੰਜਾਬ ਵਾਲੇ ਤਾਂ ਫਿਰ ਸੇਵਾ ਬਹੁਤ ਕਰ ਰਹੇ ਨੇ ਨਾ ਕਰਕੇ ਉਧਰ ਨਿਗਾਹ ਰਾਜੇ ਦਾ ਏਰੀਆ ਰਾਜੇ ਦਾ ਹੀ ਪਰਜਾ ਹੈ ਜਿਹੜੀ ਉਹ ਰਾਜੇ ਦਾ ਏਰੀਆ ਪਟਿਆਲੇ ਵਾਲੇ ਦਾ ਬੇਲ ਨਾ ਮਿਲਦਾ ਪਹਿਲਾਂ ਤੋਂ ਕੰਮਕਾਰ ਬਹੁਤ ਹੈ ਬਜ਼ੁਰਗਾਂ ਦਾਦਿਆਂ ਤੋਂ ਲੈ ਕੇ ਹੁਣ ਤੱਕ ਹੁਣ ਥੋੜਾ ਜਿਹਾ ਕੁਛ ਨਰਮ ਹੁੰਦਾ ਉਮਰ ਦੇ ਹਿਸਾਬ ਦੇ ਨਾਲ ਪਰ ਫਿਰ ਵੀ ਪੰਜਾਬ ਦੀ ਦਾਸਤਾ ਜਿਹੜੀ ਹਲੇ ਤੱਕ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਉਹਨਾਂ ਦਾ ਕੀ ਉਜੜ ਰਿਹਾ ਪਾਣੀ ਮੁੱਕ ਜਾਣਾ ਤੇ ਥੇ ਬਣ ਜਾਣੀ ਮੰਨਣ ਨੂੰ ਕੋਈ ਤਿਆਰ ਨਹੀਂ ਉਹਨਾਂ ਚਾਰ ਭੁੱਖੀਆਂ ਲਈ ਦੀਆਂ ਯਾਰ ਉਹਦੇ ਬਾਅਦ ਅੱਧੀ ਬਾਲਟੀ ਭਰਦੇ ਤੁਸੀਂ ਕਹਿੰਦੇ ਪਾਣੀ ਮੁੱਕਦਾ ਪਰ ਇਹੋ ਨਹੀਂ ਪਤਾ ਵੀ 60 ਫੁੱਟ ਤੇ ਜਿਹੜਾ ਪਹਿਲਾ ਪਾਣੀ ਪਿੰਡ ਘਰ ਦੇ ਨਾਲੇ ਤੋਂ ਨਿਕਲਦਾ ਸੀ ਹੁਣ 350 ਫੁੱਟ ਤੇ ਉਹ ਨਹੀਂ ਪਤਾ ਹੈ 1847 247 1550 ਲੋਕ ਸਾਡੇ ਪੰਜਾਬ ਦੀ ਬਾਤ ਪੈਂਦੀ ਹੈ ਉਂਝ ਤਾ ਉਹ ਲਿਸ਼ਕਦੀ ਸ਼ਮਸ਼ੀਰ ਸੀ ਪਿਆਰ ਵਿੱਚ ਪਿਗੜੀ ਤਾਂ ਇੱਕਦਮ ਨੀਰ ਸੀ ਉੰਜ ਤਾਂ ਉਹ ਲਿਸ਼ਕ ਦੀ ਸ਼ਮਸ਼ੀਰ ਸੀ ਪਿਆਰ ਵਿੱਚ ਪਿਘਲੀ ਤਾਂ ਇੱਕ ਦਮ ਨੀਰ ਸੀ ਮੇਰੇ ਸੀਨੇ ਲੱਗ ਕੇ ਚਸ਼ਮਾ ਬਣ ਗਿਆ ਚੱਲਿਆ ਤਾਂ ਉਹ ਕਮਾਨੋਂ ਤੀਰ ਸੀ ਤਰਬ ਕੇ ਉੱਠਿਆ ਮੇਰੇ ਪਹਿਲੂ 'ਚ ਉਹ ਦਾ ਜਿਵੇਂ ਰਾਹਗੀਰ ਸੀ ਲਫ਼ਜ਼ ਤੇ ਸੰਗੀਤ ਕੁਝ ਐਉਂ ਖੁੱਲ ਗਏ ਗੀਤ ਜੋ ਰੰਝਾ ਤੇ ਤਨਹੀਰ ਸੀ ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ ਟੜਪਿਆ ਉਹ ਜਿਵੇਂ ਕੋਈ ਰਿਸ਼ਮ ਨਹੀਂ ਸੀ ਤੀਰ ਸੀ ਉਹ ਜਿਵੇਂ ਕੋਈ ਰਿਸ਼ਮ ਨਹੀਂ ਸੀ ਤੀਰ ਸੀ ਸਰਜੀਤ ਪਾਤਲਪੁਰ ਜੀ ਧੰਵਾਦ ਤੁਹਾਡਾ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ ਲੋਕ ਸਭ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਫੇਰ ਇੱਕ ਵਾਰ ਡੋਨਲਡ ਟਰੰਪ ਨੂੰ ਨੀ ਤਾਇ ਹੋ ਚੁੱਕੀ ਹੈ ਇਕੱਠ ਕੋਈ 8 ਲੱਖ ਤੇ ਕੋਈ 9 ਲੱਖ ਕਹਿੰਦਾ ਪਰ 2 ਲੱਖ 2 ਮਿਲੀਅਨ ਤੋਂ ਘੱਟ ਸੀ ਜਿਹੜਾ ਆਵਾਮਾਂ ਦੇ ਵਲੇ ਹੋਇਆ। ਰੋਸ ਮਜਾਰਿਆਂ ਦੇ ਵਿੱਚ ਸ਼ੀਸ਼ੇ ਤੜਕ ਗਏ ਤੇ ਧੂਏ ਦੇ ਬੰਬ ਚਲਾਉਣੇ ਨੇ 70-80 ਬੰਦੇ ਫੜ ਕੇ ਹਵਾਲਾ ਚ ਦੇਤੇ ਤੇ ਵੀਕੈਂਡ ਤੇ ਬੀਬੀਆਂ ਇਕੱਠੀਆਂ ਹੋ ਗਈਆਂ 5 ਲੱਖ ਦੇ ਕਰੀਬ ਔਮਨ ਮਾਰਚ ਦੁਨੀਆ ਦੇ ਵਿੱਚ ਹੋਇਆ। ਇਸਤਰੀਆਂ ਦੇ ਹੱਕਾਂ ਦੀ ਉਹਦੇ ਵਿੱਚ ਗੱਲ ਹੋਈ। ਅੱਜ ਸਰਪੰਚ ਸਾਹਿਬ ਨੇ ਰਾਸ਼ਟਰਪਤੀ ਨੇ ਇਕ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਦਿਨੀ ਦਸਕਤ ਹੋਏ ਸਨ ਯੂ نو ਪ੍ਰਾਸਪੈਸਿਫਿਕ ਪਾਰਟਨਰਸ਼ਿਪ ਕੈਂਡੈਸੀ ਉਹਦਾ ਐਗਜ਼ੈਕਟ ਬਾਰਡਰ ਕਰਕੇ ਕਹਿੰਦਾ ਅਮਰੀਕਾ ਦੇ ਤੋਂ ਬਾਹਰ ਹੈ ਸੋ ਅਮਰੀਕਨ ਸਮਾਨ ਆਪਣੇ ਬੰਨਾਂ ਤੇ ਅਮਰੀਕਾ ਚ ਵਿਕਣਾ ਅਮਰੀਕਾ ਚ ਨੌਕਰੀਆਂ ਇਹ ਸਭ ਤੋਂ ਵੱਡਾ ਏਜੰਡਾ ਹੈ ਗਵਰਨਰ ਦਾ ਇਸ ਕਰਕੇ ਅਮਰੀਕੀ ਲੋਕ ਵੀ ਉਸ ਤੋਂ ਖੁਸ਼ ਨੇ ਇਸੇ ਆਸ ਦੇ ਵਿੱਚ ਲੋਕ ਨੇ ਤੋ ਇਹ ਦੇਸ਼ ਜਿਹੜੇ ਆਸਟ੍ਰੇਲੀਆ, ਬਰੂਨਾਏ, ਕੈਨੇਡਾ, ਚਿਲੀ, ਜਪਾਨ, ਮਲੇਸ਼ੀਆ, ਮੈਕਸੀਕੋ, ਨਿਊਜ਼ੀਲੈਂਡ, ਪਰੂ, ਸਿੰਗਾਪੁਰ ਤੇ ਅਮਰੀਕਾ ਸੀ ਤੇ ਵੀਅਤਨਾਮ ਸੀ। ਅਮਰੀਕਾ ਇਹਦੇ ਵਿੱਚੋਂ ਨਿਕਲ ਗਿਆ 11 ਰਹਿ ਗਏ। ਇਹਦੇ ਵਿੱਚ ਬਹੁਤ ਇਸਤਿਹਾਨ ਅਲੱਗ-ਅਲੱਗ ਮੱਦਾਂ ਸਨ ਜਿਹਦੇ ਵਿੱਚੋਂ ਸਮਾਨ ਜਾਣਾ ਸੀ, ਸਮਾਨ ਵਿਕਣਾ ਸੀ। ਬੜੀਆਂ ਗੱਲਾਂ ਹੋਈਆਂ ਕਿ ਨਿਊਜ਼ੀਲੈਂਡ ਤੋਂ ਸਮਾਨ ਇੱਧਰ ਆਏਗਾ, ਇਧੋਂ ਉੱਧਰ ਜਾਏਗਾ ਇਸ ਤਰ੍ਹਾਂ। ਦੀ ਗੱਲ ਇੱਕ ਖੁੱਲੀ ਵੱਡੀ ਮਾਰਕੀਟ ਹੋਣੀ ਸੀ ਇਹਦੇ ਕਰਕੇ ਅਮਰੀਕਾ ਕਿਉਂਕਿ ਉਹ ਚਾਹੁੰਦਾ ਉਹ ਪਹਿਲਾਂ ਹੀ ਬਹੁਤ ਦੁਖੀ ਹੈ ਤੇ ਮਕਸੀਕੋ ਦਾ ਬਣਿਆ ਸਮਾਨ ਅਮਰੀਕੀਆਂ ਨੌਕਰੀਆਂ ਖੋਹ ਰਿਹਾ ਔਖਾ ਤੇ ਬਣਾਉਣ ਵਾਲਿਆਂ ਨੂੰ ਪਹਿਲਾਂ ਦੇਤੀ ਕਿ ਬਾਰਡਰ ਤੇ ਬਹੁਤ ਵੱਡੀ ਤੁਹਾਡੇ ਤੇ ਟੈਕਸ ਬਹੁਤ ਵੱਡੇ ਲੈਵੀ ਜਿਹੜਾ ਲੱਗਣ ਜਾ ਰਹੀ ਹੈ ਨਹੀਂ ਤਾਂ ਇੱਧਰ ਆ ਜਾਓ ਦੇ ਵਿੱਚ ਤੇ ਮਿਸ਼ੀਗਨ ਦੇ ਏਰੀਆ ਦੇ ਫੈਕਟਰੀਆਂ ਲਾਓ ਆ ਕੇ ਇਹਦੇ ਕਰਕੇ ਉਦੀ ਆਪ ਹੁਦਰੀ ਕੀਤੀ ਲੋਕਾਂ ਦੇ ਪਸੰਦ ਆ ਕਿਹਨੇ ਕੋਈ ਨਾ ਸਕੋਰ ਹੈ ਪਰ ਨੌਕਰੀਆਂ ਨਿਕਲਣਗੀਆਂ ਨਿਕਲਣਗੀਆਂ ਕਿੰਨੀਆਂ ਕਿ ਇਹ ਆਉਣ ਵਾਲਾ ਸਮਾਂ ਹੈ ਮਾਈਕ ਪਿੰਸ ਉਸ ਉਪ ਰਾਸ਼ਟਰਪਤੀ ਹੈ ਸਿਆਣਾ ਬੰਦਾ ਹੈ ਉਹ ਹਰ ਵਕਤ ਨਾਲ ਰਹਿੰਦਾ ਖਰੂਦ ਨਾ ਕਰੇ ਸੀਆਈਏ ਨੂੰ ਕੱਲ ਬਰੀਫਿੰਗ ਹੋ ਰਹੀ ਸੀ ਕਦੇ ਅੱਗੇ ਬਰਾਕ Obama ਬੋਲਦੇ ਤੇ ਜੋ Biden ਆਵਾਮਾ ਵੱਲ ਦੇਖਦਾ ਨਹੀਂ ਵੇਖਿਆ ਹਰ ਵਕਤ ਉਸ ਵੱਲ ਵੇਖਦਾ ਹਰ ਵਕਤ ਉਸ ਵੱਲ ਵੇਖਦਾ ਜੋ Biden ਆਰਾਮ ਨਾਲ ਖੜਾ ਹੁੰਦਾ ਸੀ ਕਿ ਕਿਸ਼ਤੀ ਬਹੁਤ ਵਧੀਆ ਮਲਾਹ ਕੋਲ ਦੋਨੋਂ Trump ਬੋਲਦੇ ਤੇ ਉਪਰਾਸ਼ਟਰਪਤੀ ਸਦਾ ਹੀ ਉਹਦੇ ਵੱਲ ਵੇਖਦਾ ਰਹਿੰਦਾ ਬਖਸ਼ੀ ਬਖਸ਼ੀ ਬਖਸ਼ੀ ਪਤਾ ਨਹੀਂ ਕੀ ਕਹੂਗਾ ਕਿਉਂਕਿ CIA ਦੇ ਹੱਥ ਹੈ ਉਹ ਤੁਹਾਨੂੰ ਪਤਾ ਹੈ CIA ਬਹੁਤ ਤਾਕਤਵਰ ਇੱਕ ਅੰਗ ਅਮਰੀਕਾ ਦਾ ਜਿਹੜਾ ਦੁਨੀਆ ਦੇ ਵਿੱਚ ਇਹਨਾਂ ਦਾ ਨੈਟਵਰਕ ਹੈ ਇਹਦੇ ਆਪਰੇਟਿਵ ਦੁਨੀਆ ਦੇ ਵਿੱਚ ਨੇ ਇਹਦੇ ਥੱਲੇ 12-13 ਹੋਰ ਛੋਟੀਆਂ ਹਬਸ ਨੇ ਜਿਹਦੇ ਤੇ ਬੜੀਆਂ ਫਿਲਮਾਂ ਬਣੀਆਂ ਜਿਸਮ ਬੋਰਨ ਦੀਆਂ ਜਿੰਨੀਆਂ ਫਿਲਮਾਂ ਬਣੀਆਂ CIA ਕਿਵੇਂ ਆਪਰੇਟ ਕਰਦਾ ਹੈ ਇਸ ਦੀ ਗੱਲ ਹੈ ਕੈਨੇਡੀ ਦੇ ਕਤਲ ਦੇ ਸਮੇਂ CIA ਤੇ ਬਹੁਤ ਗੱਲਾਂ ਚੱਲੀਆਂ ਕੇ ਇਹਨਾਂ ਨੂੰ ਪਤਾ ਕਿਵੇਂ ਨਹੀਂ ਸੀ ਹਲੇ ਤੱਕ ਉਹ ਰਾਸ਼ਟਰਪਤੀ ਦਾ ਕਾਤਲ ਨਹੀਂ ਲੱਭਿਆ ਸੀਆਈਏ ਦੀ ਬਰੀਫਿੰਗ ਸੀਆਈਏ ਨਾਲ ਫਸਦੀ ਰਹੀ ਗੱਲ ਤੇ ਕੱਲ ਪੱਤਰਕਾਰਾਂ ਗਿਆ ਗਲਤ ਰਿਪੋਰਟ ਕਰਦੇ ਤੇ ਤੁਸੀਂ ਦੇ ਖੜੇ ਹੈ ਗਲਤ ਤਾਂ ਸੱਚ ਹੈ ਦਿੰਦੈ ਫਰਕ ਹੈ ਰਾਸ਼ਟਰਪਤੀ ਜਿਹੜਾ ਹੁਣ ਆਮ ਸਿਟੀਜ਼ਨ ਹੋ ਗਿਆ ਜਿਸਨੇ ਟਵੀਟ ਆਪਣਾ ਵਾਈਟ ਹਾਊਸ ਤੋਂ ਬਦਲ ਕੇ ਬਰਾਕ ਬਾਮਾ ਦਾ ਕਰਤਾ ਆਮ ਸਿਟੀਜ਼ਨ ਹੋ ਕੇ ਹੁਣ ਛੁੱਟੀਆਂ ਕੱਟਦਾ ਫਾਇਦਾ ਆਨੰਦ ਮੰਗਲਾ ਚਾਰ ਸਾਲ ਲਾਜ਼ਮ ਤੇ ਦੁਨੀਆ ਦੇ ਸਭ ਤੋਂ ਵੱਡੀ ਕੁਰਸੀ ਤੇ ਬੈਠ ਕੇ ਹੁਣ ਚੈਰਿਟੀਜ਼ ਹੋਣਗੀਆਂ ਫਾਊਂਡੇਸ਼ਨਸ ਹੋਣਗੀਆਂ ਤੇ ਉਸ ਲਾਇਬ੍ਰੇਰੀ ਬਣਨੀ ਲਾਇਬ੍ਰੇਰੀ ਚ ਕੀ ਹੋਵੇ ਗੱਲਾਂ ਹੋਣਗੀਆਂ ਪ੍ਰਾਕਵਾਮਾ ਨੂੰ ਲੋਕ ਬਹੁਤ ਪਿਆਰ ਕਰਦੇ ਜਾਨ ਤੱਕ 60% 60% ਲੋਕਾਂ ਦੀ ਅਪਰੂਵਲ ਰੇਟ ਸੀ ਜਿਹੜਾ ਬਹੁਤ ਵੱਡੀ ਗੱਲ ਐ ਵੀ ਆਸ ਲੋਕ ਅਟਲੀਸਟ ਅਮਰੀਕਨ ਇਕਨੋਮੀ ਉੱਪਰ ਜਾਏਗੀ ਅਮਰੀਕਾ ਨੂੰ ਨੌਕਰੀਆਂ ਦੇਸ਼ ਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਆਰਥਿਕਤਾ ਉੱਪਰ ਜਾਵੇ ਬਸ ਆਰਥਿਕਤਾ ਜਦ ਵਧੀਆ ਵਾਰੇ ਨਿਆਰੇ ਆ ਸਾਰੇ ਔਰ ਕਈ ਵਾਰ ਸਾਈਕਲੇ ਹੁੰਦਾ ਜਿਵੇਂ ਆਪਣੇ ਸੂਬੇ ਚ ਐਨਡੀਪੀ ਵਿਚਾਰੀ ਉਸ ਸਮੇਂ ਆਉਂਦੇ ਜਦ ਸਾਈਕਲ ਥੱਲੇ ਗਿਆ ਹੁੰਦਾ 6 ਤੇ ਸੂਈ ਹੁੰਦੀ ਹੈ 12 ਤੇ ਜਿਆਦਾ ਆਉਂਦੀ ਹੈ ਜਦੋਂ ਲਿਬਰਲ ਆ ਜਾਂਦੇ ਨੇ ਇਹ ਆਪਣੇ ਨੌ ਕਹਾਣੀ ਕਰਦੇ ਗੋਲਡਨ ਕੈਂਪਲ ਤੇ ਇਕਨੋਮੀ ਦੋ ਚੀਜ਼ਾਂ ਕਿਵੇਂ ਨੇ ਕਹਾਣੀ ਇਸ ਤਰ੍ਹਾਂ ਹੀ ਹੁਣ ਸੂਤ ਆ ਗਈ ਡਸਟਿਕ ਕਲਾਰਕ ਦੇ ਵੀ ਇਕਨੋਮੀ ਇਕਨੋਮੀ ਇਕਨੋਮੀ ਦੀ ਗੱਲ ਅਗਲੀ ਜਿਹੜੀ ਇਲੈਕਸ਼ਨ ਮਈ ਦੇ ਵਿੱਚ ਕੇ ਇਲੈਕਸ਼ਨ ਲੜੀ ਜਾਣੀ ਹੈ ਦੇਖਿਓ ਅਪ੍ਰੈਲ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਟਾਈਵਰੇ ਕਰ ਲਿਓ ਫੋਕਸ ਇਸ ਅਪ੍ਰੈਲ ਦੇ ਨਗਰ ਕੀਰਤਨਾ ਚ ਵਧੀਆ ਸੂਟ ਪਾ ਕੇ ਆਉਣਗੇ ਸਾਰੇ ਵਪਾਰਕ ਸੰਦੇਸ਼ 11:30 ਹੋਇਆ ਜੀ ਮੌਸਮ ਬਹੁਤ ਵੜਿਆ ਤੇ ਪੂਰੀ ਸੂਰਜ ਨਿਕਲਿਆ ਠੰਡ ਹੈ ਤੇ ਦਿਨ ਤੱਕ 7-8 ਦੇ ਚਲੇ ਜਾਣਾ ਰਾਤ ਠੰਡੀ ਹੈ ਅਲਬਰਟਾ ਦੇ ਵਿੱਚ ਤੇ ਮੈਂਟਨ ਦੇ ਵਿੱਚ ਪਾਣੀ ਜਿੱਥੇ ਸੀ ਖੜਾ ਉੱਥੇ ਜੰਮ ਗਿਆ ਚਿੱਟੀ ਚਾਦਰ ਵਿਸ਼ੀਵੀਆ ਸਾਰੇ ਐ ਦੇ ਵਿੱਚ ਕੈਲਗਰੀ ਵੀ ਇਸ ਵਾਰ ਨਿਊਫੰ ਲੈਂਡ ਦੇ ਵਿੱਚ ਤੇ ਲੈਬਰਾਡੋਰ ਦੇ ਵਿੱਚ ਤਾਂਕਾਂ ਲੱਗੀਆਂ ਪਈਆਂ ਬਰਫ਼ ਦੀਆਂ ਤਾਂਕਾਂ ਗੱਡੀਆਂ ਜਿਹੜੀਆਂ ਉਹ ਦੱਬੀਆਂ ਪਈਆਂ ਥੱਲੇ ਬਿਲਕੁਲ ਬਰਸ ਗਈ। ਧੰਨਵਾਦ ਜੀ ਤੁਸੀਂ ਅ ਪਿਛਲੇ ਦਿਨੀ ਬਲਰਾਜ ਸਿੰਘ ਨੂੰ ਬਹੁਤ ਅਸੀਸਾਂ ਦਿੱਤੀਆਂ ਜਿਉਂਦੇ ਵਸਦੇ ਰਹੋ ਸਾਰਿਆਂ ਦੇ ਬੱਚੇ ਆਪਣੇ ਸਾਝੇ ਨੇ। ਇੱਕੋ ਇੱਕ ਗੁਰੂੰਦੈਣਾ ਨੂੰ ਕਰਨਾ ਕਿ ਆਪਣੇ ਵੱਲੋਂ ਆਪਾਂ ਅਗਲੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਧਰਮ ਤੇ ਕੌਮ ਦੇ ਨਾਲ ਜੋੜ ਕੇ ਜਾਈਏ ਜਦ ਆਪਾਂ ਅੱਖਾਂ ਵਿੱਚ ਇਹ ਗੱਲ ਪੱਕੀ ਹੋਵੇ ਕੇ ਉਹਨਾਂ ਨੂੰ ਧਰਮ ਦੇ ਬਾਰੇ ਪਤਾ ਹੋਵੇ ਤੇ ਆਪਣੇ ਸੱਭਿਆਚਾਰ ਦੇ ਬਾਰੇ ਪਤਾ ਹੋਵੇ ਆਪਣੇ ਦਾਦ ਕਿਤੇ ਦਾ ਪਤਾ ਹੋਵੇ ਜਿੱਥੇ ਉਹ ਜਾ ਸਕਣ ਅਗਲੀ ਪੀੜ੍ਹੀ ਨੂੰ ਲੈ ਕੇ ਇਹ ਬਹੁਤ ਪਰਮ ਮਿੱਤਰ ਨਿਸਰ ਬਹਾਦਰ ਸਿੰਘ ਸੰਘਾ ਮੇਰੇ ਉਹਨਾਂ ਦੇ بیٹے ਸਾਹਿਬ ਸਿੰਘ ਸੰਘਾ ਦਾ ਜਨਮ ਹੋਇਆ ਜਿੱਥੇ ਸਾਬਹ ਬਹਾਦਰ ਸਿੰਘ ਉਹਨਾਂ ਨੂੰ ਵਧਾਈਆਂ ਤੇ ਸਰਦਾਰ ਨਿਵੇਂਦਰ ਕੌਰ ਨੂੰ ਵਧਾਈਆਂ ਨੇ ਤੇ ਬਹੁਤ ਬਾਰ ਮੈਂ ਗੱਲ ਸਰਦਾਰ ਈਸ਼ਰ ਸਿੰਘ ਨੈਣਵਾ ਪ੍ਰਣਾਮ ਵਿਕਟੋਰੀਆ ਕ੍ਰਾਸ ਪਹਿਲੇ ਸਿੱਖ ਸਰਦਾਰ ਜਿਹਨਾਂ ਨੇ ਵਹਿਜਾ ਵਹਿਜਾ ਕਰਾਈ ਸਦਕੇ ਸਤਕਾਰ ਇੰਗਲੈਂਡ ਦੇ ਵਿੱਚ ਦਿੱਤਾ ਗਿਆ ਉਹਦਾ ਉਹਨਾਂ ਦਾ ਏ ਤੇ ਸੰਘਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਹੋਣ ਸਾਹਿਬ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਹੇ ਗੁੱਡ ਲੁਕਿੰਗ 11:32 ਮਿੰਟ ਹੋਏ ਐ ਖਬਰਾਂ ਵੱਲੋਂ ਫੇਰ ਮੁੜਾਂ ਕਈ ਵਾਰ ਘਰ ਦਾ ਨਾ ਇਲਾਜ ਆਪਾਂ ਕਰਨ ਲੱਗ ਜੰਨੇ ਆ ਔਰ ਇਸ ਦੇਸ਼ ਦੇ ਵਿੱਚ ਬਹੁਤ ਪੰਗਾ ਇੱਥੇ ਬੜੀ ਫਾਈਨ ਲਾਈਨ ਹੈ ਜਦ ਇੱਥੇ ਕਿੜਕੀ ਅੜਗੀ ਨਾ ਇੱਕ ਵਾਰ ਕੁੰਡੀ ਪੈ ਗਈ ਫੇਰ ਬਹੁਤ ਔਖਾ ਲੰਘ ਜੇ ਹਾਥੀ ਲੰਘ ਜਾਣ ਇੱਕ ਨਹੀਂ ਚਾਹੇ ਸੈਂਕੜਿਆਂ ਚ ਲੰਘ ਜਾਣ ਜੇ ਕਿਤੇ ਪੂਛ ਫਸ ਗਈ ਫਿਰ ਜਿਹੜੇ 99 ਲੰਘੇ ਆ ਨਾ ਉਧਰ ਨੂੰ ਜਾਂਦੇ ਆ ਪੂਛ ਨੂੰ ਛੱਡ ਦਿੰਦੇ ਜਿਵੇਂ ਦੋ ਭਾਈ ਪਿੰਡਾਂ 'ਚ ਲੜਦੇ ਆਨੂੰ ਤੂੰ ਤੂੰ ਮੈਂ ਨਾ ਆ ਕਹੇ ਯਾਰ ਹਟੋ ਕਹਿੰਦੇ ਵੀ ਤੂੰ ਬਾਹਰਲਾ ਕੌਣ ਐ ਪਹਿਲਾਂ ਆ ਤੂੰ ਸਾਡੇ ਘਰੇ ਕਿਵੇਂ ਵੜਿਆ ਆ ਕੇ ਬਹਾਨੇ ਤੇਰਾ ਕੀ ਮਤਲਬ ਦਾ ਬਹੁਤ ਖਰੂਦੀ ਟੱਬਰ ਸੀ ਸਾਡੇ ਪਿੰਡ ਇੱਕ 4-5 ਭਾਈ ਸੀ ਉਹ ਬਹੁਤ ਖੜਕਦੀ ਉਹਨਾਂ ਦੀ ਲਲ ਲਲ ਕਰਕੇ ਜਿਉਂ ਇੱਕ ਦੂਜੇ ਦੇ ਪਿੱਛੇ ਪੈਂਦੇ ਜੇ ਕੋਈ ਬਾਹਰਲਾ ਆਵੇ 'ਚ ਵੜ ਜਾਏ ਉਹ ਲੜੋ ਯਾਰ ਜਿਹਨੇ ਛੇ-ਸੱਤ ਹੁੰਦੇ ਜਿਹੜਾ ਬਾਹਰ ਲਾਇਆ ਜਾਂਦਾ ਉਹਨੂੰ ਖਖਰੀਆ ਕਰੇਲੇ ਕਰਦੇ ਬਹੁਤ ਔਖਾ ਬਹੁਤ ਔਖਾ ਨੇ ਫਿਰ ਸੈੱਟ ਕਰਤਾ ਵੀ ਇਹ 100 ਮੀਟਰ ਦੇ ਘੇਰੇ 'ਚ ਨਹੀਂ ਬੋਲਣਾ ਇਹ ਲੜੀ ਜੜ ਕੋਠੇ ਚੜ ਜਾਣ ਥੱਲੇ ਬਹਿ ਜਾਣ ਮੰਝੀਆਂ ਢਾਕੇ ਰੋਟੀਆਂ ਖਾਂਦੇ ਹੁੰਦੇ ਸੀ ਚੰਗੀਆਂ ਰੋਟੀ ਖਾਂਦੇ ਖਾਂਦੇ ਹੀ ਵਿਗੜ ਜਾਣ ਪਾਣੀ ਦੇ ਗਲਾਸ ਤੋਂ ਦਾਲ ਦੀ ਕੋਲੀ ਪਿੱਛੋਂ ਦੋ ਛੜੇ ਸੀ ਉਹਨਾਂ 'ਚੋਂ ਉਹਨਾਂ ਨੇ ਰੋਲਾ ਪਾੜਨ ਦੇ ਸੀ ਕਿਉਂ ਮੈਨੂੰ ਨਹੀਂ ਪਾਇਆ ਕਹ ਵਾਲਿਆਂ ਨੂੰ ਡਬਲ ਪਾਉਣੀ ਐ ਐਨੀ ਗੱਲ ਗੱਲ ਤੇਰਾ ਰੋਲਾ ਪਾ ਬਹੁਤ ਵਿਗੜਿਆ ਟੱਬਾ ਵੀ ਬੜਾ ਲਾਣਾ ਸੀ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਣਾ ਚੁਗਲੀ ਹੋ ਚੁ ਤੇ ਇਸ ਤਰ੍ਹਾਂ ਹੀ ਕਈ ਵਾਰ ਚੀਜ਼ਾਂ ਕਰੇ ਕਰ ਲੈਨੇ ਆਪਾਂ ਤੇ ਮੇਰਾ ਲੌਬੇਟ ਇੱਕ ਨੌ ਦੀ ਇਸਤਰੀ ਹੈ ਕਲਗਰੀ ਦੀ ਉਹਨੇ ਆਪਣੇ 7 ਸਾਲ ਦੇ ਪੁੱਤ ਨੂੰ ਜਿਸ ਨੂੰ ਇਨਫੈਕਸ਼ਨ ਹੋਈ ਸੀ ਦੇਸੀ ਚੀਜ਼ ਕੋਈ ਪੜਾਤੀ ਵੇ ਨਾਮ ਐ ਡਾਕਟਰ ਕੋਲ ਨਹੀਂ ਲਜਾਣਾ ਔਰ ਇਹੇ ਇਸਤਰੀ ਜਨਮ ਦੀ ਇਹਦਾ ਬੱਚਾ ਪੈਦਾ ਹੋਇਆ ਸੀ ਬਰਥ ਸਰਟੀਫਿਕੇਟ ਤੱਕ ਨਹੀਂ ਸੀ ਲਿਆ ਤੇ ਉਸ ਨੂੰ ਦੇਸੀ ਘਰ ਦੀਆਂ ਦਵਾਈਆਂ ਤੇ ਰੱਖਦੀ ਸੀ ਜਿਵੇਂ ਆਪਾਂ ਨੂੰ ਮਾਮਾ ਜਨਮ ਘੁਟੀ ਦੇ ਵਿੱਚ ਛੋਟਿਆਂ ਹੁੰਦਾਂ ਦੰਦੇ ਜੇ ਕੋਈ ਜਵਾਕ ਦੁੱਧ ਨਾ ਚੰਗਣੋਂ ਹਰਦੇ ਉਹਨੂੰ ਰਸੌਂਦ ਲਾ ਦਿੰਦੀਆਂ ਤੇ ਵਿਗੜੇ ਹੋਏ ਮੁੰਡੇ ਰਸੌਂਦ ਵੀ ਕਈ ਵਿੱਚ ਹੀ ਰਸੌਂਦ ਉਹ ਵੀ ਚੂਸ ਜਾਂਦੇ ਵਿੱਚੀ ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਪਿੰਡਾਂ ਦੇ ਵਿੱਚ ਕਿਸੇ ਨੂੰ ਠੰਡ ਲੱਗਣੀ ਉਹਨੂੰ ਮਾਮਾ ਨੇ ਉਂਗਲੀ ਥੋੜੀ ਜੀ ਲਵੇੜ ਕੇ ਜੇ ਥੋੜਾ ਜਿਹਾ ਬੜਾ ਹੋਣਾ ਉਹਨਾਂ ਕਰਾਵੇ ਠੰਡ ਲੱਗੀ ਜਾਂ ਖੰਡ ਲੱਗੀ ਉਹ ਫਿਰ ਫੌਜੀ ਲੱਭੋ ਤਾਂ ਸਰਬਨ ਹੈ ਸਰਬਨ ਤੋਂ ਰੰਬ ਲਿਆਓ ਸੇ ਪੂਰਾ ਘਰ ਤੇ ਚਮਚਾ ਜਵਾਕ ਨੂੰ ਬੋਤਲ ਟੱਬਰ ਦੀ ਬੁੜੀਆਂ ਨੂੰ ਪਤਾ ਹੁੰਦਾ ਸੀ ਵੀ ਜਵਾਕ ਨੂੰ ਤਾਂ ਇਹਦਾ ਪੂਰਾ ਬਾਕੀ ਦਾ ਕੰਮ ਇਹਨਾਂ ਦਾ ਹੀ ਬਚਪਨ ਤੋਂ ਹੀ ਲਾ ਦਿੰਦੇ ਆ ਚੀਜ਼ਾਂ ਤੇ ਇਹ ਆਪਣੇ ਬੱਚੇ ਨੂੰ ਏਹੀ ਕੋਈ ਜਿੰਦਗੀ ਤੇ ਅਛੀਰ ਓ ਦਿਨ ਉਹ ਬਹੁਤ ਜ਼ਿਆਦਾ ਵਧ ਗਈ ਇਨਫੈਕਸ਼ਨ ਤੇ ਬੱਚਾ ਮਰ ਗਿਆ ਹੁਣ ਕੇਸ ਚੱਲ ਰਿਹਾ ਇਸ ਮਾਂ ਤੇ ਕਿ ਆਪਣੇ ਪੁੱਤ ਨੂੰ ਡਾਕਟਰ ਦੇ ਕਿਉਂ ਨਹੀਂ ਲੈ ਕੇ ਗਈ ਆ ਵੇਖ ਲਓ ਦੇਸ਼ ਚ ਆ ਖਿਆਲ ਹੈ ਜੇਸੀ ਇਲਾਜ ਵਧੀਆ ਪਰ ਡਾਕਟਰੀ ਇਲਾਜ ਜਿੱਥੇ ਨੋਂ ਪਤਾ ਲੱਗੇ ਵੀ ਫਲਾਣਾ ਬੰਦਾ ਆਹ ਰੋਗ ਕਰ ਚਾਇਆ ਉਹ ਜ਼ਰੂਰੀ ਹੈ ਚਾਹੇ ਉਈਓ ਗੇੜਾ ਮਾਰ ਕੇ ਆਇਓ ਪਰ ਇਹ ਬਹੁਤ ਜ਼ਰੂਰੀ ਹੈ ਹੁਣ ਕੇਸ ਮਾਂ ਤੇ ਇਹੋ ਜਿਹਾ ਸਮਾਂ ਚੱਲ ਰਿਹਾ ਹੋਗਾ ਵੀ ਤੈਂ ਬੱਚੇ ਦੀ ਕੇਅਰ ਨਹੀਂ ਕੀਤੀ ਤੈਂ ਉਹ ਵੀ ਨੈਸੈਸਿਟੀ ਸੀ ਨੈਸੈਸਰੀਜ਼ ਦੀ ਤੂੰ ਆਪਣੇ ਬੇਟੇ ਰਾਏਨ ਨੂੰ ਸਾਲ ਦੇ ਨੂੰ ਇਹ ਦਿੱਤੀ ਨਹੀਂ 2013 ਚ ਦੀ ਮੌਤ ਹੋ ਮਾਂ ਤੇ ਕੇਸ ਚੱਲਦਾ ਹੈ ਬੇਨੋਮੋਨੀਆ ਹੋਇਆ ਸੀ ਕਿੱਥੇ ਨਹੀਂ ਤੇ ਤੇ ਉਸ ਨੂੰ ਘਰ ਦਾ ਹੀ ਸਮਾਨ ਜਿਹੜਾ ਹੁੰਦਾ ਜਿੱਦਣ ਸਾਰੇ ਆਪਾਂ ਭੱਜੇ ਤੁਰੇ ਫਿਰਦੇ ਹਾਂ ਹੁਣ ਬਈ ਆਰਗੈਨਿਕ ਆਰਗੈਨਿਕ ਆਰਗੈਨਿਕ ਦਾ ਰੌਲਾ ਪੈਂਦਾ ਤੇ ਉਸ ਨੂੰ ਹੁਣ ਪਹਿਲਾਂ ਵੀ ਅਜੇ ਕੇਸ ਹੋਇਆ ਇੱਕ ਜਵਾਕ ਨਾਨਕੇ ਗਿਆ ਪੰਜਾਬ ਗਿਰ ਗਿਆ ਪੌੜੀਆਂ ਤੋਂ ਉਹਦੇ ਰੱਬ ਤੇ ਲੱਗੀ 60 ਜਿਹੜੇ ਇੱਥੇ ਡਾਕਟਰ ਲਗਾਇਆ ਉਹ ਤੁਸੀਂ ਜਵਾਕ ਦੇ ਘਸੁੰਮ ਆ ਜਵਾਕ ਪੁਲਸ ਲੈ ਗਈ ਮਸਾਂ ਮੁੜਿਆ 1.5 ਸਾਲ ਬਾਅਦ ਇਹ ਬਹੁਤ ਔਖਾ ਕੰਮ ਆ ਇੱਥੇ ਚ ਜਿਹੜਾ ਗਿਆ ਉਹ ਫਸ ਗਿਆ ਮਨਕੀਰਤ ਆਲਖ ਦਾ ਇੱਕ ਗੀਤ ਬੁੜਕੇ ਆਉਣਾ ਫਿਰ ਪ੍ਰੋਗਰਾਮ ਤੁਹਾਡੇ ਤੱਕ ਅਜੀਤ ਸਿੰਘ ਹੀਰ 604 500 677 55 ਪਹੁੰਚਾਉਂਦੇ ਨੇ ਫੋਨ ਨੰਬਰ ਹੈ ਅਜੀਤ ਸਿੰਘ ਤੇ ਗਰਦੀਪ ਸਿੰਘ ਹੀਰ ਸੈਂਸਰ ਦੇ ਕਰੀਬ ਕਾਰਾਂ ਸਦਾ ਖੜੀਆਂ ਰਹਿੰਦੀਆਂ ਹੈ ਲਗਦੀ ਕਾਰਾਂ ਕੰਮ ਵਾਲੀਆਂ ਵੈਨਾਂ ਪਿਕਅਪ ਟਰੱਕ ਪਿਕਅਪ ਟਰੱਕਸ ਤੇ ਨਾਲ SUV ਕੁਝ ਵੀ ਲੈਣਾ ਤੁਸੀਂ ਜੇ ਕੋਲ ਨਹੀਂ ਹੈ ਤਾਂ ਲੱਭ ਵੀ ਦੇਣਗੇ ਜਿਵੇਂ ਜੇ ਤੁਹਾਡਾ ਨੰਬਰ ਹੈ ਕਦੇ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਤਾਂ 60458070555 ਤੇ ਗੱਲਬਾਤ ਕਰਦੇ ਜਦੋਂ ਰੂਸ ਵਲੋਂ ਇਨਾ ਚੋਣਾਂ ਦੇ ਵਿੱਚ ਡੈਮੋਕ੍ਰੇਟਸ ਦੇ ਕੰਪਿਊਟਰ ਉੱਤੇ ਹਮਲਾ ਆਇਆ ਉਸ ਸਮੇਂ ਦਾ ਜਿਹੜਾ ਸੂਇਆ ਕੰਮ ਹੈ ਇਸ ਨੇ ਬੜੇ ਪੈਸੇ ਮਿਲ ਰਹੇ ਨੇ ਇੱਕ ਬਹੁਤ ਵੱਡਾ ਆਰਟੀਕਲ ਆ ਛਪਿਆ ਹੈ ਜਿਹੜਾ ਅਸਲ ਵਿੱਚ ਲੀਕਸ ਤੋਂ ਸ਼ੁਰੂ ਹੋਇਆ ਵਿਕੀ ਲੀਕਸ ਯੂਲੀਆ ਸਾਂਜੇ ਇਹਨਾਂ ਕੰਮਾਂ ਦੇ ਜਿਹੜਾ ਵੀ ਉਹ ਕੰਮ ਕਰਦਾ ਚਾਹੇ ਓਪਨਲੀ ਕਹਿੰਦਾ ਨਾ ਪਰ ਜਿਹੜੇ ਦਸਤਾਵੇਜ਼ ਹੁੰਦੇ ਉਸ ਨੂੰ ਛਾਪਣ ਦੇ ਉਹ ਪੈਸੇ ਲੈਂਦਾ ਇਹ ਇੱਕ ਜੌਬ ਹੈ ਇਹ ਇੱਕ ਬਿਜ਼ਨਸ ਹੈ ਸਪਾਈ ਟ੍ਰੇਡ ਇੱਕ ਬਹੁਤ ਵੱਡੀ ਇੰਡਸਟਰੀ ਹੋ ਚੁੱਕੀ ਹੈ ਜਿਹਦੇ ਵਿੱਚ ਬਿਲੀਅਨਸ ਆਫ ਬਿਲੀਅਨਸ ਦਾ ਬਿਜ਼ਨਸ ਹੈ 40% ਦੇ ਕਰੀਬ ਬ੍ਰਿਟਿਸ਼ ਦੀ ਐਮ ਆਈ 6 ਜਿਹੜੀ ਫੋਰਨ ਇੰਟੈਲੀਜੈਂਸ ਸਰਵਿਸ ਹੈ ਉਸਨੇ ਦੇ ਕਰੀਬ ਆਉਣ ਵਾਲੇ ਸਾਲਾਂ 'ਚ ਵਾਅਦਾ ਕਰਨਾ ਤੇ ਅਮਰੀਕਾ ਦੀਆਂ ਜਿੰਨੀਆਂ ਟੋਲ ਆਊ ਜਥੇ ਬੰਦੀਆਂ ਅ ਸੁਈਆਂ ਜਥੇ ਬੰਦੀਆਂ ਉਹਦਾ ਬਿਲੀਅਨ ਇੱਕ ਸਾਲ ਦਾ 70 ਅਰਬ ਬਜਟ ਹੈ। ਇਹ CIA ਦੇ ਤਲੇ 12-13 ਛੋਟੀਆਂ ਹੱਬ ਨੇ। ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਰੂਸ ਦੀ ਉਸ ਤੋਂ ਬਾਅਦ ਇਜ਼ਰਾਈਲ ਦੀ ਮੁਸਾਦ ਹੈ ਬਹੁਤ ਪਾਵਰਫੁਲ ਹੈ। ਇਹ ਵੱਡੀਆਂ ਜਿਹੜੀਆਂ ਤੁਈ ਏਜੰਸੀਆਂ ਦੁਨੀਆ ਚ ਇਹਨਾਂ ਨੇ ਜਾਲ ਨੇ ਦੁਨੀਆ ਚ ਇਹਨਾਂ ਨੇ ਬੰਦੇ ਹਾਇਰ ਕੀਤੇ ਨੇ ਜਿਹੜੇ ਇਹਨਾਂ ਨੂੰ ਸਭ ਕੁਝ ਪਹੁੰਚਾਉਂਦੇ ਕੋਲ ਵੱਖ-ਵੱਖ ਅਲੱਗ-ਅਲੱਗ ਨੈਸ਼ਨੈਲਿਟੀ ਦੇ ਪਾਸਪੋਰਟ ਕੀ ਕੁਛ ਆ ਉਹਨਾਂ ਦੇ ਬੈਂਕਾਂ ਦੇ ਵਿੱਚ ਲਾਕਰਸ ਦੇ ਵਿੱਚ ਉਹਨਾਂ ਨੇ ਨੇ ਪਤਾ ਹੀ ਨਹੀਂ ਜਦੋਂ ਉਹਨਾਂ ਨੂੰ ਟਾਰਗੇਟ ਦੀ ਇਨਫੋਰਮੇਸ਼ਨ ਭੇਜਣੀ ਫੋਟੋ ਭੇਜਣੀ ਆ ਭੇਜਣੀ ਆ ਉਹਨਾਂ ਨੂੰ ਪਤਾ ਕੌਣ ਆ ਇਹ ਸ਼ੂਟ ਕਰਦੇ ਨੇ ਤੇ ਹੋ ਗਏ ਹੋ ਗਏ ਮਸਾਦ ਇਸ ਕੰਮ ਲਈ ਬਹੁਤ زیادہ ਵੱਡੀਆਂ ਸਰਕਾਰਾਂ ਦੇਗੜੀਆਂ ਕਿਵੇਂ ਚਲਾਉਣੀਆਂ ਕਿਵੇਂ ਆਉਣ ਵਾਲੀ ਸਰਕਾਰ ਦਾ ਬੰਦਾ ਕਿਵੇਂ ਤੇ ਅਮਰੀਕਾ ਦਾ ਇਹ ਬਹੁਤ ਵੱਡਾ ਜ਼ੋਰ ਕਿਹੜੇ ਦੇਸ਼ ਦੇ ਵਿੱਚ ਕਿਹੜੀ ਸਰਕਾਰ ਆਈ ਹੈ ਉਹਦੇ ਵਿੱਚ ਬੰਦਾ ਆਪਣਾ ਡਿਸੀਜਨ ਮੇਕਿੰਗ ਸਰਕਲ ਦੇ ਵਿੱਚ ਕੋਈ ਨਾ ਕੋਈ ਬੰਦਾ ਲੱਭ ਲੈਣਾ ਹੈ 10 ਲੱਖ ਮਿਲੀਅਨ ਡਾਲਰ ਦੇ ਦਿੱਤਾ ਬڑے ਪੈਸੇ ਬਣ ਜਾਂਦੇ ਆ 5-7 ਕਰੋੜ ਪਹਾੜ ਦਾ ਬਣ ਜਾਂਦਾ ਔਰ ਦੇਸ਼ਾਂ ਚ ਜਿਹੜੇ ਡਿਵੈਲਪਡਿੰਗ ਕੰਟਰੀ ਨੇ ਉੱਥੇ ਬੰਦੇ ਨੂੰ ਸੇਟ ਕਰਨਾ ਜਿਹੜਾ ਬੜਾ ਸੁੱਖ ਹੈ ਇਹ ਨਮਾ ਹੈ ਜਿਹੜਾ ਵਾਰ ਦੀ ਗੱਲ ਲੁਕੀ ਸੀ ਉਤਨ ਤੋਂ ਬਾਅਦ ਫੇਰ ਇਹ ਸ਼ੁਰੂ ਹੋਈ ਕਿਉਂਕਿ ਚੀਜ਼ ਜਿਹਨ ਟ੍ਰਸਟ ਆ ਲੋਗ ਪਰਸਨਲ ਇਨਫੋਰਮੇਸ਼ਨ ਦੀ ਗੱਲ ਕਰਦੇ ਆ ਕਿ ਰਾਸ਼ਟਰਪਤੀ ਟਰੰਪ ਦੀ ਨਿੱਜੀ ਜ਼ਿੰਦਗੀ ਦੀ ਜਾਣਕਾਰੀ ਬਹੁਤ ਹੈ ਰੂਸ ਦੇ ਕੋਲ ਪਰ ਬਹੁਤ ਲੋਕ ਇਸ ਗੱਲ ਨੂੰ ਕਹਿ ਰਹੇ ਨੇ ਕਿ ਟਰਮ ਜਿਹੜੀ ਹੈ ਉਹ ਤੇ ਚਾਰ ਦੀ ਰਾਸ਼ਟਰਪਤੀ ਨੂੰ ਇੰਪੀਚਮੈਂਟ ਹੋ ਸਕਦੀ ਹੈ ਬੜਾ ਇਹ ਬਹੁਤ ਉੱਚੀਆਂ ਆਪਣੇ ਵਿੱਦ ਤੋਂ ਉੱਪਰ ਨੇ ਇਹਨੇ ਤੇ ਰਹਿਣਾ ਕਿ ਨੂੰ ਆਪਰੇਟ ਕਰਨਾ ਤੇ ਵੱਡੇ ਰਾਸ਼ਟਰਪਤੀ ਕਲਾ ਕੱਖ ਨਹੀਂ ਜਿਹੜੇ ਉਹਦੇ ਹਾਲ ਬੰਦੇ ਨੇ ਉਹਨਾਂ ਦਾ ਬੜਾ ਜ਼ੋਰ। ਤਾਂ ਇਹ ਜਿਹੜੀ ਸਪਾਈ ਟ੍ਰੇਡ ਹੈ ਇਹ ਬੜਾ ਵਧਿਆ ਹੋਇਆ ਤੇ ਇਸ ਦੇ ਲਈ ਹੁਣ ਸ਼ੁਰੂ ਹੋਣੀ ਹੈ। ਪੀਸ ਦੀ ਗੱਲ ਸੀਰੀਆ ਦੀ ਸ਼ਾਂਤੀ ਦੀ ਗੱਲ ਦੀ ਅੱਜ ਪਹਿਲਾ ਦਿਨ ਸ਼ੁਰੂ ਦੇ ਵਿੱਚ 2 ਦਿਨ 23 ਤੇ 24 ਨੂੰ ਚੱਲਣੀ ਹੈ। ਅਸਟਾਨਾ ਜਿਹੜੀ ਉਸਦੀ ਰਾਜਧਾਨੀ ਕਜ਼ਾਕਿਸਤਾਨ ਦੀ ਹੈ ਇਸ ਦੇ ਵਿੱਚ ਅ ਅਮਰੀਕਾ ਤੋਂ ਬਿਨਾ ਅਮਰੀਕਾ ਇਸ ਦੇ ਵਿੱਚ ਨਹੀਂ ਹੈ ਕਿਉਂਕਿ ਨਵੀਂ ਹੁਣੇ ਹੀ ਅ ट्रांजिशन ਹੋਈ ਹੈ ਇਸ ਦੇ ਵਿੱਚ ਜਿਹੜਾ ਇਹਨਾਂ ਦਾ ਅੰਬੈਸਡਰ ਕਜ਼ਾਕਿਸਤਾਨ ਦਾ ਉਹ ਬੈਠੇਗਾ ਤੇ ਦੋਨੇ ਤਰ੍ਹਾਂ ਇਹਦੇ ਵਿੱਚ ਬੈਠ ਰਹੀਆਂ ਨੇ ਦੀ ਰੂਲਿੰਗ ਅਸਾਦ ਦੇ ਬੰਦੇ ਤੇ ਉਧਰੋਂ ਬਾਕੀਆਂ ਦੇ ਬੰਦੇ 4 ਲੱਖ ਬੰਦਿਆਂ ਨੂੰ ਮਰਵਾ ਕੇ ਦੁਨੀਆ ਨੂੰ ਉਤਪਤਲ ਕਰਕੇ ਸਾਰਾ ਦੇਸ਼ ਝਾੜ ਕੇ ਜਿਹੜੀ ਹੁਣ ਟੇਬਲ ਤੇ ਬੈਠਿਓ ਜੇ ਪਹਿਲਾਂ ਹੀ ਤੇ ਸੌਖਾ ਨਾ ਹੁੰਦੀ ਅੱਧਾ ਟੈਂਟਾਂ ਚ ਪਲਦੇ ਆ ਉਹਨਾਂ ਨੇ ਕਿਹੜਾ ਹਾਰਵਰਡ ਤੋਂ ਪੜ੍ਹ ਕੇ ਵਕੀਲ ਬਣਨਾ ਉਹ ਵੀ ਪਛ ਲਾਉਣ ਵਾਲੇ ਜੰਮਣੇ ਆ ਉੱਥੇ ਜਿਹੜੇ ਕਦੇ ਨਹੀਂ ਇਹ ਸੋਚਦੇ ਵੈਸਟਰਨ ਵਰਲਡ ਵਾਲੇ ਵੀ ਜੇ ਤੁਸੀਂ ਸ਼ਾਂਤੀ ਲਿਆਉਣੀ ਆ ਗਰੀਬ ਮੁਲਕਾਂ ਦੇ ਵਿੱਚੋਂ ਜਿੱਥੋਂ ਜਿਹਹਾਦ ਛਿੜਦੇ ਆ ਜਿੱਥੋਂ ਬਾਗੀ ਜੰਮਦੇ ਆ ਉਹਨਾਂ ਨੂੰ ਰੋਟੀ ਪਾਣੀ ਦਓ ਉਹਨਾਂ ਨੂੰ ਸਕੂਲ ਭੇਜੋ ਪਰ ਹੁਣ ਗੱਲ ਇਹ ਹੈ ਕਿ ਜੇ ਓ ਨੀ ਵਿਗੜਦੇ ਤਾਂ ਰੌਲਾ ਨਹੀਂ ਪੈਂਦਾ ਰੌਲਾ ਨਹੀਂ ਪੈਂਦਾ ਤਾਂ ਹਥਿਆਰ ਨਹੀਂ ਵਿਕਦੇ ਪੰਗਾ ਇੱਕ ਹੈ ਪੰਗੇ ਵਾਲੇ ਐ ਸੋ ਇਹਦਾ ਪੰਗਿਆਂ ਕਰਕੇ ਗੜਬੜ ਇਹ ਹੋ ਰਹੀ ਹੈ ਕਿ ਹੁਣ ਜਿਹੜੀਆਂ ਚੰਗੇ ਭਲੇ ਘਰਾਂ ਚ ਰਹਿੰਦੇ ਬੱਚੇ ਟੈਂਟਾਂ ਚ ਪੜ ਰਹੇ ਨੇ ਇੱਕ ਟੈਂਟ ਦੇ ਵਿੱਚ 12-12 ਜੀ ਸੁੱਤੇ ਪਏ ਆ ਤੇ ਉਹਨਾਂ ਦਾ ਭੁੱਖ ਕੀ ਹੈ ਉਥੋਂ ਕੀ ਨਿਕਲ ਉੱਥੋਂ ਉਹ ਮਾੜੇ ਬੰਦਿਆਂ ਦੀ ਫਕਰ ਚਾਉਣਗੇ ਉਹਨਾਂ ਨੂੰ ਸਿਖਾਉਣਗੇ ਲੱਕ ਨਾਲ ਬੰਨ ਕੇ ਬਰੂਦਾ ਬਰੂਦ ਨੂੰ ਭੇਜਣਗੇ ਕਿਤੇ ਦੇਖਿਆ ਹੀ ਅਸੀਂ ਤਲਵਾਨਾਂ ਦੇ ਵਿੱਚ ਜਿਹੜੇ ਸਕੂਲ ਦੇ ਅੱਗੇ ਨਾ ਲੰਘੇ ਜਿਨ੍ਹਾਂ ਨੇ ਮਜ਼ਬੀ ਤਾਲੀਮ ਲੈ ਲਈ ਉਹਨਾਂ ਨੂੰ ਮਰਨ ਨੂੰ ਹੂਰਾਆਂ ਦੀਆਂ ਗੱਲਾਂ ਚੱਲ ਰਹੀਆਂ ਪਿਛਲੇ ਦਿਨੀ ਫੋਟੋ ਇੱਕ ਛੱਪੀ ਸੀ ਉਹ ਕਹਿੰਦਾ ਮੈਂ ਤਾਂ ਛੇਤੀ ਜਾਣਾ ਹੂਰਾ ਅੜੀਕਦੀਆਂ ਮੈਨੂੰ ਚਾਹੇ ਬਹੁਤ ਗੱਲਾਂ ਲਿਬਰਲਿਜ਼ਮ ਦੀਆਂ ਤੇ ਬਹੁਤ ਮੁਸਲਮ ਧਰਮ ਦੇ ਵਿੱਚ ਬਹੁਤ ਪ੍ਰਚਲਿਤ ਦੱਸ ਰਹੇ ਨੇ ਕਿ ਸਾਡੇ ਧਰਮ 'ਚ ਅਸਲ ਕੀ ਆ ਪਰ ਬਹੁਤ ਵੱਡਾ ਗਲਬਾ ਹਲੇ ਆਪਣੇ ਆਪ ਨੂੰ ਮਾਰਨ ਲਈ ਬ੍ਰੇਨ ਵਾਸ਼ ਕਰਕੇ ਵਰਵਾਸ਼ਤਾ ਕਰਨਾ ਜੇ ਹੋਵੇ ਜਦੋਂ ਉਸ ਨੂੰ ਦੱਸਿਆ ਹੀ ਕੁਛ ਨਹੀਂ ਉਹ ਕੁੰਦਰਾਂ ਦੇ ਵਿੱਚ ਸੌਣ ਸੌਂਦੇ ਤੇ ਜੁੱਤੀਆਂ ਚਮੜੀ ਪਾ ਕੇ ਕੁਰਮ ਦੀਆਂ ਤੁਰੇ ਫਿਰਦੇ ਨੇ ਕਹਿੰਦਾ ਚੱਲ ਉੱਪਰ ਇੱਥੇ ਕਾਹਨੂੰ ਮਿੱਟੀ ਘੱਟੇ 'ਚ ਰਹਿਣਾ ਉੱਪਰ ਹੂਰਾ ਢੀਕਦੇ ਕਹਿੰਦਾ ਬੰਨੋ ਲੱਕ ਨਾਲ ਫਿਰ ਫਾਦ ਦਸ ਜੱਫੀ ਕਿੱਥੇ ਪਾਉਣੀ ਹੈ ਇਹ ਹੋ ਰਿਹਾ ਇਦਾਂ ਸ਼ੁਰੂਆਤ ਕਿਹਨੇ ਕਰਨੀ ਹੈ ਤੇ ਫਿਰ ਜੇ ਕਿਤੇ ਸ਼ਾਂਤੀ ਲਈ ਇਹ ਵੱਡੇ ਦੇਸ਼ ਜਾ ਕੇ ਦਖਲ ਅੰਦਾਜ਼ੀ ਕਰਦੇ ਨੇ ਕਿਸੇ ਦੇਸ਼ ਨਾਲ ਜਦੋਂ ਦੇਸ਼ ਉੱਜੜ ਕੇ ਲੋਕ ਘਰਾਂ ਦੇ ਵਿੱਚੋਂ ਟੈਂਟਾਂ 'ਚ ਸੌਂਦੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਫਿਰ ਉਹਨਾਂ ਨੂੰ ਜੇ ਨਾਂ ਸੰਭਿਆ ਸ਼ਾਂਤੀ ਕਦੇ ਨਹੀਂ ਇਹ 'ਚ ਹੋਣੀ ਸ਼ਾਂਤੀ ਹੋਣ ਵੀ ਨਹੀਂ ਦੇਣੀ ਦਿਖਦਾ ਬਹੁਤ ਕੁਛ ਹੈ ਵਪਾਰਕ ਸੰਦੇਸ਼ ਯਾਰਾ ਵਾਕੇ ਪੰਜਾਬ ਮੰਟ ਹੋਇਆ ਜੀ ਇਸ ਤੋ ਅਗਲੀ ਗੱਲ ਜਿਹੜੀ ਹੈ ਹੁਣ NAFTA ਤੇ ਆ ਕੇ ਖੜੀ ਹੈ ਜਿਹੜਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਹੈ ਮੈਕਸੀਕੋ ਕੈਨੇਡਾ ਤੇ ਅਮਰੀਕਾ ਦੇ ਲਈ ਹੁਣ ਇਸ ਦੀਆਂ ਨਮੀਆਂ ਜਿਹੜੇ ਨੇ ਮਦਾਂ ਜਿਹੜੀਆਂ ਨਮੇ ਗੱਲਾਂ ਹੁਣ ਦੁਬਾਰਾ ਚੱਲੇ ਤੁਸੀਂ ਇੱਥੇ ਹੀ ਵੇਖ ਲਿਓ ਹੁਣ ਅਗਲੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਕਰਨੀ ਹੈ ਉਹਨੇ ਕਹਿੰਨਾ ਵੀ ਆਪਜੀ ਰੀਨੇਗੋਸ਼ੀਏਟ ਕਰਨਾ ਇਹ ਅਸੀਂ NAFTA ਨਾਫਤਾ ਦੇ ਰਾਹੀਂ ਪਤਾ ਹੀ ਨਹੀਂ ਕਿੰਨਾ ਬਿਜ਼ਨਸ ਜਿਹੜਾ ਉਹ ਹੋ ਰਿਹਾ ਹੈ ਕਿ ਨਾਫਤਾ ਨੂੰ ਇਹ ਦੁਆਰਾ ਉਹਦੇ ਵਿੱਚ ਕੁਝ ਅਜੇਹਾ ਕੀਤਾ ਜਾਂਦਾ ਜਿਹਦੇ ਵਿੱਚ ਅਮਰੀਕਾ ਨੂੰ ਸੇਫ ਕਰ ਲਈ ਕਿਉਂਕਿ ਜੇ ਦੇਖਦੇ ਹੋ ਤੁਸੀਂ ਸਾਡੀ ਟਰਕਿੰਗ ਇੰਡਸਟਰੀ ਲੰਬਰ ਇੰਡਸਟਰੀ ਪਤਾ ਹੀ ਨਹੀਂ ਕੀ ਕੁਝ ਅਮਰੀਕਾ ਦੇ ਸਿਰ ਤੇ ਅਮਰੀਕਾ ਦੇ ਜਿਹੜੇ ਜਾਇੰਟ ਜਿਹੜੇ ਰਿਟੇਲਰ ਨੇ ਵਾਲਮਾਰਟ ਜਾਂ ਵਰਗੇ ਉਹ ਸਾਡੇ ਸਿਰ ਤੋਂ ਬਿਲੀਅਨਸ ਆਫ ਡਾਲਰ ਕਮਾਉਂਦੇ ਕੈਨੇਡਾ ਵਾਲੇ ਪਾਸੇ ਬਾਲਾ ਤਾਂ ਨਹੀਂ ਹਲਾਉਣਾ ਹੈ ਹਲਾਊਗਾ ਜ਼ਰੂਰ ਥੋੜਾ ਬਹੁਤ ਸੋ ਨੈਸਟਾ ਨੂੰ ਇੰਨੇ ਚਿਰ ਦੀ ਚੱਲੀ ਆ ਰਹੀ ਚੀਜ਼ ਨੂੰ ਜਿਸ ਕਿਸੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਮੈਕਸੀਕੋ ਦੇ ਰਾਸ਼ਟਰਪਤੀ ਕਿਸੇ ਨੇ ਇਸ ਵੀ ਨਹੀਂ ਕੀਤੀ ਸੋ ਇਹੀ ਕਹਾਣੀਆਂ ਕਿ ਪਹਿਲੇ ਰਾਸ਼ਟਰਪਤੀ ਦੀਆਂ ਚੀਜ਼ਾਂ ਜਦ ਅਲੱਦਣ ਤੇ ਤੁਸੀਂ ਆਗੇ ਆਵਾਮਾ ਕੇਅਰ ਚੱਕ ਦੇਣੀ ਡੀਲ ਖਤਮ ਕਰ ਦੇਣੀ ਹੈ ਤੇ ਇਜ਼ਰਾਈਲ ਦੇ ਹੱਕ 'ਚ ਮੈਂ ਗੱਲ ਕਰ ਰਹੇ ਹਾਂ ਜਰੂਸ਼ਲਮ 'ਚ ਅਮਰੀਕਾ ਦੀ ਐਮਬੈਸੀ ਲੈ ਜਾਣੀ ਹੈ ਉਸ ਤੋਂ ਬਾਅਦ ਇਜ਼ਰਾਈਲੀ ਸੈਟਲਮੈਂਟ ਜਿਹੜੀ ਡਿਸਪਿਊਟਡ ਏਰੀਆ ਦੇ ਵਿੱਚ ਉਹ ਘਰ ਧੜਾ ਧੜ ਬਣਾ ਰਹੇ ਨੇ ਐਨ ਪੂਰੇ ਪ੍ਰੋਟੈਕਟ ਕਰਕੇ ਸੀਮੈਂਟ ਦੀਆਂ ਜਿਹੜੀਆਂ ਕੰਕਰੀਟ ਦੀਆਂ ਬਿਲਡਿੰਗਸ ਬਣ ਰਹੀਆਂ ਨੇ ਤੇ ਕੱਲ ਨੂੰ ਜਾਂ ਲਾਈਨ ਖਿੱਚੀ ਜਾਣੀ ਹੈ ਨੇ ਫਲਸਤੀਨ ਨੂੰ ਪੱਖ ਨਹੀਂ ਦੇਣਾ ਤੁਹਾਡੇ ਸਾਹਮਣੇ ਐ ਡਿਸਪਿਊਟ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਕਿਉਂਕਿ ਥੋੜਾ ਥੋੜਾ ਉਹਨਾਂ ਨੂੰ ਜਗ੍ਹਾ ਮਿਲ ਗਈ ਵੈਸਟ ਬੈਂਕ ਦੇ ਵਿੱਚ ਇੱਕ ਬਹਿ ਗਿਆ ਤੇ ਦੂਸਰੇ ਬੰਨੇ ਇੱਕ ਬਹਿ ਗਿਆ ਤੇ ਆਪਣਾ ਫਿੱਟ ਕਰੀ ਬੈਠੇ ਆਮ ਲੋਕ ਉਸੇ ਮਰ ਰਹੇ ਨੇ ਪਰ ਸਰਕਾਰਾਂ ਤਾਂ ਚੱਲ ਰਹੀਆਂ ਨੇ ਮਹਬੂਦ ਆਵਾਸ ਇੱਕ ਬੰਨੇ ਚਲਾ ਰਿਹਾ ਤੇ ਦੂਸਰੇ ਬੰਨੇ ਅਤਵਾਦੀ ਜਥੇਬੰਦੀ ਜਿਸ ਨੂੰ ਕਹਿੰਦੇ ਆ ਉਹ ਚਲਾ ਰਿਹਾ ਰਾਸ਼ਟਰਪਤੀ ਜਿਹੜਾ ਅਮਰੀਕਾ ਦਾ ਹੈ ਉਹ ਵਧੀਆ ਉਸ ਨੇ ਭੂਮਿਕਾ ਪਹਿਲਾਂ ਨਿਭਾਈ ਹੈ ਪਰ ਇਸ ਨੇ ਬਿਲਕੁਲ ਹੁਣ ਤੋਂ ਹੀ ਕਲੀਅਰ ਗੱਲ ਇੱਕ ਤਾਂ ਜਵਾਈ ਹੈ ਜਿਹੜਾ ਉਹ ਯਹੂਦੀ ਹੈ ਤੇ ਉਸ ਤੋਂ ਬਾਅਦ ਹੁਣੇ ਹੀ ਨਤਨੀਆਹੂਨ ਦੇ ਨਾਲ ਗਲਤ ਹੋਈ ਐ ਇਸ ਵੀਕ ਚ ਮਿਲ ਰਹੇ ਨੇ ਇਹ ਮੈਨੂੰ ਨਹੀਂ ਲੱਗਦਾ ਕਿ ਵਰਜੇਗਾ ਇਹ ਇਸਨੇ ਇਜ਼ਰਾਈਲ ਦੀ ਉਦੋਂ ਦੂਜੇ ਬੰਨੇ ਇਹਦੀਆਂ ਫੋਟੋਆਂ ਜਿਹੜੀਆਂ ਨੇ ਉਹ ਸਾੜਨ ਲੱਗੇ ਲੋਕ ਬਸ ਇਸ ਨੂੰ ਹੋਰ ਬਹਾਨਾ ਚਾਹੀਦਾ ਕਰੇਗਾ ਇਸਨੇ ਇੱਕ ਧਰਦੀ ਗਲਬਤ ਕਰਦੀ ਕਿਉਂਕਿ ਇਸਦੇ ਆਪਣੇ ਜਰਮਨ ਬਲੱਡ ਕਰਕੇ ਕੁਝ ਕੁ ਚੀਜ਼ਾਂ ਜਿਹੜੀਆਂ ਇਸ ਦੇ ਵਿਰਾਸਤੀ ਕੁਝ ਮਿਲੀਆਂ ਹੋਈਆਂ ਤੇ ਉਸ ਦਾ ਜਿਹੜਾ ਵਤੀਰਾ ਹੈ ਗੱਲਬਾਤ ਕਰਨ ਦਾ ਢੰਗ ਲੋਕਾਂ 'ਚ ਵਿਚਰਨ ਦਾ ਢੰਗ ਅਲੱਗ ਹੈ ਇਸ ਰੱਖੀ ਹੋਈ ਅਵਾਮਾਂ ਦੀ ਜਿਹੜੀ ਵੀ ਰੱਖੀ ਆ ਉਹ ਚੱਕਣੀ ਚੱਕਣੀ ਖੁੰਦਖ ਵੀ ਇਹਦਾ ਉਸ ਵਿੱਚ ਇਸਨੇ ਪਹਿਲਾਂ ਅਵਾਮਾਂ ਦੀ ਵੇਚਤ ਕੀਤੀ ਅਵਾਮਾਂ ਨੇ ਡਿਨਰ ਤੇ ਸਟੇਜ ਡਿਨਰ ਤੇ ਇਹਦੀਆਂ ਧੱਜੀਆਂ 5 ਮਿੰਟ ਅੜਾਈਆਂ ਤੇ ਅਵੈਂਚਿਉਲੀ ਵੈਨ ਇਹਦੀ ਹੋਈ ਤੇ ਦੁਬਾਰਾ ਉਸੇ ਰਾਸ਼ਟਰਪਤੀ ਨੂੰ ਬਾਹਰ ਕਰਕੇ ਤੇ ਉਸੇ ਵਾਈਟ ਹਾਊਸ 'ਚ ਸੌਂ ਰਿਹਾ ਪੈਸਾ ਬਹੁਤ ਵੱਡੀ ਚੀਜ਼ ਹੈ ਪੈਸੇ ਦੇ ਆਲੇ ਦਾਲੇ ਦੁਨੀਆ ਘੁੰਮਦੀ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਸੁਣਦੇ ਹੋ ਸਾਰਿਆਂ ਦਾ ਧੰਨਵਾਦ ਜੀ ਪ੍ਰੋਗਰਾਮ ਦੇ ਸਪਾਂਸਰਜ਼ ਉਹਦੇ ਵਿੱਚ 88 ট্রাক ਪੇਂਟ 604 940 10 80 ICBC3 ਐਕਸਪ੍ਰੈਸ ਸ਼ਾਪ ਤੇ ਐਕਸਪ੍ਰੈਸ ਗਲਾਸ ਸ਼ਾਪ ਰੱਖਣ ਬੋਡੀ ਪਰਕ ਦਾ ਕੰਮ ਕੀਤਾ ਜਾਂਦਾ ਜਿੱਥੇ ਤੁਸੀਂ ਗਲਾਸ ਜਿਹੜੇ ਸ਼ੀਸ਼ੇ ਟੁੱਟਿਆ ਉਹ ਨਵੇਂ ਪਵਾ ਸਕਦੇ ਹੋ ਤੇ ਰੰਗ ਰੋਗਨ ਵੀ ਨਵਾਂ ਪਵਾ ਸਕਦੇ ਹੋ ਵੱਡੀਆਂ ਗੱਡੀਆਂ ਬਣੀਆਂ ਬਣੀਆਂ ਅੰਦਰ ਜਾ ਖੜਦੀਆਂ ਐ ਤੇ 649401080 ICICI ਵਿਸਬੀ ਐਕਸਪ੍ਰੈਸ ਸ਼ਾਪ ਤਾਂ ਅਮਰੀਕ ਨਾਰਿੰਗ ਐਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 646461312 ਦਫ਼ਤਰ ਇੱਕ ਫੋਨ ਅਮਰੀਕ ਨਾਰਿੰਗ ਤੇ ਰਾਜਸਥਾਨੀ ਦੋ ਜਣਿਆਂ ਨੇ ਕੰਪਨੀ ਸ਼ੁਰੂ ਕੀਤੀ ਹੁਣ 8 ਜੈ ਗੱਡ ਮੇ ਵਕੀਲ ਇਹਨਾਂ ਦੇ ਕੋਲ ਨੇ 64646131 ਤਾਂਮੀ ਨਾਰਿੰਗ ਐਂਡ ਕੰਪਨੀ ICICI ਦੇ ਕੇਸ ਲੜਦੇ ਐ ਜੈਰੀਬਰਾਡ ਮੌਰਗੇਜ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ 604 782 889 ਬੈਸਟੀਲ ਕਿਸੇ ਕਿਸਮ ਦੀ ਤੁਸੀਂ ਲੈਣੀ ਉਸ ਦਾ ਹੱਲ ਜੈਰੀਬਰਾਡ ਕੋਲ ਹੈ ਪਤਾ ਕਿ ਵੱਡੀਆਂ ਬੈਂਕਾਂ ਜੇ ਨਹੀਂ ਦਿੰਦੀਆਂ ਤਾਂ ਕ੍ਰੈਡਿਟ ਯੂਨੀਅਨ ਕ੍ਰੈਡਿਟ ਯੂਨੀਅਨ ਤੋਂ ਨਾ ਜਾਣੀਏ ਕਿਤੇ ਨਾ ਗੱਲ ਬਣੇ ਫਿਰ ਨਿੱਜੀ ਵੀ ਲੋਨ ਲੈ ਲੈਂਦੇ ਨੇ ਪਰ ਉਹ ਆਰਤੀਆਂ ਵਿਆਜ ਨਹੀਂ ਉੱਤੇ ਲੱਗਦਾ ਸਸਤਾ ਵਿਆਜ 600 ਤੇ 700 82839 ਜੈ ਰਿਬਲਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਪੰਜਾਬ ਦੇ ਪਾਣੀਆਂ ਹੈ ਉਹ ਪਿਛਲੇ 2 ਸਾਲਾਂ ਤੋਂ ਹਾਲਾਂਕਿ ਇਲੈਕਸ਼ਨ ਬਹੁਤ ਦੂਰ ਸੀ ਸਾਡੀ ਜਦ ਹੋਂਦ ਨੂੰ ਖਤਰਾ ਹੋਇਆ ਜਾਂਦੀ ਬਹੁਤ ਵਿਦਵਤਾ ਦੇ ਨਾਲ ਗਲਵਾ ਚੱਗੇ ਜਿੱਥੇ ਸਰਾਕ ਸੁਖਦੀਪ ਸਿੰਘ ਨੇ ਫਾਈਨਲ ਸਾਲਟ ਪੰਜਾਬ ਤੇ ਆਖਰੀ ਹਮਲੇ ਦੇ ਰੂਪ ਦੇ ਵਿੱਚ ਡੂੰਗੇ ਉੱਗੇ ਚਿੰਤ ਲਾਮ ਨੂੰ ਲਾਮਬੰਦ ਕਰਕੇ ਉਸ ਫਿਲਮ ਦੇ ਵਿੱਚ ਲੈ ਕੇ ਆਂਦਾ ਕਿ ਕੀ ਕੀ ਹੋ ਰਿਹਾ ਸਾਰੀ ਜਾਣਕਾਰੀ ਧੂ ਧੂ ਕੇ ਲਿਆ ਕੇ ਉੱਥੇ ਪਾਈ ਸ਼ਰਮਾ ਜੀ ਅਕਸਰ ਪੰਜਾਬ ਦੇ ਮੁੱਦਿਆਂ ਤੇ ਕਰਦੇ ਰਹਿੰਦੇ ਨੇ ਤਿੰਨੇ ਵੀਰ ਮੇਰੇ ਨਾਲ ਨੇ ਪੰਜਾਬ ਦੇ ਪਾਣੀਆਂ ਦੀ ਅੱਜ ਗੱਲਬਾਤ ਫਿਰ ਚੰਗੇਗੀ ਤੁਹਾਡਾ ਸਤਿਨਾਮ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਅੱਛਾ ਅਵਰੇਸ਼ ਜੀ ਤਾਂ ਆਪ ਤੋਂ ਸ਼ੁਰੂ ਕਰੀਏ ਜੀ 1985 ਤੇ ਆਪਾਂ ਗੱਲ ਰੱਖੀ ਸੀ ਉਸ ਤੋਂ ਬਾਅਦ 2004 ਤੱਕ ਇਹ ਗੱਲ ਚੱਲੀ ਤੇ ਫਿਰ ਆਮ ਗੱਲਬਾਤ ਆਪਾਂ ਸ਼ੁਰੂ ਕਰਨੀ ਹੈ ਜ਼ਮੀਨੀ ਪੱਧਰ ਤੇ ਮੁਸ਼ਕਲਾਂ ਕੀ ਨੇ ਕਿਹਜਾ ਹੋ ਦੇ ਲੋਕ ਸਮਝ ਕਿਉਂ ਨਹੀਂ ਰਹੇ ਇਸ ਇਲੈਕਸ਼ਨ ਦੇ ਵਿੱਚ ਕਿਸੇ ਵੀ ਪਾਰਟੀ ਦਾ ਇਹ ਮੁੱਦਾ ਨਹੀਂ ਕਿ ਪੰਜਾਬ ਦੇ ਪਾਣੀ ਨੇ ਜਿਹੜੇ ਉਹ ਮੁੱਕ ਰਹੇ ਨੇ ਤੇ ਉਹਨਾਂ ਦੀ ਉਹ ਚੋਰੀ ਉਹਨਾਂ ਦੀ ਹੋ ਰਹੀ ਮੇਰੇ ਕੱਲ ਨੂੰ 185% ਤੱਕ ਆਪਾਂ ਅਗੇ ਸੀ ਅੱਗੇ ਜਿਹੜਾ 19 ਸਾਲ ਦਾ 2004 ਤੱਕ ਜਦ ਤੱਕ ਉਸਨੇ ਕੈਪਟਨ ਨੇ ਟਰਮੀਨੇਸ਼ਨ ਕੀਤੇ ਪਹਿਲੇ ਕੋਰਡ ਉੱਥੇ ਤੱਕ ਆਪਾਂ ਆਈ ਸਰਦਾਜੀ ਸਿੰਘ ਜੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਦੇ ਵਿੱਚ ਜਿਹੜਾ ਪੰਜਾਬ ਸੈਟਲਮੈਂਟ ਸੰਧਪਤੇ ਦੇ ਨਾਂ ਥਲੇ ਜਿਹੜਾ ਰਜੀਵ ਲੋਂਗੋਵਾਲ ਤੋਂ ਜੋ ਪਾਇਆ ਸੀ ਉੱਥੇ ਧਾਰਾ ਨੰਬਰ 9 ਸੀਗੀ ਉਹਦੇ ਵਿੱਚ ਦੋ ਗੱਲਾਂ ਵਧੀਆਂ ਜਿਹੜੀਆਂ ਕੰਟਰੋਵਰਸ਼ੀਅਲ ਹੋਈਆਂ ਜਿਨ੍ਹਾਂ ਤੇ ਐਗਰੀਮੈਂਟ ਹੋਇਆ ਸੰਤਸਰ ਸਿੰਘ ਲੋਂਗੋਵਾਲ ਦੇ ਸਿਗਨੇਚਰ ਸੀ ਤੇ ਉਸ ਟਾਈਮ ਦੇ ਪ੍ਰਾਈਮ ਮਿੰਿਸਟਰ ਸ਼੍ਰੀ ਗਾਂਧੀ ਦੇ ਸਿਗਨੇਚਰ ਸੀ ਉਸ ਸਮਝੌਤੇ ਦੇ ਉੱਤੇ ਉਹਦੇ ਵਿੱਚ ਇੱਕ ਕੇਸ ਹੈਗਾ ਵੀ ਪੰਜਾਬ ਦੇ ਜਿਹੜੇ ਪਾਣੀ ਆ ਬਿਜ ਸਤਲੋ ਜਮਨਾ ਲਿੰਕ ਦਾ ਰੋੜਾ ਸੀ ਵੀ ਪੰਜਾਬ ਇਹ ਡੈਰ ਬਣਾ ਕੇ ਦੇਊਗਾ 1986 ਦੀ ਉਹਦੇ ਵਿੱਚ ਇੱਕ ਡਿਟਰ ਮਿੱਥੀ ਗਈ ਸੀ ਦੂਸਰਾ ਸਿਗਾ ਉਹਦੇ ਵਿੱਚ ਬਾਕੀ ਜਿਹੜੇ ਨਾਨ ਸਟੇਟਾਂ ਨੂੰ ਜਿੱਦਾਂ ਪਾਣੀ ਮਿਲਦਾ ਉਵੇਂ ਹੀ ਪਾਣੀ ਮਿਲਦਾ ਰਹੂਗਾ ਇਹ ਜਿਹੜੀ ਮੱਦ ਪਾਈ ਤੇ ਇੱਕ ਬਣਾਉਣ ਦੀ ਗੱਲ ਕੀਤੀ ਗਈ ਸੀ ਰਾਡੀ ਟਰਬਿਨਲ ਰਾਡੀ ਟਰਮੀਨਲ ਬਣਿਆ ਬਾਅਦ ਦੇ ਵਿੱਚ ਉਹ ਟਰਬਿਨਲ ਜਿਹੜਾ ਪੰਜਾਬ ਨੇ ਮੰਨ ਲਿਆ ਉਹਦੇ ਨਾਲ ਪੰਜਾਬ ਦੇ ਵੱਲੋਂ ਜਦੋਂ ਮੰਨਿਆ ਗਿਆ ਉਹਦੇ ਨਾਲ ਇਹ ਇੱਕ ਬੜੀ ਬੰਦਭਾਗੀ ਗੱਲ ਹੋਈ ਵੀ ਜਦੋਂ ਤਰਬਿਨਲ ਬਣਾਉਣਾ ਪੰਜਾਬ ਨੇ ਉਹਨੇ ਸਟੇਟਾਂ ਦਾ ਥੱਲੇ ਆਉਂਦੇ ਗਲਤੀ ਦਾ ਨਤੀਜਾ ਨਿਕਲਿਆ ਜੀ ਉਸ ਤੋਂ ਪੰਜਾਬ ਨੇ ਉਹ ਨਹਿਰ ਜਿਹੜੀ ਬਨਾਲਾ ਸਰਕਾਰ ਬਣਾਉਣੀ ਸ਼ੁਰੂ ਕਰ ਦਿੱਤੀ ਜੋਰ ਸ਼ੋਰ ਦੇ ਨਾਲ ਉਹ ਨਹਿਰ ਦਾ ਜਿਹੜਾ ਕੰਮ ਸੀਗਾ ਉਹ ਰੁਕਿਆ ਜੀ ਉਦੋਂ ਖਾੜਕੂ ਲਹਿਰ ਦੇ ਦੌਰਾਨ ਜਦੋਂ ਕੁਝ ਇੰਜੀਨੀਅਰਾਂ ਦੀ ਉਹਦੇ ਵਿੱਚ ਅਸੀਂ ਮੀਨ ਇੰਜੀਨੀਅਰ ਦੀ ਹੱਤਿਆ ਕਰ ਦਿੱਤੀ ਗਈ ਤੇ ਉਹਦੇ ਉੱਤੇ ਲੋਕਾਂ ਨੇ ਜਿਹੜੇ ਉਸ ਟਾਈਮ ਬੰਦੇ ਕੰਮ ਕਰਦੇ ਸੀ ਉਹਨੇ ਕੰਮ ਕਰਨ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਰਾਡੀ ਟਰਬਿਨਲ ਦਾ ਗਠਨ ਕੀਤਾ ਗਿਆ ਜਿਹੜਾ ਡਾਡੀ ਟਰਬਿਨਲ ਨੇ ਵੀ ਪਾਣੀ ਪੰਜਾਬ ਦੇ ਪਾਣੀਆਂ ਨੂੰ ਵਧਾ ਚੜਾ ਕੇ ਦੱਸਿਆ। ਉਹਨੇ ਪਾਣੀਆਂ ਦੇ ਵਿੱਚ ਉਹ ਟੋਏ ਨਾਲੇ ਤੇ ਹੋਰ ਜਿਹੜੇ ਜਿਹੜੇ ਪਾਣੀ ਮਤਲਬ ਵਕਤੋਂ ਯੋਗ ਨਹੀਂ ਸੀਗੇ ਉਹ ਵੀ ਐਡ ਕਰਕੇ ਉਹਨੇ ਪਾਣੀ ਦੀ ਮਿੰਤੀ ਵਧਾ ਕੇ ਉਹਨੂੰ ਦੁਬਾਰਾ ਫੇਰ ਬੰਦ ਦਿੱਤਾ। ਉਹਦੇ ਨਾਲ ਪੰਜਾਬ ਨੂੰ ਹੋਰ ਨੁਕਸਾਨ ਹੋਇਆ। ਉਸ ਤੋਂ ਬਾਅਦ ਇਹ ਇਹ ਰੋਲਾ ਚੱਲਦਾ ਰਿਹਾ ਜੀ SBYL ਉਸ ਤੋਂ ਉਸ ਤੋਂ ਬਾਅਦ ਤਾਂ ਬਣੀ ਨਹੀਂ ਰੁਕੀ ਰਹੀ ਈ ਮੀ ਪ੍ਰੋਜੈਕਟ ਇਹ ਫਿਰ ਇਹ ਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਨਾ ਜੀ ਵੀ ਇਸ SBYL ਨੂੰ ਬਣਾਇਆ ਜਾਵੇ ਛੇਤੀ ਤੋਂ ਛੇਤੀ ਕਿਉਂਕਿ ਹਰਿਆਣਾ ਵੱਲੋਂ ਇਹਨੂੰ ਪੁਛ ਕੀਤਾ ਜਾ ਰਿਹਾ ਸੀ ਉਹ ਚਾਹੁੰਦੇ ਸੀ ਛੇਤੀ ਬਣ ਜਵੇ ਜਦੋਂ ਇੱਕ ਵਾਰੀ ਬਣ ਜਾਂਦੀ ਹੈ ਫਿਰ ਉਹ ਚੱਲੇ ਪ੍ਰੋਜੈਕਟ ਨੂੰ ਰੋਕਣਾ ਔਖਾ ਹੋ ਜਾਂਦਾ ਸਰਕਾਰਾਂ ਲਈ ਉਹ ਜਦੋਂ ਉੱਤੇ ਫੈਸਲਾ ਆਇਆ ਤੇ ਕੈਪਟਨਵਿੰਦਰ ਸਿੰਘ ਦੀ ਸਰਕਾਰ ਵੇਲੇ 2004 ਦੇ ਵਿੱਚ ਫਿਰ ਉਹ ਕੇਸ ਦੇ ਉੱਤੇ ਫੈਸਲੇ ਤੋਂ ਬਾਅਦ ਇੱਕਦਮ ਨਹੀਂ ਸ਼ੁਰੂ ਹੋਇਆ 2004 ਦੇ ਵਿੱਚ ਪੰਜਾਬ ਸਰਕਾਰ ਦੀ ਇਹ ਸਮੱਸਿਆ ਖੜੀ ਹੋ ਗਈ ਸੁਪਰੀਮ ਕੋਰਟ ਦੇ ਆਰਡਰ ਨੂੰ ਫਾਲੋ ਕਰਨਾ ਜਾਂ ਨਹੀਂ ਫਿਰ ਇਹਨਾਂ ਨੇ ਟਰਮੀਨੇਸ਼ਨਜ਼ ਆਫ ਐਗਰੀਮੈਂਟਸ ਐਕਟ 2004 ਲਿਆਂਦਾ ਕੈਪਟਨਵਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਉਹਦੇ ਵਿੱਚ ਇਹਨਾਂ ਨੇ ਲਿਖ ਦਿੱਤਾ ਵੀ ravi bias ਦੇ ਜਿਹੜੇ ਪਾਣੀਆਂ ਦੇ ਅਸੀਂ ਸਮਝੌਤੇ ਪੰਜਾਬ ਸਰਕਾਰ ਕੈਂਸਲ ਕਰਦੀ ਆ ਜਿੰਨੇ ਵੀ ਪਿਛਲੇ ਹੈਗੇ ਆ ਪਰ ਉਦੇ ਵਿੱਚ ਜਿਹੜੇ ਮਹਾਰਾਜੇ ਉਹਨਾਂ ਨੇ ਇੱਕ ਇੱਕ ਇਤਰਾਜ ਕੀਤਾ ਵੀ ਉਹਦੇ ਵਿੱਚ ਰਜੀਵ ਲੌਂਗਵਾਰ ਸਮਝੌਤੇ ਦੀ ਗੱਲ ਨਹੀਂ ਕੀਤੀ ਗਈ ਉਸ ਦੇ ਵਿੱਚ ਦੂਸਰਾ ਉਹਦੇ ਵਿੱਚ ਇਹਨਾਂ ਨੇ ਕਲੌਜ਼ ਪਾਈ ਦੀ ਜਿਹਦਾ ਬਹੁਤ ਜ਼ਿਆਦਾ ਰੌਲਾ ਪਿਆ ਬਾਅਦ ਵਿੱਚ ਕਲੌਜ਼ 5 ਦੇ ਵਿੱਚ ਇਹਨਾਂ ਨੇ ਲਿਖਿਆ ਵੀ ਜਿਹੜੀਆਂ ਦੂਸਰੀਆਂ ਸਟੇਟਾਂ ਦੇ ਜਿਨ੍ਹਾਂ ਕਿਸਾਨਾਂ ਨੂੰ ਜਿਵੇਂ ਪਾਣੀ ਹੋਣ ਵਾਲੀ ਸਪਲਾਈ ਮਿਲ ਰਹੀ ਹੈ ਉਸ ਟਾਈਮ ਦੇ ਵਿੱਚ 2004 ਚ ਉਵੇਂ ਹੀ ਮਿਲ ਜਾਈ ਜਦਕਿ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਜਿਹੜਾ ਵਹਾਅ ਆਲਰੇਡੀ ਬਹੁਤ ਘੱਟ ਹੋ ਚੁੱਕਿਆ ਸੀ ਇਹਨਾਂ ਨੇ ਖੁਦ ਮੰਨਿਆ ਉਸ ਟਾਈਮ ਪੰਜਾਬ ਸਰਕਾਰ ਦੇ ਉਸ ਐਕਟ ਦੇ ਵਿੱਚ ਵੀ 14.37 ਮਿਲੀਅਨ ਇਕੜ ਫੁੱਟ ਦੇ ਕਰੀਬ ਆ ਜਦਕਿ ਰਾਡੀ ਟ੍ਰਿਬਿਊਨਲ ਕਹਿੰਦੇ 17.17 ਮਿਲੀਅਨ ਇਕੜ ਇਕੜ ਫੁੱਟ ਉਹ ਜਿਹੜੀ ਉਹ ਜਿਹੜੀ ਕਲॉज 5 ਸੀਗੀ ਜੀ ਉਸ ਟਾਈਮ ਜਿਹੜੀਆਂ ਪੰਜਾਬ ਦੀਆਂ ਤਿੰਨੇ ਰਾਜਨੀਤਿਕ ਪਾਰਟੀਆਂ ਸੀ ਉਸ ਨੂੰ ਪਾਸ ਕੀਤਾ ਸਾਰਿਆਂ ਨੇ ਸਰਬਸੰਪਤੀ ਦੇ ਨਾਲ ਕੋਈ ਨਹੀਂ ਬੋਲਿਆ ਕਿਸੇ ਨੇ ਵੀ ਉਹਦੀ ਓਪੋਜੀਸ਼ਨ ਨਹੀਂ ਕੀਤੀ ਅੱਛਾ ਕੈਪਟਨ ਦਾ ਫਿਰ ਕੀ ਮੁੱਦਾ ਰਿਹਾ ਉਹ ਕਰਨ ਦਾ ਉਹੀ ਸ਼ਮਨ ਕਮੇਟੀ ਚਾਹੇ ਚਿੰਦਾ ਕਰਨ ਦਾ ਉਹ ਬੜੀ ਲੋਕ ਖੁਸ਼ ਵੀ ਹੋਏ ਬਈ ਵਾ ਵਾ ਬਹੁਤ ਜਿਹੜਾ ਨਾ ਮੀਡੀਆ ਤੇ ਜਿਵੇਂ ਜੀ ਉਹਨੂੰ ਉਸ ਚੀਜ਼ ਨੂੰ ਪ੍ਰੋਪੋਕ ਕਰ ਦਿੱਤਾ ਜਾਂਦਾ ਜਿਵੇਂ ਪਾਣੀਆਂ ਦੇ ਰਾਖੇ ਵਰਡ ਯੂਜ਼ ਕੀਤਾ ਜਾਂਦਾ ਲੋਕਾਂ ਦੇ ਕੋਲ ਜਿੰਨੀ ਕ ਖਬਰ ਪਹੁੰਚਦੀ ਉਹ ਉਹਨੂੰ ਕੈਚ ਕਰ ਲੈਂਦੇ ਆ ਉਹਦੀ ਬਰੀਕੀ ਦੇ ਵਿੱਚ ਨਹੀਂ ਜਾਂਦੇ ਵੀ ਇਹ ਸਾਡੇ ਨਾਲ ਹੋ ਕੀ ਰਿਹਾ ਉਹ ਜਿਹੜਾ ਮਸਲਾ ਨਾ ਜੀ ਦੇਖੋ ਉਸ ਟਾਈਮ ਵਕਤੀ ਇਹਨਾਂ ਨੇ ਉਸ ਚੀਜ਼ ਨੂੰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਕ੍ਰਿਟਿਕ ਆ ਨਾ ਜੀ ਉਹ ਇਹ ਦੋਸ਼ ਲਾਉਂਦੇ ਆ ਵੀ ਇਹ ਰਲ ਮਿਲ ਕੇ ਕੀਤਾ ਗਿਆ ਪੰਜਾਬ ਸਰਕਾਰ ਨੇ ਇਹ ਪਾਕ ਕਰ ਦਿੱਤਾ ਕਾਂਗਰਸ ਸਰਕਾਰ ਨੇ ਤੇ ਸੈਂਟਰ ਵਾਲੀ ਨੇ ਉਹ ਝੜਕਾ ਢਾਹਤਾ ਜੀ ਤੁਸੀਂ ਦੇਖੋ ਦੋਨੇ ਭਾਈ ਸੇਮ ਪਾਰਟੀਆਂ ਦੀ ਸਰਕਾਰ ਸੀ ਜੇ ਚੌਦੇ ਜੱਟ ਫਿਰ ਉਹ ਸੈਂਟਰ ਤੋਂ ਵੀ ਪਾਸ ਹੋ ਜਾਂਦਾ ਮੁਨਾ ਨੇ 2004 ਤੋਂ ਲੈ ਕੇ 2016 ਤੱਕ ਇਹਨੂੰ ਲਟਕਾਈ ਰਖਿਆ 12 ਸਾਲਾਂ ਦੇ ਵਿੱਚ ਪੰਜਾਬ ਦਾ ਕਰੋੜਾਂ ਹਜ਼ਾਰਾਂ ਕਰੋੜਾਂ ਦਾ ਪਾਣੀ ਬਗ ਗਿਆ ਜੀ ਉਸ ਉਸ ਉਸ ਲਟਕਾਰੇ ਵਿੱਚ ਹੋਰ ਕੋਈ ਕਾਰਵਾਈ ਕੀਤੀ ਨਹੀਂ ਇਹ ਕੋਟਵਾਲ ਝਾਕੀ ਗਏ ਉਦੋਂ ਤੁਸੀਂ ਉਸ ਹਿਸਾਬ ਲਾਓਗੇ ਤਕਰੀਬਨ 22000 ਕਰੋੜ ਰੁਪਏ ਦਾ ਪਾਣੀ ਰੋਜ਼ ਜਾਂਦਾ ਜੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ ਸਰੋਤਿਆਂ ਨੂੰ ਇਹ ਸਾਡੇ ਲੀਡਰ ਆਉਂਦੇ ਆ ਮੈਂ ਅੱਜ ਵੀ ਇੱਕ ਦੋ ਦੀਆਂ ਇੰਟਰਵਿਊ ਸੁਣੀਆਂ ਰੇਡੀਓਜ਼ ਉੱਤੇ ਬੜੇ ਮੋਰ ਮੋਰ ਬਿਆਦੰਦੇ ਆ ਕਿ ਇਹਨਾਂ ਦੀਆਂ ਇਹਨਾਂ ਸਟੇਟਮੈਂਟਾਂ ਬੜੀਆਂ ਕੈਲਕੂਲੇਟਡ ਆ ਕੋਈ ਪਾਣੀ ਦੀ ਬੂੰਦ ਬਚਾਉਣ ਦੀ ਇਹ ਗੱਲ ਨਹੀਂ ਕਰ ਰਹੇ ਪਾਣੀ ਦੀ ਬੂੰਦ ਪੰਜਾਬ ਦੇ ਕੋਲ ਹੈ ਹੀ ਨਹੀਂ ਤੁਸੀਂ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਨਹਿਰ ਨੂੰ ਛੱਡੋ ਤੇ ਪਾਣੀ ਵਗਿਆ ਨਹੀਂ ਜਿਹੜੀਆਂ ਭਾਖੜਾ ਨਹਿਰ ਰਾਜਸਥਾਨ ਨਹਿਰ ਤੇ ਗੰਗਤ ਨਾਲ ਦੇ ਵਿੱਚ ਰੋਜ਼ ਸਾਡਾ ਮਿਲੀਅਨਜ਼ ਆਫ ਲੀਟਰ ਪਾਣੀ ਪੰਜਾਬ ਦਾ ਵਗ ਰਿਹਾ ਉਹਦੀ ਕਦੋਂ ਗੱਲ ਕਰੂਗੇ ਤੁਸੀਂ ਉਹਨੂੰ ਕਦੋਂ ਰੋਕਣ ਦੀ ਗੱਲ ਕਰੋਗੇ ਤੱਲੀ ਐਸਪੀਐਲ ਨੂੰ ਜੇ ਰੋਕ ਲਿਆ ਗਿਆ ਨਾ ਜੀ ਤੇ ਪੰਜਾਬ ਬੰਜਰ ਹੋਣ ਤੋਂ ਬਚੂਗਾ ਜਾਂ ਨਹੀਂ ਬਚੂਗਾ ਇਹ ਤਾਂ ਬਖਰੀ ਸਟੋਰੀ ਆ ਪਰ ਜਿਹੜੀਆਂ ਉਹ ਤਿੰਨ ਨਹਿਰਾਂ ਵਗ ਰਹੀਆਂ ਨਾ ਜੀ ਦਿੱਲੀ ਪਾਣੀ ਲਿਜਾ ਰਹੀਆਂ ਉਹ ਪੰਜਾਬ ਨੂੰ ਜ਼ਰੂਰ ਬੰਜਰ ਕਰਨਗੀਆਂ ਇਹ ਗਰੰਟੀਡ ਗੱਲ ਜੀ ਉਹਦੇ ਵਾਲੇ ਬਿਲਕੁਲ ਧਿਆਨ ਨਹੀਂ ਦੇ ਰਹੇ ਦੂਸਰਾ ਜਿਹੜਾ ਵਰਡ ইউজ ਕਰਦੇ ਜੀ ਜਿਵੇਂ ਹੁਣ ਤੋਂ ਬਾਅਦ ਫਿਰ ਆ ਹੋਣ ਵਾਲੇ ਮਸਲੇ ਤੇ ਜਿਵੇਂ ਹੋਣ ਵਾਲੀ ਸਰਕਾਰ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਆਹ ਐਂਡ ਦੇ ਵਿੱਚ ਇਹਨਾਂ ਦੀ ਟਰਮ ਦੇ ਵਿੱਚ ਅਕਾਲੀ ਸਰਕਾਰ ਨੇ ਵੀ ਆਹ ਲੈਂਡ ਐਕ ਬੈਕ ਦੇਤੀ ਪੈਸੇ ਮੋੜ ਤੇ ਪੈਸੇ ਮੋੜ ਦਿੱਤੇ ਹੁਣ ਕਾਰਵਾਈ ਕੀਤੀ ਹੁਣ ਰਾਇਲਟੀ ਦਾ ਰਾਇਲਟੀ ਵਰਡ ਅਸੀਂ ਯੂਜ਼ ਕਰਦੇ ਜੀ ਸਾਡੇ ਵੀ ਮੂੰਹ ਤੇ ਚੜਿਆ ਹੋਇਆ ਪਰ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਪੰਜਾਬ ਨੂੰ ਰਾਇਲਟੀ ਨਹੀਂ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦੀ ਕੀਮਤ ਚਾਹੀਦੀ ਆ ਪੰਜਾਬ ਪਾਣੀਆਂ ਦਾ ਮਾਲਕ ਆ ਪੰਜਾਬ ਦਾ ਇਹ ਜਿਹੜਾ ਆ ਪੰਜਾਬ ਦੀ ਪ੍ਰੋਪਰਟੀ ਰਾਇਲਟੀ ਸ਼ਬਦ ਸਿੱਖ ਲੀਆ ਇਹ ਰਾਇਲਟੀ ਸ਼ਬਦ ਸਾਰੇ ਸਿਆਸੀ ਵੀ ਯੂਜ਼ ਕਰਦੇ ਆ ਅਸੀਂ ਵੀ ਪੰਜਾਬ ਦੀ ਪ੍ਰੋਪਰਟੀ ਆ ਪਾਣੀਆਂ ਦਾ ਜਿਹੜਾ ਪਾਣੀ ਆ ਰਾਈਪੇਰੀਅਨ ਕਾਨੂੰਨ ਅਧੀਨ ਤੇ ਪੰਜਾਬ ਨੂੰ ਇਹਦੀ ਮਿਲਣੀ ਚਾਹੀਦੀ ਹੈ ਜੀ ਇਹਦੇ ਬਾਰੇ ਜਿਹੜੇ ਸਾਡੇ ਸਾਰੇ ਤੋਂ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਗੱਲ ਹੋਰ ਸਪਸ਼ਟ ਕਰਨੀ ਆਉਨੇ ਆ ਜੀ ਇਹ ਜਿਹੜਾ ਮੁੱਦਾ ਆ ਇਹ ਰਿਲੀਜੀਅਸ ਮੁੱਦਾ ਨਹੀਂ ਜੀ ਇਹਨੂੰ ਪਿਛਲੇ ਸਮਿਆਂ ਦੇ ਵਿੱਚ ਸਿੱਖ ਮੁੱਦਾ ਬਣਾ ਕੇ ਉਭਾਰਿਆ ਗਿਆ ਸਿੱਖ ਮੰਗਾਂ ਨਾਲ ਇਕੱਠਿਆਂ ਕਰਕੇ ਜਦੋਂ ਧਰਮ ਮੋਰਚਾ ਸ਼ੁਰੂ ਹੋ ਗਿਆ ਸਮਝ ਜਨਰ ਸਿੰਘ ਉਹਨਾਂ ਨੇ ਇਕੱਠਾ ਕਰ ਲਿਆ ਸੋ ਦੋਨਾਂ ਨੇ ਉਹ ਉਹਦੇ ਬਾਰੇ ਤੁਹਾਡੀ ਚਿੰਤਕ ਦੇ ਤੌਰ ਤੇ ਤੁਸੀਂ ਕੀ ਸੋਚਦੇ ਹੋ ਇਹ ਅਲੱਗ ਨਹੀਂ ਸੀ ਰੱਖਣਾ ਚਾਹੀਦਾ ਪੰਜਾਬ ਦੇ ਪਾਣੀਆਂ ਸਿੱਖ ਮੰਗਾਂ ਅਲੱਗ ਨਹੀਂ ਰਹਿਣੀਆਂ ਚਾਹੀਦੀਆਂ ਹੋਇਆ ਕੀ ਜੀ ਦਾ ਮੁੱਦਾ ਇਹ ਜਿਹੜਾ ਦਲ ਦਾ ਜਿਹੜਾ ਜੀ ਜਾਂਦਾ ਰਿਹਾ ਪਹਿਲਾਂ ਵੀ ਪਰ ਇਹਨੂੰ ਨਾ ਇਹ ਜਿਹੜਾ 1982 ਦੇ ਵਿੱਚ ਜਦੋਂ ਸ਼੍ਰੀ ਮਦਿੰਦਰ ਸਾੰਗੀ ਨੇ ਟਰਾਈ ਕੀਤੀ ਵੀ ਉਹਨੂੰ ਤੱਕ ਲਾ ਕੇ ਤੇ ਕੈਪਟਨ ਵਿੰਦਰ ਸਿੰਘ ਹੁਣ ਜਦੋਂ MP ਸੀਗੇ ਵੀ ਉਹ ਵੀ ਨਾਲ ਸੀਗੇ ਤੇ ਉਹਨਾਂ ਨੇ ਇਹਨੂੰ ਕਿਹਾ ਵੀ ਛੇਤੀ ਦੇ ਛੇਤੀ ਇਹਨੂੰ ਬਣਾ ਦਿੱਤਾ ਜਾਵੇ ਉਸ ਟਾਈਮ ਇਹਨੂੰ ਪੋਲੀਟੀਕਲ ਰੰਗਤ ਜਾਰੀ ਹੋ ਗਈ ਜੀ ਇਸ ਮਸਲੇ ਦੀ ਇਹਨੂੰ ਪੋਲੀਟੀਕਲ ਰੰਗਤ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪੋਜੀਸ਼ਨ ਪਾਰਟੀ ਸੀਗੀ ਇਹਨਾਂ ਨੇ ਉਸ ਉੱਥੇ ਮੋਰਚਾ ਲਾ ਦਿੱਤਾ ਜੀ ਪਰ ਜਿਹੜੀ ਪਾਣੀਆਂ ਦੀ ਮੰਗ ਸੀਗੀ ਨਾ ਜੀ ਉਹ ਪੰਜਾਬੀਆਂ ਦੀ ਮੰਗ ਬਣਨ ਦੀ ਸਿੱਖਾਂ ਦੀ ਮੰਗ ਬਣ ਗਈ ਉਸ ਟਾਈਮ ਦੇ ਵਿੱਚ ਜਿਹੜਾ ਜਿਹੜਾ ਦੁਖਾਤ ਇਹ ਰਿਆ ਜੀ ਸਿੱਕੇ ਕੋਟੇ ਸਿੱਖੀ ਸਿੱਖਾਂ ਦੇ ਸਾਰੇ ਨਾਲੋਂ ਜ਼ਿਆਦਾ ਉਸ ਦੇਖੋ 1984 ਤੋਂ ਲੈ ਕੇ 1992 ਦੇ ਤੱਕ ਜੋ ਕੁਝ ਹੋਇਆ ਜੀ ਉਸ ਦਾ ਕਾਰਨ ਇਹ ਨਹਿਰ ਬਣੀ ਹੈ ਜੀ ਇਸ ਨਹਿਰ ਵਿੱਚ ਵਗਣ ਵਾਲਾ ਪਾਣੀ ਵਗਿਆ ਬਣਿਆ ਜੋ ਕਿ ਵਗਿਆ ਅਸੀਂ ਉਮੀਦ ਕਰਦੇ ਹਾਂ ਫਿਊਚਰ ਦੇ ਵਿੱਚ ਵੀ ਨਾ ਵਗੇ ਸਾਰੇ ਪੰਜਾਬੀ ਇਕੱਠੇ ਰਹਿਣ ਸ੍ਰੀ ਬਣਾਉਂਦੇ ਹੋਏ ਕਿਉਂਕਿ ਕੁਝ ਚੀਜ਼ਾਂ ਚਿਤਵ ਕੇ ਜਦ ਤੁਸੀਂ ਉਹਦੇ ਵਿੱਚ ਵੜਦੇ ਹੋ ਨਾ ਬੜੀਆਂ ਚੀਜ਼ਾਂ ਨਵੀਆਂ ਨਿਕਲਦੀਆਂ ਅਕਸਰ ਜਾ ਪੰਜਾਬ ਦੇ ਪਾਣੀ ਨੂੰ ਤੁਸੀਂ ਗਿਣ-ਮਣ ਰਹੇ ਸੀ ਇੱਕ ਤਾਂ ਹੋ ਗਿਆ ਵੀ ਅਸੀਂ ਵਰਤਣ ਲੱਗੇ ਪਾਣੀ ਸਸੇ ਮੱਕੀਆਂ ਤੇ ਚਰੀਆਂ ਤੇ ਕਣਕਾਂ ਬੀਜਦੇ ਵੀਦੇ ਝੋਨਾ ਬੀਜਣ ਲੱਗੇ ਹਾਂਜੀ ਪੰਜਾਬ ਜਿਹੜਾ ਕੁਦਰਤੀ ਤੌਰ ਤੇ ਪਾਣੀ ਘਟਣ ਦਾ ਹੋਰ ਵੀ ਕੀ ਕਰਨਾ ਜਿਹੜਾ ਆਪਾਂ ਲੋਕਾਂ ਦੇ ਸਨਮੁਖ ਕਰ ਸਕੀਏ ਉੱਪਰ ਜਿਹੜਾ এনवायरमेंट ਦੇ ਤੌਰ ਤੇ ਗਲੇਸ਼ੀਅਰ ਪਿਘਲ ਗਏ ਜਾਂ ਪਾਣੀ ਘਟ ਗਿਆ ਜਦੋਂ ਰਿਜਨ ਤੋਂ ਜਿੱਥੇ ਸਰਦੋਜ ਤੇ ਵਿਆਸ ਮਾਨਸਰੋਵਰ ਤੋਂ ਸ਼ੁਰੂ ਸਰਦੋਜ ਹੁੰਦਾ ਪਾਣੀ ਘਟਣ ਦਾ ਕਾਰਨ ਕੀ ਜਾਂ ਜਿਹੜੇ ਉੱਪਰ ਪਾਖੜਾ ਵਿਆਸ ਮੈਨੇਜਮੈਂਟ ਦੇ ਤੌਰ ਤੇ ਸਲਾਪੜ ਬੰਦ ਲਿਆ ਸੁੰਦਰ ਨਗਰ ਉਸ ਸਮੇਂ ਵੀ ਕੁਝ ਸਾਡੇ ਨਾਲ ਖਰਾਬੀ ਹੋਈ ਆ ਬਿਲਕੁਲ ਵੀਰ ਜੀ ਦੇਖੋ ਇੱਕ ਤਾਂ ਆਣੀ ਦੀ ਜਿਹੜੀ ਸ਼ਾਰਟੇਜ ਆ ਗਲੋਬਲ ਇਸ਼ੂ ਵੀ ਐ ਇਸ ਇਸ਼ੂ ਵੀ ਐ ਜਿਹੜੀ ਨਾ ਨਾਰਥ ਕਲਾ ਪੰਜਾਬ ਦੀ ਨਾਲ ਗੱਲ ਕਰੀਏ ਆਪਾਂ ਇਥੇ ਨਾਰਥ ਅਮਰੀਕਾ ਦੇ ਦੇਖੀਏ ਸਾਰੇ ਪਾਸੇ ਦੇਖ ਲਿਏ ਗਲੋਬਲ ਵਾਰਮਿੰਗ ਗਲੇਸ਼ੀਅਰ ਖੁਰ ਰਿਹਾ ਪਾਣੀ ਦੀ ਘਾਟ ਆ ਉਸ ਜਿਹੜੇ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਕਿਸੇ ਵੀ ਸਟੇਟ ਵੱਲੋਂ ਵੀ ਜਿਹੜੇ ਵੀ ਉਹ ਰਿਸੋਰਸਸ ਆ ਉਹਨਾਂ ਨੂੰ ਸਿਆਣਪ ਦੇ ਨਾਲ ਵਰਤਿਆ ਜਾਵੇ ਕਿਉਂਕਿ ਜਿਹੜੀ ਐਗਰੀਕਲਚਰ ਆ ਹੁਣ ਪੰਜਾਬ ਸਿਰਫ ਪੰਜਾਬ ਨੂੰ ਹੀ ਨਹੀਂ ਫੀਡ ਕਰਦਾ ਪੰਜਾਬੀਆਂ ਨੂੰ ਨੀ ਫੀਡ ਕਰਦਾ ਇਹ ਹਿੰਦੁਸਤਾਨ ਲਈ ਪ੍ਰੋਡਿਊਸ ਦਾ ਇੱਕ ਹੱਬ ਆ 1960 ਦੇ ਜਦੋਂ ਆਪਾਂ ਕਾਲ ਦੀ ਗੱਲ ਕਰਦੇ ਹਾਂ ਜਦੋਂ ਗ੍ਰੀਨ ਰੈਵੋਲੂਸ਼ਨ ਪੰਜਾਬ ਚ ਐਂਟਰ ਕੀਤੀ ਆ ਉਹਦੇ ਪਿੱਛੇ ਕੀ ਸੀਗਾ ਕਿਉਂਕਿ ਸਾਰਾ ਹਿੰਦੁਸਤਾਨ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਸੀਗਾ ਵਰਲਡ ਬੈਂਕ ਦੀ ਮਦਦ ਦੇ ਨਾਲ ਇਹ ਜਿਹੜੇ ਪ੍ਰੋਜੈਕਟ ਆ ਜਿਨ੍ਹਾਂ ਨੂੰ ਹੋਰਾਂ ਸਟੇਟਾਂ ਨੇ ਡਲਾਈ ਕੀਤਾ ਝੋਨਾ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਝੋਨਾ ਪੰਜਾਬ ਤੇ ਦੇ ਵਿੱਚ ਕਿਉਂਕਿ ਪੰਜਾਬ ਦੀ ਇਹ ਨੇਟਿਵ ਫਸਲ ਨਹੀਂ ਹੈਗੀ ਝੋਨਾ ਝੋਨੇ ਨੂੰ ਇੱਕ ਜਿਹੜੀ ਡੈਫੀਸੈਂਸੀ ਸੀ ਫੂਡ ਦੀ ਘਾਟ ਸੀਗੀ ਉਹਨੂੰ ਪੂਰਾ ਕਰਨ ਲਈ ਪੰਜਾਬ ਨੂੰ ਇੱਕ ਸਰ ਬੜਾ ਇੱਕ ਚਲੋ ਜਿੰਮੇ ਆਪਣੇ ਪਲੇਟਫਾਰਮ ਦੇ ਤੌਰ ਤੇ ਇੱਕ ਲੈਬ ਦੇ ਤੌਰ ਤੇ ਵਰਤ ਹੈਗੇ ਉਹਦੇ ਵਿੱਚ ਇਹ ਫਿਰ ਵੀ ਸਰ ਸਕਦਾ ਸੀਗਾ ਜੇ ਜਿੰਮੇ ਐਗਰੀਕਲਚਰਲੀ ਸਭ ਤੋਂ ਬੈਸਟ ਜਿਹੜਾ ਪਾਣੀ ਹੁੰਦਾ ਯੂਟਿਲਾਈਜ਼ ਕਰਨ ਲਈ ਉਹ ਦਰਿਆਈ ਪਾਣੀ ਦਾ ਰਿਸੋਰਸ ਹੁੰਦਾ ਫਰੈਸ਼ ਵਾਟਰ ਕਦੇ ਵੀ ਐਗਰੀਕਲਚਰਲੀ ਰეკਮੈਂਡਡ ਨਹੀਂ ਹੈਗਾ ਕਿਤੇ ਹੁਣ ਪੰਜਾਬ ਕੋਲ ਉਹ ਪਾਣੀ ਸੀ ਦੂਜੇ ਪਾਸੇ ਦੇਸ਼ ਦੀ ਲੋੜ ਸੀ ਭੁੱਖ ਮਰੀ ਨਾ ਮਰ ਰਹੀ ਸੀ ਉਹਨਾਂ ਨੇ ਪੰਜਾਬ ਨੂੰ ਚੂਜ਼ ਕਰ ਲਿਆ ਜਿਹਦੇ ਵਿੱਚ ਇੱਕ ਕੈਪਟਲਿਸਟ ਵਰਡ ਇੱਕ ਜਿਹੜੀਆਂ ਜਿਹੜੇ ਦਵਾਈਆਂ ਵਾਲੀਆਂ ਕੰਪਨੀਆਂ ਤੇ ਉਹ ਸਾਰਾ ਨੈਕਸਸ ਰਲ ਗਿਆ ਇੱਕ ਬੰਨੇ ਸਟੇਟ ਦੀ ਲੋੜ ਸੀਗੀ ਉਹਨਾਂ ਨੂੰ ਉਹ ਲੋਕ ਚਾਹੀਦੇ ਸੀ ਜਿਹੜੇ ਮਿਹਨਤੀ ਸੀ ਜਿਹੜੇ ਮਰ ਸਕਦੇ ਸੀ ਦਿਨ ਰਾਤ ਤੇ ਉਹ ਸਾਰਿਆਂ ਦਾ ਟੱਡ ਪੜ ਸਕਦੇ ਸੀਗੇ ਤੇ ਉਹ ਇੰਨੀ ਉਹਨਾਂ ਨੂੰ ਪ੍ਰੋਫਿਟ ਵੀ ਦਿੰਦਾ ਸੀਗਾ ਕਿ ਜਦੋਂ ਹੁਣ ਇਹ ਝੋਨਾ ਆਇਆ ਤਾਂ ਦੇਖੀਏ ਸਾਰੇ ਤਰੀਕੇ ਨਾਲ ਲਾਈਫ ਦੇ ਵਿੱਚ ਇੱਕਦਮ ਚੇਂਜ ਆਈ ਆ ਉਹ ਜਿਹੜੀ ਇਨਿmediate ਤਾਂ ਉਹ ਜਾਣ ਸਕਦੇ ਜਿਨ੍ਹਾਂ ਨੂੰ ਸਾਰੇ ਚੀਜ਼ ਦਾ ਪਤਾ ਇੱਕ ਅਨਪੜ੍ਹ ਕਿਸਾਨ ਨੂੰ ਉਹਦਾ ਕੋਈ ਪਤਾ ਨਹੀਂ ਝੋਨਾ ਸਾਨੂੰ ਲਿਆ ਕੇ ਦੇਤਾ ਯੂਨੀਵਰਸਿਟੀਆਂ ਦੇ through ਦੇਤਾ ਉਸ ਤਰ੍ਹਾਂ ਦੀ ਜਿਹੜੀ ਬਹੁਤਾਤ ਜੀ ਕੀੜੇ ਮਾਰ ਦਵਾਈਆਂ ਜੁਨਾ ਦੇ ਕਾਂਸੀਕਵੈਂਸਸ ਐਕ ਕਿਸਾਨ ਨੂ ਨਹੀਂ ਸੀ ਪਤਾ ਪਰ ਜਿਹੜੇ ਉਹਦੇ ਕੋਲ ਉਸ ਵੇਲੇ ਅਵੇਲੇਬਲ ਵੀ ਸੀਗਾ ਪਾਣੀ ਉਹ ਵੀ ਉਹਨੂੰ ਨਹੀਂ ਦਿੱਤਾ ਗਿਆ ਠੀਕ ਆ ਉਹਨੂੰ ਇੱਕ ਇਹਜਾ ਆਲਟਰਨੇਟਿਵ ਵੱਲ ਧੱਕਿਆ ਉਸ ਫਸਲ ਦੀ ਉਹ ਜ਼ਰੂਰਤ ਤੁਸੀਂ ਪਾ ਰਹੇ ਉਹ ਫਸਲ ਹੋ ਨਹੀਂ ਸਕਦੀ ਸੋ ਉਹਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਵੀ ਉਹ ਜਿਹੜੀ ਫਸਲ ਦਾ ਪੈਟਰਨ ਆ ਉਹ ਬਹੁਤ ਪਾਣੀ ਦੀ ਮੰਗ ਕਰਦਾ ਪਰ ਨਾ ਤਾਂ ਉਹ ਬਾਇ ਚੋਇਸ ਆ ਤੇ ਨਹੀਂ ਜਿਹੜਾ ਉਹ ਅਲਟਰਨੇਟਿਵ ਕਿਸਾਨੀ ਨੇ ਪੰਜਾਬ ਦੀ ਨੇ ਚੂਸ ਕੀਤਾ ਉਹ ਵੀ ਇਸ ਕਰਕੇ ਕਰ ਲਿਆ ਵੀ ਉਹਨਾਂ ਨੂੰ ਸ਼ੌਕ ਜਿਹੜੀ ਇਰੀਗੇਸ਼ਨ ਦੀ ਲੈਂਡ ਆ ਉਹਨੂੰ ਮੈਰੀ ਪਾਣੀ ਅਵੇਲੇਬਲ ਹੀ ਹੈ ਉਧਰ ਉੱਥੇ ਕੋਈ ਡਿਵੈਲਪਮੈਂਟ ਹੀ ਨਹੀਂ ਹੋਈ ਜਿੰਨੀ ਡਿਵੈਲਪਮੈਂਟ ਤਾਂ ਮਹਿਰਾਂ ਦੀ ਅੰਗਰੇਜ਼ਾਂ ਵੇਲੇ ਦੀ ਆ ਬਹੁਤ ਥੋੜੀ ਡਿਵੈਲਪਮੈਂਟ ਆ ਜਿਹੜੀ ਪੰਜਾਬ ਲਈ ਕੀਤੀ ਆ ਬਾਕੀ ਮੇਜਰ ਸਾਰੀ ਡਵੈਲਪਮੈਂਟ ਜਿੰਨੀ ਕਨਾਲ ਸਿਸਟਮ ਦੀ ਹੋਈ ਆ ਉਹ ਪੰਜਾਬ ਦਾ ਪਾਣੀ ਬਾਹਰ ਲੈ ਕੇ ਜਾਣ ਲਈ ਹੋਈ ਆ ਪੰਜਾਬ ਲਈ ਪੰਜਾਬ ਲਈ ਕੋਈ ਨਹੀਂ ਹੋਈ 28% ਤੁਹਾਡੀ ਟੋਟਲ ਲੈਂਡ ਕੋਲ ਉਹ ਜਿਹੜਾ ਨਹਿਰੀ ਪਾਣੀ ਐਕਸੈਸਿਬਲ ਹੋ ਬਾਕੀ ਕੀ ਕਰੂਗੀ ਬਾਕੀ ਕੋਲ ਕੋਈ ਚਾਰਾ ਲਈ ਇਹਨਾਂ ਨੇ ਜਦੋਂ ਆਪਾਂ ਵੈਕ ਜਾਂਦੇ ਆ 1955 ਤੇ ਵੀ ਗਰਭਾਰੀ ਲਾਲ ਲੰਦਾ ਹੁਣ ਜਿਹੜੀਆਂ ਪੋਲਿਸੀਆਂ ਤੇ ਜਾਂਦੇ ਆ ਉਹ ਕਹਿੰਦੇ ਰਲਫਿੰਗ ਨਾਨੇ ਉਹ ਵਾਟਰ ਨੂੰ ਯੂਜ਼ ਕੀਤੀ ਹੈ ਟਰਮ ਵੀ ਜਿੱਥੇ ਬੰਦੇ ਦੇ ਦਿੰਨੇ ਆ ਪਰ ਉਹ ਜਿਵੇਂ ਪੰਜਾਬੀ ਚ ਇੱਕ ਕਹਾਵਤ ਆ ਵੀ ਮੁਰਗੀ ਦਾ ਢੱਡ ਪਾਲ ਲਉਗੇ ਕਿੰਨਾ ਚਾਰਾਂ ਦੇ ਖਾਓਗੇ ਉਹੋ ਚੀਜ਼ ਪੰਜਾਬ ਨਾਲ ਹੋਈ ਆ ਪੰਜਾਬ ਦਾ ਜਦੋਂ ਹੁਣ ਕਿਹਾ ਜਾਂਦਾ ਵੀ ਕਿਸਾਨੀ ਜ਼ਿੰਮੇਵਾਰ ਆ ਕਿਸਾਨੀ ਸਿੱਧੀ ਨਹੀਂ ਹੈਗੀ ਉਹ ਫਸਲ ਲੈ ਕੇ ਦਿੱਤੀ ਤੇ ਉਹਦੇ ਲਈ ਜਿਹੜਾ ਅਵੇਲੇਬਲ ਰਿਸੋਰਸ ਸੀ ਉਹ ਤਾਂ ਖੋਲਿਆ ਤੇ ਉਹਨੂੰ ਇੱਕ ਫੋਰਸ ਕੀਤਾ ਅਲਟਰਨੇਟਿਵ ਇਹਦੇ ਵੱਲ ਜਿਹੜਾ ਕਾਰਨ ਬਣਿਆ ਸੋ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਟੇਟ ਹੋਇਆ 60 ਚ ਪਤਾ ਸੀ ਲਿਜਾ ਕੇ ਅਸੀਂ 2017 ਤੱਕ 50 ਸਾਲ ਤੱਕ ਖੱਜਲ ਕਰਕੇ ਜਮ੍ਹਾਂ ਹੀ ਰੋੜ ਦੇਣੇ ਰੋੜ ਬਣਾ ਲੈਣੇ ਨੇ ਨੂੰ ਪਤਾ ਸੀ ਉਸ ਸਮੇਂ ਉਸ ਸਮੇਂ ਸੀ ਜਾਂ ਇਹ ਨੀਤੀ 'ਚ ਫਰਕ ਹੋਣਾ ਹੈ ਇਹ ਬਿਲਕੁਲ ਵੀਰ ਜੀ ਅਸਲ ਜਿਵੇਂ ਤੁਸੀਂ ਪਹਿਲਾਂ ਵੀ ਸ਼ੁਰੂ ਚ ਸਵਾਲ ਕੀਤਾ ਸੀ ਇਸ ਡਾਕੂਮੈਂਟਰੀ ਨੂੰ ਕਿਉਂਕਿ ਬਹੁਤ ਚੀਜ਼ਾਂ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਹੁੰਦਾ ਵੀ ਅੱਜ ਵੀ ਅੱਪਾਂ ਜਿੰਨੇ ਵੀਰ ਬੈਠਿਆ ਸਾਰੇ ਕੋਈ ਕਲੇਮ ਨਹੀਂ ਕਰਦਾ ਸਾਨੂੰ ਬਹੁਤ ਪਤਾ ਜਿੰਨਾ ਕੁ ਪਤਾ ਉਹ ਸ਼ੇਅਰ ਕਰਨ ਦੀ ਟਰਾਈ ਕਰਦਾ ਹਲੇ ਵੀ ਬਹੁਤ ਕੁਸ਼ਾ ਜਿਹੜਾ ਨਹੀਂ ਪਤਾ ਇਸ ਚੀਜ਼ ਨੂੰ ਮੈਂ ਬਹੁਤ ਮੇਰੇ ਰੀਲਾਈਜ਼ ਕੀਤਾ ਕਿਉਂਕਿ ਇਹ ਜਿਹੜੀ ਡਾਕੂਮੈਂਟਰੀ ਫਿਲਮ ਅਸਲ ਚ ਇਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਸੀ ਵੀ 1984 ਦਾ ਜਿਹੜਾ ਦਖਾਨਤਾ ਉੱਥੋਂ ਨੂੰ ਸਮਝਿਆ ਜਾਵੇ ਬਈ ਇਹ ਹੋਇਆ ਕਿਉਂ ਪਰ ਜਦੋਂ ਇਹ ਤੁਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਉਹਦੇ ਵਿੱਚੋਂ ਇੰਨਾ ਕੁਝ ਨਿਕਲ ਆਇਆ ਵੀ ਹਲੇ ਜਾਨੀ ਸਾਰਾ ਨਹੀਂ ਹੈਗਾ ਸੋ ਤੁਹਾਡਾ ਜਿਹੜਾ ਕੁਐਸਚਨ ਆ ਵੀ ਇਹ ਅਚਾਨਕ ਹੋ ਗਿਆ ਜਾਂ ਇਹ ਇੱਕ ਬਹੁਤ ਕਰਕੇ ਚੀਜ਼ ਕੀਤੀ ਗਈ ਆ ਮੇਰਾ ਮੰਨਣਾ ਇਸ ਫਰੂ ਜਿੰਨਾ ਮੈਨੂੰ ਪਤਾ ਲੱਗਿਆ ਐਕਸਪਰਟਸ ਨਾਲ ਗੱਲਬਾਤਾਂ ਕਰਨ ਇਹ ਇੱਕ ਬਹੁਤ ਵੱਡੀ ਲੌਂਗ ਟਰਮ ਪਲਾਨ ਦਾ ਹਿੱਸਾ ਜਿਹਦੇ ਵਿੱਚ ਕਿਉਂਕਿ ਯੂਪੀ ਨੇ ਸੇਮ ਜਿਹੜੀ ਪੀਐਜੂ ਬਣੀ ਹੋਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ ਪ੍ਰੋਜੈਕਟ ਜੀਪੀ ਕੋਲ ਜਾਂਦਾ ਸੀਗਾ ਯੂਪੀ ਨੇ ਉਹਨੂੰ ਡਿਵਾਈ ਕੀਤਾ ਡਿਵਾਈ ਇਹਦਾ ਸੈਂਸ ਉਹ ਸਰਟਨ ਚੀਜ਼ਾਂ ਤੇ ਐਗਰੀ ਨਹੀਂ ਹੋਏ ਕਿਉਂਕਿ ਉਹ ਹੁਣ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਦੁਨੀਆ ਤੇ ਇਹ ਤਾਂ ਜਿਹੜੀ WHO ਨੇ ਵੀ ਕਿਹਾ ਤਾਂ ਜਮਨੀ ਰეკਮੈਂਡਡ ਜਿਹੜੀ ਪੈਸਟਿਸਾਈਜ਼ ਜਾਂ ਮਾਰ ਦਵਾਈਆਂ ਦੁਨੀਆਂ 'ਚ ਕਹਿੰਦਾ ਪਾ ਪੰਜਾਬ ਉਦੋਂ 25 ਦੇ ਕਰੀਬ ਜ਼ਿਆਦੇ ਕੀੜੇ ਮਾਰ ਦਵਾਈਆਂ ਵਰਤਦਾ ਉਹ ਕਿਉਂ ਵਰਤਦਾ ਕਿਉਂਕਿ ਉਹ ਜਿਹੜੀ ਫਸਲ ਆ ਦੂਜੀ ਵਰਤਦਾ ਵੀ ਕਿਹੜੀਆਂ ਆ ਜਿਹੜੀਆਂ ਥਰਡ ਗ੍ਰੇਡ ਆ ਹੋਰ ਕੀ ਇਹਦੇ ਕਾਂਸੀਕੁਐਂਸ ਆ ਕੀ ਹੋਣੇ ਆ ਸਾਨੂੰ ਦਿਸਣ ਲੱਗਾ ਫਸਲ ਤੇ ਪਰ ਜੇ ਅਜ ਤੋਂ 20 ਸਾਲ ਪਹਿਲਾਂ ਫਿਮਟ ਦੀ ਦੁਨੀਆ ਦੇ ਵਿੱਚ ਪਵੰਦੀ ਆ ਫਿਮਟ ਤੋਂ ਸਾਡੇ ਅੱਜ ਤੱਕ ਚੱਲਦੀ ਐ ਹਰੇਕ ਦੇ ਘਰੇ ਤੁਹਾਨੂੰ ਪਤਾ ਇਹ ਪ੍ਰੋਡਕਟ ਤੇ ਤਾਂ ਬੈਨ ਆ ਬੈਨ ਕਿਸੇ ਕਾਰਨ ਕਰਕੇ ਤਾਂ ਲੱਗਿਆ ਉਹ ਜਿਹੜਾ ਸਾਰਾ ਪ੍ਰੋਡਕਟ ਸੀ ਜਿਹੜੇ ਡਿਵੈਲਪ ਕੰਟਰੀ ਚ ਵਰਤਨੀ ਸੀ ਹੋ ਰਿਹਾ ਉੱਥੇੋਂ ਸਿੱਪਤਾ ਉਹ ਕਿਉਂਕਿ ਸੀਗਾ ਜਿਹੜਾ ਪੈਸਾ ਕਮਿਸ਼ਨ ਤੇ ਜਿਹੜੀਆਂ ਕੰਪਨੀਆਂ ਸਾਰਾ ਇੱਕ ਨੈਕਸਸ ਦੇ ਤੌਰ ਤੇ ਰਲ ਗਈਆਂ ਪਰ ਉਹਦਾ ਸ਼ਿਕਾਰ ਹੋ ਕੇ ਅਸੀਂ ਅਸੀਂ ਟਕਤਾ ਪਰ ਅਸੀਂ ਆਪ ਉੱਜੜ ਗਏ ਮਬਾਰਕ ਖੰਡੀਸ਼ ਨਵਾਬ ਸੁਨੀਲ ਜੀ ਨਾਲ ਗੱਲ ਕਰਾਂਗੇ ਵੀ ਆਮ ਲੋਕਾਈ ਇਹਨਾਂ ਗੱਲਾਂ ਤੱਕ ਪਹੁੰਚ ਕਿਉਂ ਨਹੀਂ ਰੱਖਦੇ ਕਿੰਨਾ ਕੁਸ਼ਾ ਹੁਣ ਇਹ ਫੋਟੋ ਪਾਉਣ ਦੇ ਜੀ ਫਲਾਣੇ ਕਿ ਘਰਾਂ ਦੇ ਵਿੱਚ 70 ਬਿਛ ਰਹੇ ਨੇ ਜਿਹੜੀ ਬੈਲਟ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਫਲਾਣ ਕਰ ਦੇਵਾਂਗੇ ਕਰ ਦੇਵਾਂਗੇ ਉੱਥੇ ਲੋਕ ਮਰ ਰਹੇ ਨੇ ਬੀਕਾ ਨੂੰ ਟレインਾਂ ਭਰੀਆਂ ਜਾਂਦੀਆਂ ਨੇ ਤੇ ਕੈਂਪ ਲੱਗ ਰਹੇ ਨੇ ਹਰ ਪਿੰਡ ਦੇ ਵਿੱਚ ਮੰਦਬੁੱਧੀ ਜਵਾਕ ਜੰਮ ਰਹੇ ਨੇ ਉਰੇਨੀਅਮ ਲੈਡ ਪਤਾ ਹੀ ਨਹੀਂ ਕਿ ਸੰਖੀ ਇੰਨਾ ਪਾਣੀ ਚੋਂ ਨਿਕਲ ਰਿਹਾ ਤੇ ਕਿਸੇ ਨੂੰ ਇਸ ਗੱਲ ਦੀ ਸਖਰਤਾ ਕਿਉਂ ਨਹੀਂ ਵਪਾਰ ਖੰਡ ਦੇ ਬਾਅਦ ਸੀਨੀਲ ਸ਼ਰਮਾ ਜੀ ਨਾਲ ਗੱਲਬਾਤ ਕਰਾ ਜੀ ਮੈਨੂੰ ਇੱਕ ਗੱਲ ਸਮਝਾਇਆ ਕਿ ਆਪਾਂ ਅਲੱਗ-ਅਲੱਗ ਵਿਸ਼ਿਆਂ ਤੇ ਚਿਰਾਂ ਦੇ ਇੱਥੇ ਪਿਛਲੇ 12-15 ਸਾਲਾਂ ਤੋਂ ਇੱਕੋ ਮਤ ਦੇ ਜਿਹੜੇ ਆਪਾਂ ਇੱਕੋ ਮਤ ਦੇ ਬੰਦੇ ਆਪਾਂ ਅਕਸਰ ਦੁਨੀਆ ਦੇ ਵਿੱਚ ਕੋਈ ਵੀ ਕ੍ਰਾਈਸਿਸ ਬਾਰੇ ਗੱਲ ਕਰਦੇ ਆਂ ਚਾਹੇ ਯੂਕਰੇਨ ਦਾ ਚਾਹੇ ਸੀਰੀਆ ਦਾ ਚਾਹੇ ਅਫਗਾਨਿਸਤਾਨ ਦਾ ਚਾਹੇ ਰਾਕ ਦਾ ਲਿਬੀਆ ਦਾ ਪੰਜਾਬ ਦੇ ਲੋਕ ਜਿਹੜੀਆਂ ਗੱਲਾਂ ਅਸੀਂ ਉਹਦਾ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨਾ ਪਹਿਆਂ 'ਚ ਕੇ ਆ ਕੇ ਦੇਸੀ ਸਕੂਲਾਂ 'ਚ ਪੜ੍ਹ ਕੇ ਇੱਥੇ ਬੈਠ ਕੇ ਗੱਲਾਂ ਕਰਦੇ ਆਂ ਪੰਜਾਬ ਦੇ ਲੋਕ ਉਸ ਤਰ੍ਹਾਂ ਨਹੀਂ ਸੋਚਦੇ ਸਾਡਾ ਪਾਣੀ ਮੁੱਕ ਰਿਹਾ ਦੇਖੋ ਗੱਲ ਇਹ ਆ ਕਿ ਪੰਜਾਬੀ ਆ ਤਾਂ ਇਹ ਦੇਵ ਸਦੀਪ ਸਿੰਘ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਸੀਗਾ ਜੀ ਕਿ ਜਿਹੜੇ ਬੰਦਿਆਂ ਨੂੰ ਸਮਝ ਹੈਗੀ ਆ ਹੂੰ ਉਹਨਾਂ ਨੂੰ ਅੱਗੇ ਜਿਨ੍ਹਾਂ ਨੂੰ ਨਹੀਂ ਸਮਝ ਇਨਫੋਰਮੇਸ਼ਨ ਦੇਹੀ ਤਾਂ ਹੀ ਸਮਝ ਆਉਗੀ ਨਾ ਹੂੰ ਐਜੂਕੇਸ਼ਨ ਤਾਂ ਇਹੀ ਆ ਗੋਡੇ ਐਗਜ਼ਾਮਪਲ ਮੈਂ ਥੋੜਾ ਜਿਹਾ ਕਰਦਾ ਹੂੰ ਥ੍ਰੀਸਰ ਐਗਜ਼ਾਮਪਲ ਯੂਪੀ ਵੀ ਹੂੰ ਗੋਬੀਤਪਾਲੋਂ ਪੰਚ ਸੀਗਾ ਜੀ ਯੂਪੀ ਦਾ ਚੀਫ ਮਿਨਿਸਟਰ ਇਹ ਹੋਇਆ ਸੀ ਜਿਹੜਾ ਭਾਰਤ ਸੀਗਾ ਸਾਰਾ ਉੱਥੇ ਭੁੱਖਮਰੀ ਫੈਲਦੀ ਸੀ ਹਮ ਗੋਰੇ ਛੱਡ ਕੇ ਨੇ ਦੇਖਿਆ ਵੀ ਇੱਥੇ ਦਾ ਸਿਵਨਵਾਰ ਹੋ ਜੂ ਰੋਟੀ ਬਿਨਾਂ ਤੇ ਉਸ ਉਹਨਾਂ ਕੋਲ ਬੈਠੇ ਕੋਈ ਸਾਧਨ ਨਹੀਂ ਸੀ ਵੀ ਇਸ ਕੋਈ ਕੰਟਰੋਲ ਕਰ ਸਕਣ ਹਮ ਫਿਰ ਇੱਕ ਪਲਾਨ ਐਲ ਜਿਹਦੇ ਵਿੱਚ ਇਹ ਕੀਤਾ ਗਿਆ ਕਣਕ ਜਿਹੜੀ ਆ ਦੇਸੀ ਕਣਕ ਉਹੀ ਕਣਕ ਦਾ ਨਵਾਂ ਬੀਜ ਆ ਜੋ ਨਾਂ ਬਣਾ ਕਲਿਆਣ ਬਿਲਕੁਲ ਇਹ ਤੁਹਾਡਾ ਕਲਿਆਣ ਕਲਿਆਣ ਨਾਲ ਨਾਲ ਉਹਨੂੰ ਝਾੜ ਵਾਸਤੇ ਸੱਤੀ ਸਾਈਡ ਦੀ ਵੀ ਲੋੜ ਸੀ ਉਹਨੂੰ ਖਾਦਾ ਦੀ ਵੀ ਲੋੜ ਸੀਗੀ ਉਹਨੂੰ ਵੱਧ ਪਾਣੀ ਦੀ ਵੀ ਲੋੜ ਸੀ ਤੇ ਮੈਂ ਕਣਕ ਦੀ ਗੱਲ ਕਰ ਰਿਹਾ ਬੜਾ ਵਈਆ ਲੱਗਿਆ ਪਰ ਜਦੋਂ ਪੰਜਾਬ ਨੂੰ ਤੇ ਯੂਪੀ ਚ ਵੀ ਬੜੀ ਵਈਆ ਜਿਹੜਾ ਪਰ ਯੂਪੀ ਵਾਲਾ ਜਿਹੜਾ ਬੰਦਾ ਸੀਗਾ ਉਹਨੇ ਗਾ ਕਰ ਦਿੱਤੀ ਕਿ ਸਾਨੂੰ ਲੋੜ ਸਾਡੀ ਜ਼ਮੀਨ ਹੋਣੀ ਖਰਾਬ ਹੂੰ ਵੀ ਰੱਖੋ ਇਹ ਪੰਜਾਬੀਆਂ ਨੂੰ ਐਜ਼ ਏ ਐਕਸਪੈਰੀਮੈਂਟ ਦੇ ਮਗਲਪੀ ਦੇ ਪਾਸੇ ਯੂਜ਼ ਕੀਤਾ ਗਿਆ ਆ ਸਾਡਾ 4:00 ਵਜੇ ਯਾ 70 ਦੇ ਵਿੱਚ ਆ ਉਹਦੇ ਵੀ ਤਾਂ ਪਰ ਸਿੱਕਤੇ ਇੰਡੀਆ ਦੇ ਵਿੱਚ ਕਰਨੋਂ ਨਾਲੋਂ ਜ਼ਿਆਦਾ ਕਣਕ ਲੱਗਦੀ ਫੇਰ ਹੌਲੀ ਹੌਲੀ ਪਾਣੀ ਜਿਹੜਾ ਸੀ ਉਹਨੂੰ ਚਾਹੀਦਾ ਸੀਗਾ ਪਾਣੀ ਆ ਸਿੱਕੂ ਬਲ ਹੁਣ ਤੁਸੀਂ ਮੈਂ ਦੂਜੇ ਪਾਸੇ ਆ ਦੀ ਗੱਲ ਕਰਦੇ ਆ ਮੇਰਾ ਇੱਕ ਦੋਸਤ ਪੀਏਯੂ ਚ ਪੜਿਆ ਰਹਿੰਦਾ ਪਰ ਅੰਦਰ ਕਹਿੰਦਾ ਲੱਗਿਆ ਇੱਕ ਪੈਸਿਫਾਈਡ ਚ ਉਹ ਲੱਗਿਆ ਸੀਗਾ ਅਬੋਰ ਫਾਜ਼ਲਕਾੜੀ ਬੰਟ ਚਿੰਨੜਮੇ ਵਾਲੀ ਉੱਥੇ ਇੱਕ ਹੈਕਸ ਕੰਪਨੀ ਜਿਹੀ ਜਿਹਾ ਰਿਪਰੈਜ਼ੈਂਟੇਟਿਵ ਸੀਗਾ ਉਹਨੇ ਮੈਨੂੰ ਦੱਸਿਆ 10 ਲੀਟਰ ਦੀ ਇਹ 1 ਲੀਟਰ ਜਿਹੜੇ ਪੈਸਟੀਸਾਈਜ਼ ਆ ਪੈਂਦਾ ਟਾਈਮ ਚਾਹੀਦਾ ਕਹਿੰਦਾ ਜੇ ਆ ਕਹਿੰਦਾ ਜਿਹੜਾ ਜ਼ਿਆਦਾਤਰ ਬੰਦੇ ਸੀਗੇ ਨਥੀ ਜੇਸਟ ਕੋਲ ਸਾਡੀਆਂ ਕੰਪਨੀਆਂ ਦਿਲਸ਼ੇਪ ਹੈ ਵੀ ਇਹ ਕਹਿੰਦਾ ਜੱਟ ਉਹਦਾ ਖੜਾਉਂਦੇ ਆ ਉਹ ਕਹਿੰਦਾ ਉਹਨੂੰ ਨੂੰ ਲੱਗਦਾ ਦੀ ਜੇ ਸੀ 20 ਲੀਟਰ ਇੱਕ ਵੀ ਪਾ ਦੇ ਆਗੇ ਨੇ ਸਰਕਾਰਾਂ ਨੇ ਦਵਾਈਆਂ ਪਾਲੀਆਂ ਇਸ ਅੱਜ ਉਥੇ ਇਹ ਹਾਲ ਆ ਚਾਹੀ ਨਰਮੇ ਦੀ ਬੈਲਟ ਆ ਚਾਹੀ ਆਪਣੀ ਗੁਜਰ પાસે ਬੈਲਟ ਆ ਉਥੇ ਕੈਂਸਰ ਹੈਗੀ ਆ ਵੱਧ ਕੇ ਉਹ ਤੁਹਾਨੂੰ ਕਹਿੰਦਾ ਪੰਜਾਬੀਆਂ ਦੀ। ਹੂੰ। ਦੇਖੋ ਪੰਜਾਬੀ ਜਿਹੜੇ ਆ ਮੈਂ ਇੱਕ ਗੱਲ ਕਹਿਣਾ ਸਾਨੂੰ ਆਪਣੇ ਬਾਰੇ ਵੀ ਜੀ ਕੁਝ ਨਹੀਂ ਪਤਾ। ਐਸੇ ਬੈਠਾ ਵੀ ਕਹਿ ਰਿਹਾ। ਸਾਡੀ ਲੈਣ ਲੱਗ ਪੇਂਓ। ਉਹ ਅਚੀਵ ਕਰ ਸਕਦੇ। ਹਿਸਟਰੀ ਸਾਡੀ ਗਲਤ ਦੱਸੀ ਜਾ ਰਹੀ ਆ ਉਹਦੇ ਵਾਸਤੇ ਵੀ ਸਾਨੂੰ ਲੱਭਣੀ ਵੀ ਲੋੜ ਆ। ਸਾਨੂੰ ਪਤਾ ਅਗਲਾ ਫਿਚਰ ਕੀ ਬਣਾਣਾ। ਹੂੰ। ਸਾਨੂੰ ਕੁੱਟਿਆ ਗਿਆ। ਹੂੰ। ਚ ਕੁੱਟ ਪੈ ਗਿਆ ਸਾਨੂੰ ਸਰ ਦਾ ਉਸ ਤੋਂ ਬਾਅਦ ਵੀ ਇਸ ਹੱਦ ਤੱਕ ਹੈ ਕਿ ਜੋ ਮਰਜ਼ੀ ਕਹੋ ਕਿ ਇਹ ਆਪਾਂ ਐਜੀਟੇਸ਼ਨ ਦੇਖਦੇ ਆਂ ਉਹ ਆਪਾਂ ਤਾਂ ਚਲੋ ਜੰਮੇਗੇ ਨਹੀਂ ਸੀਗੇ ਪਰ ਉਸ ਤੋਂ ਪਹਿਲਾਂ ਇਹ ਐਜੀਟੇਸ਼ਨ ਮਾਹੌਲ ਦੇ ਵਿੱਚ ਕੀ ਹੁੰਦਾ ਨੌਕਣ ਹੋਰ ਕੋਈ ਸੰਕਟ ਨਹੀਂ ਹੁੰਦੀ ਪਰ ਅੱਜ ਬਾਜੇ ਸ਼ਿਕਾਰ ਆਂ ਜਿਹੜੀ ਤੁਸੀਂ ਗੱਲ ਕੀਤੀ ਆ ਸਿੱਖਾਂ ਨੂੰ ਇਹ ਸ਼ਬਦ ਸਿੱਖਾ ਨਹੀਂ ਇਹ ਸ਼ਬਦ ਆ ਰਿਹਾ ਇਹ ਲੋਹੇ ਬਾਇ ਉਹ ਦੱਸਿਆ ਨਹੀਂ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਚਾਹੀਦਾ ਸੀ ਮਿਲਾਈਆਂ ਨਹੀਂ ਚਾਹੀਦਾ ਸੀ ਇਹਦੀ ਅਪਰੋਚ ਗਲਤ ਹੋਈ ਜੇ ਮੇਰੇ ਰੀਜ਼ ਨੇ ਪਹਿਲਾਂ ਕਿਹਾ ਸੀ ਉਸ ਟਾਈਮ ਪੋਲਿਟਿਕਲ ਇੱਕ ਲੜਾਈ ਚੱਲ ਰਹੀ ਸੀ ਤਾਂ ਉਹ ਕਹਿੰਦੇ ਸੀ ਅਸੀਂ ਲੈ ਅਸੀਗਾ ਪਾਣੀ ਬਿਲਕੁਲ ਸਰਕਾਰਾਂ ਦੀ ਨੀਤ ਖਰਾਬ ਹੈ ਤੇ ਪੇਪਰ ਜਿਹੜਾ ਸੀਗਾ ਉਹ ਨਹੀਂ ਚੱਲਦਾ ਪੇਪਰ ਸੰਭ ਚੱਲਿਆ ਸੀ ਨਾ ਪੇਪਰ ਹਰ ਚੰਗੀ ਮੰਗਵਾਤੀ ਬਿਲਕੁਲ ਪਰ ਉਹਦੇ ਕਰਕੇ ਸਾਡਾ ਇੰਨਾ ਨੁਕਸਾਨ ਹੋਇਆ ਅੱਜ ਜਿੱਥੇ ਆਪਾਂ ਬੈਠ ਕੇ ਗੱਲ ਕਰ ਰਹੇ ਆ ਇਹ ਗੱਲ ਅੱਜ ਇਸ ਕਰਕੇ ਵੀ ਜੁੜੀ ਹੈ ਆ ਰਹੀ ਹੈ ਚੋਣਾਂ 'ਚ ਕਿਸੇ ਪਾਰਟੀ ਦਾ ਕੋਈ ਮੁੱਦਾ ਨਹੀਂਗਾ ਪਾਣੀਆਂ ਤੋਂ ਬਗੈਰ ਸਾਡੀ ਜਿਹੜੀ ਆ ਉੱਥੇ ਖਤਮ ਹੋਣਾ ਲਾਜ਼ਮੀ ਹੈ ਉਕੇ ਉਹ ਕੈਲੀਫੋਰਨੀਆ ਦਾ ਉਦਾਹਰਣ ਦੇਖ ਲਓ ਕਿੰਦਾ ਜਿਹੜੇ 2 ਸਾਲ ਨਹੀਂ ਨਹੀਂ ਹੈ ਜਿਹੜਾ ਸਪਲਾਈ ਲੈ ਆਪਾਂ ਰੇਗਿਸਤਾਨ ਦੇ ਇਲਾਕੇ ਜੇ ਹੋ ਗਿਆ ਸਾਡੇ ਕੋਲ ਤਾਂ ਸਾਡਾ ਜਿਹੜਾ ਇਲਾਕਾ ਹੈਗਾ ਉਹਦੇ ਵਾਸਤੇ ਜਿਉਣਾ ਪਾਣੀ ਆ ਉਹ ਘਟਾ ਸਾਨੂੰ ਦਾ ਜਿਹੜਾ ਗੁਜਰਾ ਰੇਗਿਸਤਾਨ ਜਿਹਦੇ ਵਾਸਤੇ ਮਾਰਨ ਦਾਸ ਤਾ ਤੇ ਉਥੇ ਇਹ ਜਿਹੜਾ ਦਿੱਤਾ ਜਾ ਰਿਹਾ ਪਾਣੀ ਇਹ ਕੱਖ ਨਹੀਂ ਕੱਖ ਨਹੀਂ ਕਰਨਾ ਇਹਦੇ باوجود ਜਦੋਂ ਬਦਲ ਨਹੀਂ ਕੀਤਾ ਜਾ ਰਿਹਾ ਇਹਦੇ ਵਾਸਤੇ ਅੱਛਾ ਜੀ ਵਿਦੇਸ਼ਾ ਜੀ ਫਿਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਤਕਨੀਕੀ ਮਾਮਲੇ ਤੇ ਕਮਿਸ਼ਨ ਨੇ ਬਹੁਤ ਧੱਕਾ ਕੀਤਾ ਜਿਹੜਾ ਸਰਕਾਰਾਂ ਟ੍ਰਾਈਬਿਊਨਲ ਬਣਾਉਂਦੀਆਂ 84 ਦੇ ਸਾਡੇ ਕਤਲੇਆਮ ਚ ਬਣਾਏ ਨੇ ਉਹਨਾਂ 'ਚ ਕੱਖ ਨਹੀਂ ਮਿਲਿਆ ਜੱਸ ਜਲੇਰ ਜੱਸ ਡਿਨਾਈਡ ਜਿਉ ਜਿਉ ਬਣਾਈ ਗਏ ਤੇ ਉਤੋਂ ਅਸੀਂ ਭੁੱਲੇ ਗਏ ਪਹਿਲੀ ਜਿਹੜੀ ਜਨਰੇਸ਼ਨ ਵਾਈਪ ਆਊਟ ਹੋ ਗਈ 30 ਸਾਲ ਲੰਘੇ ਖਤਮ ਹੋ ਗਈ ਕਮਿਸ਼ਨ ਖਾਸ ਸੀ ਇਹਨੇ ਤਾਂ ਸਾਨੂੰ ਤੁਸੀਂ ਰਿਪੇਰੀਅਨ ਲਾ ਜਿਹੜਾ ਕਹਿੰਦੇ ਉਹ ਤੁਹਾਡੀ ਹਿੱਕ ਤੇ ਵਗਦੇ ਦਰਿਆ ਜਿਹੜੇ ਤੁਹਾਡੇ ਦਿਸ ਨੇ ਇਹ ਵੀ ਅਸੀਂ ਤਾਂ ਅੜਾ ਦੇ ਆ ਦਾ ਪਾਣੀ ਸਾਡੇ ਪਾਣੀ 'ਚ ਗੱਲਿਆ ਇਹਨੇ ਬਹੁਤ ਮਾਰ ਕੀਤੀ ਰਾਦੀ ਕਮਿਸ਼ਨ ਬੜਾ ਸਦਾ ਜੀ ਇਹ ਜਿਹੜਾ ਇਹ ਜਿਹੜਾ ਜਿਹੜਾ ਪਾਣੀ ਦੀ ਅਸੀਂ ਅਸੀਂ ਬੱਜ ਸਾਰੇ ਇੱਕ ਨਾਰਮਲ ਇਨਸਾਨ ਆ ਜਿਹੜੇ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਔਰ ਇਹ ਇਹ ਬਿਨਾ ਕਿਸੇ ਪੋਲਿਟੀਕਲ ਮੋਟਿਵ ਤੋਂ ਅਸੀਂ ਗੱਲ ਕਰ ਰਹੇ ਆ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਵੀ ਸਾਰੇ ਪੰਜਾਬੀਆਂ ਦਾ ਇਹ ਮਤਾ ਸਾਨੂੰ ਵੀ ਕੁਝ ਸਾਲ ਪਹਿਲਾਂ ਹੀ ਇਹ ਮਸਲੇ ਦੀ ਸਮਝ ਲੱਗੀ ਅਸੀਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਇਹ ਨਵੇਂ ਡਾਕੂਮੈਂਟ ਆ ਜੇ ਤੁਸੀਂ ਇਹਨੂੰ ਸਰਚ ਕਰੋ allele ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇੰਨੀਆਂ ਨਿਊਜ਼ ਆਇਆ ਕੇ ਕਿਹੜੇ ਕੁ ਪੋਲਿਟਿਕਲ ਬੰਦੇ ਨੇ ਤੋਂ ਹੁਣ ਤੱਕ ਦਾ ਤੇ ਬਹੁਤ ਜ਼ਿਆਦਾ ਡਾਕੂਮੈਂਟਸ ਨੇ ਤੁਹਾਨੂੰ ਖੁਦ ਸਰਚ ਕਰੋ ਇੱਥੇ ਪੜੋ ਇਹ ਨਾ ਕਹੋ ਵੀ ਜੋ ਅਸੀਂ ਕਹਿ ਰਹੇ ਹਾਂ ਤੁਸੀਂ ਸੱਚ ਮੰਨਣਾ ਜਾਂ ਨਹੀਂ ਮੰਨਣਾ ਤੁਸੀਂ ਆਪ ਸਰਚ ਕਰੋ ਇਹਨੂੰ ਪੜੋ ਰਾਜੀ ਟ੍ਰਿਬਿਨਲ ਦੇ ਵਿੱਚ ਜਦੋਂ ਇਹ ਰਾਜੀ ਬਣਿਆ ਜੀ ਉਹਨਾਂ ਨੇ ਕੀ ਕੀਤਾ ਪਾਣੀ ਉਥੇ ਤੱਕ ਦਰਿਆਵਾਂ ਦਾ ਮਿਲਦੇ ਆ ਜੀ ਜਿਹੜੇ ਮਾਰ ਦੱਸਦੇ ਆ ਵੀ ਜਿੱਥੋਂ ਤੱਕ ਪਾਣੀ ਯੂਜ਼ ਕੀਤਾ ਜਾ ਰਿਹਾ ਜਿਵੇਂ ਉਥੋਂ ਉੱਥੇ ਕੋਈ ਨਹਿਰ ਕੱਢੀ ਜਾ ਸਕੇ ਜਿਵੇਂ ਉਹਦਾ ਆਪਾਂ ਸਰਵੇ ਕਰੀਦਾ ਜਿਵੇਂ ਸਰਵੇ ਦੇ ਹਿਸਾਬ ਨਾਲ ਉਥੋਂ ਪਾਣੀ ਕਿਸੇ ਪਾਸੇ ਨੂੰ ਲਜਾਇਆ ਜਾ ਸਕੇ ਉਹਨੂੰ ਯੂਜ਼ ਕੀਤਾ ਜਾ ਸਕੇ ਚਾਹੇ ਡੋਮੈਸਟਿਕ ਲਈ ਐਗਰੀਕਲਚਰ ਲਈ ਜਾਂ ਕਿਸੇ ਵੀ ਆਪਣੀ ਕੋਸਟ ਸਟੇਟ ਦੀ ਜ਼ਰੂਰਤ ਲਈ ਉਹਨਾਂ ਨੇ ਉਸ ਪੁਆਇੰਟ ਤੋਂ ਗਾਂ ਵਾਲੇ ਪਾਣੀ ਵੀ ਜਿਹੜਾ ਰਲਦਾ ਸੀਗਾ ਜਿਵੇਂ ਕੋਈ ਢਾਲਾ ਰਲਦਾ ਸੀ ਕੋਈ ਛੋਟਾ ਉਹਦੇ ਵਿੱਚ ਕੋਈ ਬੀਂਹ ਰਲਦੀ ਸੀ ਉਹਨਾਂ ਉਹਨਾਂ ਦਾ ਪਾਣੀ ਉਹਦੇ ਵਿੱਚ ਰਲਾ ਕੇ ਉਦੀ ਮਕਦਾਰ ਵਧਾ ਕੇ ਵੰਡ ਦਿੱਤਾ ਜੀ ਪਾਣੀ ਨੂੰ ਦੁਬਾਰਾ ਰੇਸ਼ੋ ਦੇ ਨਾਲ ਉਹਦੇ ਨਾਲ ਕੀ ਹੋਇਆ ਵੀ ਜਿਹੜਾ ਪੰਜਾਬ ਦੇ ਕੋਲ ਫੈਸਲੇ ਦੇ ਨਾਲ ਮੈਂ ਸਿਰਫ ਆ ਦੋਕ ਲਾਈਨਾਂ ਪੜ੍ਹ ਕੇ ਦੱਸਣੀਆਂ ਚਾਹੁੰਦਾ ਸਰੋਤਿਆਂ ਨੂੰ ਤੁਸੀਂ ਆਪ ਵੀ ਸੱਚ ਕਰ ਸਕਦੇ ਰਾਡੀ ਟ੍ਰਿਬਿਊਨਲ ਦੇ ਵਿੱਚ ਜਦੋਂ ਰਾਡੀ ਟ੍ਰਿਬਿਊਨਲ ਦੇ ਮੂਹਰੇ ਪੰਜਾਬ ਨੇ ਇਤਰਾਜ਼ ਕੀਤਾ ਵੀ ਰਾਜਸਥਾਨ ਗੈਰ ਰਾਈਪੇਰੀਅਨ ਸਟੇਟ ਆ ਤਾਂ ਉਹਦੇ ਜਵਾਬ ਦੇ ਵਿੱਚ ਟ੍ਰਿਬਿਊਨਲ make key jawabata utte likhya tha Arvind law rejected Punjab's contention that non-riparian Rajasthan had no right to any of the Ravi Beas waters in any country like India the riparian theory is not accepted because mm -hmm. there is no fixed city of state boundaries under our constitution state boundaries can be changed and mm -hmm. a state can even be abolished so no state can claim ownership of waters ਇਰਾਦੀ ਸੈਟ ਇੰਡੀਆ ਟੂਡੇ ਜੂਨ 15 1987 ਦੇ ਵਿੱਚ ਤੇ ਉਹਦੀ ਊਰਜਾ ਤੇ ਇਹ ਗੱਲ ਸਹੀ ਬਿਲਕੁਲ ਜੀ ਇਹ ਭਾਰਤ ਤੁਸੀਂ ਜਿੰਨੀਆਂ ਵੀ ਮਾਰਾਂ ਦੀਆਂ ਰਿਪੋਰਟਾਂ ਪੜ੍ਹੋ ਜੀ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਵੀ ਜਿਹੜਾ ਇਹ ਪਾਣੀ ਆਹੋ ਸਟੇਟ ਦੀ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਸਟੇਟ ਆਈ ਮੀਨ ਜਿਹੜੀ ਰਾਜ ਨੇ ਮਤਲਬ ਸਟੇਟ ਵਰਡ ਨੂੰ ਲੈ ਜਾ ਰਾਜ ਨੇ ਪਾtre ਬਖਵਾ ਕਰਾਜ ਨਹੀਂ ਇਹ ਉਹਦਾ ਫੈਸਲਾ ਉਹਨਾਂ ਨੇ ਕਰਨਾ ਜਿਹੜੇ ਉਹਨਾਂ ਦੇ ਵਿੱਚ ਦਰਿਆ ਵਗਦੇ ਆ ਜਿਹੜਾ ਜਿਹਨਾਂ ਦੇ ਰਾਜ ਹੋਣ ਦੇ ਨਾਤੇ ਮਾਲਕ ਆ ਸਭਿਧਾਨ ਦੇ ਵਿੱਚ ਇਹ ਪੂਰੀ ਪਾਵਰ ਦਿੱਤੀ ਹੋਈ ਸਾਰੀਆਂ ਵਿਧਾਨ ਸਭਾਵਾਂ ਨੂੰ ਜਿਹੜੀ ਪੰਚਾਇਤ ਦੇ ਮਾਲਕ ਨੇ ਸਖੀਪ ਸਿੰਘ ਜੀ ਮਾੜਾ ਜੇ ਪਿੱਠ ਭੂਮੀ ਦੱਸਿਓ ਕਵੇਰੀ ਨਦੀ ਦਾ ਜਿਹੜਾ ਡਿਸਪਿਊਟ ਆ ਉਹਦੇ ਕੀ ਹੋਇਆ ਸੀ ਤੇ ਡਬਲ ਇਹਨਾਂ ਦਾ ਸਟੈਂਡਰਡ ਸੈਂਟਰ ਦਾ ਕੀ ਬਿਲਕੁਲ ਵੀ ਸੀ ਜਿਵੇਂ ਦਸਵਿੰਦਰ ਵੀਰ ਜੀ ਨੇ ਦੱਸਿਆ ਜਦੋਂ ਤੁਸੀਂ ਇਹਨਾਂ ਦੇ ਡਾਕੂਮੈਂਟ ਚੱਕਦੇ ਹੋ ਗਣੀ ਇੱਕ ਹੈਗੀ ਆਪਣੀ ਐਸੇ ਪੰਜਾਬੀ opinion ਕਿਉਂਕਿ ਆਪਾਂ ਸਾਰੇ ਪੰਜਾਬੀ ਆ 50% ਸ਼ਹਿਰ ਦਾ ਆਪਾਂ ਇਹਨੂੰ ਨੌਨ ਪੰਜਾਬੀ ਹੋ ਕੇ ਵੀ ਜੀ ਦੇਖ ਲਈਏ ਜਾਂ ਕੋਈ ਆਪਾਂ ਨੌਨ ਪੰਜਾਬੀ ਬੰਦੇ ਤੋਂ ਵੀ ਕਿ ਤੂੰ ਦੱਸ ਆ ਦੇ ਥਰਡ ਪਰਸਨ ਵੀ ਕੀ ਲੱਗਦਾ ਇੱਕ ਵੱਲੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਇਹ ਕਹਿ ਰਿਹਾ ਦੀ ਪਾਣੀ ਆ ਜਿਹੜਾ ਸਟੇਟ ਸਬਜੈਕਟ ਆ ਸੂਬਿਆਂ ਦਾ ਸਬਜੈਕਟ ਆ ਉਹਦੀ ਬੰਡ ਤੇ ਸਟੇਟ ਨੇ ਡਿਸਾਈਡ ਕਰਨਾ ਸੂਬੇ ਨੇ ਡਿਸਾਈਡ ਕਰਨਾ ਵੀ ਪਾਣੀ ਦੇਣਾ ਕਿਸੇ ਨੂੰ ਨਹੀਂ ਦੇਣਾ ਤੇ ਉਹ ਜਿਹੜੀ ਕਲੋਜ਼ ਆ ਉਹ ਲਾਗੂ ਹੁੰਦੀ ਆ ਚਾਹੇ ਉਹ ਕਵੇਰੀ ਦਾ ਡਿਸਪਿਊਟ ਹੋਇਆ ਚਾਹੇ ਉਹ ਜਮਨਾ ਦੀ ਗੱਲ ਹੋਈ ਕਿਉਂਕਿ ਜਮਨਾ ਦੀ ਗੱਲ ਤਾਂ ਸਿੱਧੀ ਪੰਜਾਬ ਦੇ ਨਾਲ ਐਸੋਸੀਏਟਡ ਆ ਨਾ ਉਹ ਕੀ ਆ ਵੀ ਜਦੋਂ ਪੰਜਾਬ ਤੇ ਹਰਿਆਣਾ ਦੀ ਬੰਦ ਹੁੰਦੀ ਆ 460 ਚ ਦੋਨਾਂ ਦੇ ਰਿਸੋਰਸ ਨੇ ਦੇ ਆ ਰਿਸੋਰਸ ਤੋਂ ਤਾਂ ਪਾਣੀ ਹੋਰ ਕੁਝ ਨਹੀਂ ਮੰਨਿਆ ਜਾਂਦਾ ਬਾਕੀ ਰਿਸੋਰਸ ਵੀ ਕੋਈ ਗੱਲ ਨਹੀਂ ਪਾਣੀ ਦੀ ਗੱਲ ਆ ਉਦੋਂ ਪੰਜਾਬ ਕਲੇਮ ਕਰਦਾ ਵੀ ਜੇ ਸਤਲੁਜ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਤਾਂ ਕਿਉਂਕਿ ਜਮਨਾ ਤੋਂ ਪੰਜਾਬ ਨੂੰ ਜਦੋਂ ਪੰਜਾਬ ਤੇ ਹਰਿਆਣਾ ਇਕੱਠਾ ਸੀ ਸਾਂਝਾ ਪੰਜਾਬ ਸੀ ਜਿਹੜੀ ਯੂਸਤ ਜਮਨਾ ਕਨਾਲ ਆ ਉਹ ਪੰਜਾਬ 'ਚ ਹੀ ਆਉਂਦੀ ਸੀ ਕਿਉਂਕਿ ਹਰਿਆਣਾ ਨਹੀਂ ਸੀਗਾ ਵੀ ਉਹਦਾ ਹਿੱਸਾ ਕਿੱਥੇ ਆ ਫਿਰ ਉਹ ਕਹਿੰਦੇ ਇਹ ਮੈਨੂੰ ਨਹੀਂ ਸਕਦਾ ਕਿਉਂਕਿ ਹਿੰਦੁਸਤਾਨ ਦੇ ਸਵਿਧਾਨ ਦੇ ਮੁਤਾਬਕ ਪੰਜਾਬ ਰਪੇਰੀਅਨ ਸਟੇਟ ਨਹੀਂ ਹੈਗਾ ਪਰ ਦੂਜੇ ਪਾਸੇ ਉਹੀ ਕਹਿੰਦਾ ਸਬਜੈਕਟ ਨਹੀਂ ਹੈਗਾ ਸਟੇਟ ਦਾ ਹਰ ਦੋਵੇਂ ਜੱਜਮੈਂਟ ਆਫਸਰ ਬੱਚਾ ਲੋ ਨੇ ਉਹਨੂੰ ਤਾਂ ਪੰਜਾਬੀ ਹੋਣ ਦੀ ਵੀ ਲੋੜ ਨਹੀਂ ਕਿਸੇ ਵੀ ਥਰਡ ਪਰਸਨ ਦੇ ਮੂਹਰੇ ਆਪਾਂ ਰੱਖ ਇਹ ਜਿਹੜਾ ਡਬਲ ਸਟੈਂਡਰਡ ਆ ਪੰਜਾਬ ਦੇ ਨਾਲ ਇਹ ਹਰੇਕ ਥਾਂ ਤੇ ਖੇਡਿਆ ਗਿਆ ਇਹ ਇਗਨੋਰੈਂਸ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਜੀ ਆਪਾਂ ਕਈ ਵਾਰ ਕਹਿੰਦੇ ਆਪਾਂ ਕੀ ਕਰੀਏ ਆਪਾਂ ਕੋਰਟ ਚ ਜਾਏ ਇਹ ਆਹ ਹੁੰਦਾ ਵੀ ਪਲੇਖੇ ਚ ਹੋ ਗਿਆ ਇਗਨੋਰੈਂਸ ਚ ਹੋ ਗਿਆ ਈਵਨ ਕਿ ਜਦੋਂ ਆਪਾਂ ਜਿਹੜੀ ਜੈਫਲ ਮੇਅਰ ਨੂੰ ਨੇ ਕਨਾਲ ਕੱਢੀ ਆ ਰਾਜਸਥਾਨ ਲਈ ਹਰੀਕੇ ਤੋਂ ਜਦੋਂ ਕੱਢਣੀ ਸੀਗੀ ਤੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਵਰਲਡ ਬੈਂਕ ਬਾਇਲਡ ਬੈਂਕ ਅਨਵੋਲਵ ਸੀਗੀ ਪਾਕਿਸਤਾਨ ਨਾਲ ਵੀ ਪਾਣੀਆਂ ਦੇ ਰੌਲੇ ਸੀਗੇ ਇਹ ਹਿੰਦੁਸਤਾਨ ਨੇ ਐਪਲੀਕੇਸ਼ਨ ਪਾਈ ਫਾਈਨੈਂਸ ਲਈ ਵਰਲਡ ਬੈਂਕ ਨੂੰ ਵਰਲਡ ਬੈਂਕ ਨੇ ਪੰਜ ਮੈਂਬਰੀ ਟੀਮ ਜਿਹਦਾ ਹੈੱਡ ਅਮਰੀਕਨ ਸੀਗਾ ਐਕਸਪਰਟ ਵਾਟਰ ਦਾ ਉਹਨੂੰ ਭੇਜਿਆ ਸਰ ਦੇ ਲਈ ਵੀ ਇਹਦੀ ਫਿਜ਼ਿਬਿਲਿਟੀ ਦੱਸੋ ਕਿਉਂਕਿ ਆਪਾਂ ਵੀ ਲੋਟ ਲੈਣੀ ਆ ਪਹਿਲਾਂ ਫਿਜ਼ਿਬਿਲਿਟੀ ਸਟਡੀ ਹੁੰਦੀ ਆ ਵੀ ਇਹਦੀ ਇੱਥੇ ਕੀ ਬਣ ਸਕਦਾ ਕੀ ਨਹੀਂ ਬਣ ਸਕਦਾ ਫਿਰ ਇਹ ਇਨਵੈਸਟਮੈਂਟ ਹੁੰਦੀ ਆ ਉਸ ਫਿਜ਼ਿਬਿਲਿਟੀ ਸਟੱਡੀ ਲਈ ਜਿਹੜੀ ਟੀਮ ਆਈ ਉਹਦੀ ਰਿਪੋਰਟ ਬੜੀ ਇੰਟਰਸਟਿੰਗ ਆ। ਹੂੰ। ਉਹਨਾਂ ਨੇ ਕਲੀਅਰ ਹਿੰਦੁਸਤਾਨ ਨੂੰ ਦਿਨਾਈ ਨਹੀਂ ਕੀਤਾ ਕਿ ਤਾਂ ਫਾਇਨਸ ਮੰਨ ਨੇ ਇਨਸਟਰਕਸ਼ਨ ਦਿੱਤੀਆਂ। ਉਹ ਕਹਿੰਦੇ ਇਹ ਸੈਲਫ ਸੂਸਾਇਦਾ ਆ। ਇਕਨੋਮਿਕਲੀ ਜਾ ਸਕਦਾ। ਇਹ ਇੱਕ ਥਾਰ ਦੇ ਨੂੰ ਜਿੱਥੋਂ ਤੁਸੀਂ ਪਾਣੀ ਲੈ ਕੇ ਜਾ ਰਹੇ ਹੋ ਪਹਿਲਾਂ ਤਾਂ ਪਾਣੀ ਦੀ ਅਵੋਪਰੇਸ਼ਨ ਤੇ ਡੈਸਟਿਕ ਬਹੁਤ ਆ। ਦੂਜੀ ਗੱਲ ਤੁਸੀਂ ਇੱਕ ਜਗ੍ਹਾ ਨੂੰ ਡੈਜ਼ਰਟ ਨੂੰ ਆਵਾਦ ਕਰਨ ਦੇ ਕਲੇਮ ਨਾਲ ਦੂਜੀ ਜਗ੍ਹਾ ਨੂੰ ਡੈਜ਼ਰਟ ਬਣਾ ਰਹੇ ਹਾਂ ਜਿਹੜਾ ਆਲਰੇਡੀ ਬਸਦਾ ਵਾ ਬਸਦੇ ਨੂੰ ਉਜਾੜ ਕੇ ਦੂਜੇ ਨੂੰ ਬਸਾਉਣ ਦੀ ਗੱਲ ਕਰਦੇ ਜਿਹਨੇ ਬਸਣਾ ਨਹੀਂ ਫਿਨਿਸ਼ ਕੀਤਾ ਹੁਣ ਇੱਥੇ ਇਗਨੋਰੈਂਸ ਕਿੱਥੇ ਰਹਿ ਜਾਂਦੀ ਆ ਸੋ ਇਹ ਇੱਕ ਗਿਣੀ ਸਾਜ਼ਿਸ਼ ਦਾ ਹਿੱਸਾ ਜਿਹਦੇ ਵਿੱਚ ਜਿਵੇਂ ਸੁਨੀਲ ਜੀ ਨੇ ਕਿਹਾ ਪੰਜਾਬ ਦਾ ਇੱਕ ヒストਰੀਆ ਉਹਨਾਂ ਨੇ ਹਮੇਸ਼ਾ ਹੀ ਅਨਜਸਟਸ ਦੇ ਅਨਜਸਟਸ ਦੇ ਖਿਲਾਫ ਜਿਹੜੀ ਵੀ ਕਿਸੇ ਦੇ ਨਾਲ ਹੁੰਦੀ ਆ ਉਹਦੇ ਖਿਲਾਫ ਖੜੇ ਆ ਹੁਣ ਤੱਕ ਦੇਖ ਲਈਏ ਹਰ ਪਾਸੇ ਚਾਹੇ ਉਹ ਐਮਰਜੈਂਸੀ ਦਾ ਦੌਰ ਸੀ ਸਭ ਤੋਂ ਅੱਗੇ ਹੋਇਆ ਉਹਦਾ ਕਾਰਨ ਦੋ ਸੀ ਇੱਕ ਤਾਂ ਪੰਜਾਬ ਦਾ ਇੱਕ ਵਰਸਾ ਦਾ ਪੰਜਾਬ ਦੇ ਡੀਐਨਏ ਚੱਕ ਰੂਹ ਸੁੱਕੀ ਹੋਈ ਆ ਉਜਾਤ ਉਹ ਆਰ ਇਕਨੋਮਿਕਲੀ ਇੰਡੀਪੈਂਡੈਂਟ ਵੀ ਵੀ ਰੋਟੀ ਵੀ ਖਾਂਦਾ ਸਿਰਫ ਤੇ ਸਿਰਫ ਉਸ ਕਿਤੇ ਜੇ ਕਿਸੇ ਏਰੀਆ ਤੋਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਸਾਡੀ ਮੋਨੋਪੋਲੀ ਕਰ ਸਕਦਾ ਉਹ ਸਭ ਤੋਂ ਪਹਿਲੇ ਨੰਬਰ ਤੇ ਪੰਗਰਵੀ ਆਉਂਦੇ ਸੀ ਉਸ ਲੋਕਾਂ ਨੂੰ ਇਸ ਲੈਵਲ ਤੇ ਤਾਂ ਕਿ ਆਪਾਂ ਵਰਡ ਕਸਿਆਰਾ ਯੂਜ਼ ਕਰ ਲਿਆ ਭਾਵ ਕੀ ਹੈ ਤੁਸੀਂ ਉਹਨਾਂ ਦੇ ਹੱਥਾਂ ਤੇ ਮੁਕਤਾਦ ਹੋ ਹਰ ਚੀਜ਼ ਲਈ ਤਾਂ ਕਿ ਤੁਸੀਂ ਦੂਜੇ ਜਿਹੜੇ ਰਾਈਟਸ ਦੀ ਗੱਲ ਤਾਂ ਤਾਂ ਹੀ ਕਰੋਗੇ ਨਾ ਜੇ ਰੋਟੀ ਖਾਂਦੇ ਖਮੋਗੇ ਜੇ ਤੁਹਾਡੇ ਹਾਲਾਤ ਬਹੁਤ ਦੂਰ ਰਹਿ ਜਾਂਦੇ ਮੈਂ ਇਹ ਫੀਲ ਕਰਦਾ ਹਿੱਸਾ ਹੈ ਨੂੰ ਆਰਥਿਕ ਤੌਰ ਤੇ ਜਿਹੜਾ ਥੱਲੇ ਲਾਉਣਾ ਵਪਾਰਿਕ ਸੰਦੇਸ਼ਾ ਤੋਂ ਬਾਅਦ ਨੀਲ ਜੀ ਨਾਲ ਫੇਰ ਜੱਲਾਂਗੇ ਕਿ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ 6-7 ਪਰਿਵਾਰ ਨੇ ਜਿਨ੍ਹਾਂ ਦੇ ਸਾਹਮਣੇ ਬਣ ਰਹੀ ਹੈ ਠੀਕ ਹੈ ਉੱਜੜ ਜਾਣਗੇ ਲੋਕ ਉਹ ਜ਼ਮੀਨਾਂ ਖਰੀਦ ਲੈਣਗੇ ਅਰਬ ਨਜਾਇਸ਼ਲ ਹੋ ਜਾਏਗੀ ਪਰ ਜਿਹੜੇ ਉਹ ਕਰ ਰਹੇ ਨੇ ਉਹ ਕਿਹਨਾਂ ਤੇ ਰਾਜ ਕਰਨਗੇ ਉਹ ਸੈਕੀ ਕੀ ਹੈ ਉੱਥੇ ਮੁੜ ਕੇ ਆਉਂਦੇ ਵਪਾਰਕ ਸੰਦੇਸ਼ ਜੇਕਰ ਮੰਤਨ ਜਿਸ ਦਾ ਪਹਿਲਾ ਗੱਲ ਕੀਤੀ ਸੀ ਜਿਹੜੇ ਮਾਲਕ ਨੇ ਹੁਣ ਇਸ ਸਿੱਤੇ ਦੇ ਉਹ ਰਾਜਕੀਦੇ ਤੇ ਕਰਜ਼ੇ ਦੇ ਲੋਕ ਹੀ ਉੱਜੜ ਗਏ ਅਸਲ ਤਾਂ ਗੱਲ ਇੱਕ ਬਹੁਤ ਸਿਆਣੇ ਬੰਦੇ ਨੇ ਵੀ ਕਿਹਾ ਕਿ ਮੈਨੂੰ ਕਹੇ ਕਿੰਦਾ ਕਾਰਨ ਤਾਂ ਇਹੀ ਆ ਕਿ ਗਏ ਇਹ ਖਰੀਦਣਗੇ ਇਹ ਕੀ ਜ਼ਹਿਨियत ਕੀ ਆ ਦੇਖੋ ਇਹ ਕਿਸੇ ਪੰਜਾਬ ਦੀ ਗੱਲ ਕਰ ਉਹਨਾਂ ਦਾ ਜਿਹੜੇ ਵੀ ਬੰਦੇ ਰਾਜ ਕਰ ਚੁੱਕੇ ਆ ਜਾਂ ਜਿਹਨਾਂ ਦੀ ਆਉਣ ਦੀ ਸੰਭਾਵਨਾ ਆ ਮੈਂ ਕਿਸੇ ਪਾਰਟੀਕਲ ਪਾਰਟੀ ਨਹੀਂ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਸੰਜੀਦਗੀ ਨਹੀਂ ਹੈਗੀ ਤੇ ਮੁੱਦਿਆਂ ਬਾਰੇ ਸੰਜੀਦਗੀ ਹੈ ਨਹੀਂ ਫਿਰ ਵੀ ਉਹਦੇ ਵਿੱਚ ਹੈ ਨਹੀਂ ਉਹ ਮੁੱਦੇ ਦਾ ਦਾ ਭਾਰ ਨਹੀਂ ਹੈਗਾ ਟੈਂਪੋਰਰੀ ਦੇ ਨੌਕਰੀਆਂ ਇਕੱਠੀਆਂ ਅਸੀਂ ਸੜਕਾਂ ਬਣਾ ਦੇ ਆਗੇ ਤਾਂ ਕੋਸ਼ਿਸ਼ ਕਿਹੜੀ ਨੈਟਵਰਕ ਸਰਕਾਰ ਦੇ ਬੰਦੇ ਕੰਮ ਹੈਗੇ ਆ ਪਰ ਜਿਹਦੇ ਕਰਕੇ ਲੋਕਾਂ ਦਾ ਉਥੋਂ ਉੱਜੜ ਜਾਣ ਦਾ ਕਾਰਨ ਬਣ ਰਿਹਾ ਤੇ ਬਣ ਚੁੱਕਾ ਉਹਦੇ ਬਾਰੇ ਕੋਈ ਬੋਲ ਨਹੀਂ ਗਿਆ ਉਹਦਾ ਰੀਅਲ ਇੱਥੇ ਹੈ ਉਹ ਹੈਗੇ ਜਿਹੜੀ ਗੱਲ ਤੁਸੀਂ ਕਚਿਆਰੇ ਦੀ ਕੀਤੀ ਮੈਂ ਕੈਨੇਡਾ ਜਾ ਕੇ ਸਿੱਖੀ ਆ ਕੈਨੇਡਾ ਦੇ ਵਿੱਚ ਮੈਂ ਵਰਡ ਸਿੱਖਿਆ ਇਕਨੋਮਿਕ ਜੇਨੋਸਾਈਡ ਇਹ ਆਪਣੇ ਪੰਜਾਬੀਆਂ ਨੂੰ ਕੁਝ ਸ਼ਬਦ ਜਿਹੜੇ ਆ ਆਪਣੇ ਡਿਕਸ਼ਨਰੀ ਦਾ ਖਿਆਲ ਰੱਖਣਾ ਇਕਨੋਮਿਕ ਜੇਨੋਸਾਈਡ ਕਲਚਰਲ ਜੇਨੋਸਾਈਡ ਇੰਟੈਲੈਕਚੁਅਲ ਜੇਨੋਸਾਈਡ ਤੇ ਰਿਲੀਜੀਅਸ ਜੇਨੋਸਾਈਡ ਅਸੀਂ ਇਹ ਜਿਹੜੀਆਂ ਚਾਰ ਮੁੱਖ ਤੇ ਸ੍ਰੀ ਗਿਰੀ ਸਿੰਘ ਜੀ ਤੁਸੀਂ ਫਿਨਿਸ਼ ਕਰਿਓ ਇਸ ਨੂੰ ਕਿ ਲੋਕ ਅਗਲੀ ਆਪਾਂ ਅਗਲੇ ਵੀਕ ਸੇ ਗੱਲ ਕਰਾਂਗੇ ਇਹੋ ਦੱਸਿਓ ਕਿ ਜਿਹੜੇ ਬਣਾ ਰਹੇ ਸੀ ਈਵਰ ਲੱਗਦਾ ਲਗਦਾ ਬਣਾਉਣ ਬੱਕਰਾ ਜਾਨ ਤੋਂ ਕਿਆ ਸਵਾਦ ਨਾ ਆਇਆ ਪਰ ਇਹ ਜਿਹੜੇ ਕੰਮ ਨੇ ਕੋਈ ਕੋਈ ਕਹਿ ਕੇ ਜਾਂ ਸਾਡੇ ਡੀਐਮ ਐਚ ਲਾ ਦੋ ਵੇ ਵਿਦਰੋਹੀ ਸੁਰ ਸਾਡੇ ਚ ਰਹਿੰਦੀ ਹੈ ਸੱਚ ਦੇ ਨਾਲ ਅਸੀਂ ਖੰਡ ਦੀ ਜ਼ਰੂਰਤ ਰੱਖਦੇ ਐ ਜਦੋਂ ਉਸਨੇ ਤਰੂ ਫਿਲਮ ਬਣਾ ਰਹੇ ਸੀ ਮੈਨੂੰ ਲੱਗਦਾ ਹਲੇ ਤਾਂ ਬਹੁਤ ਕੁਝ ਛੁਪਿਆ ਹੋ ਜਿਹੜਾ ਹੋਰ ਨਿਕਲਣ ਦੀ ਲੋੜ ਹੈ ਬਿਲਕੁਲ ਉਹਦਾ ਉਹਦਾ ਨੈਕਸਟ ਫੇਜ਼ ਆ ਜਿਹੜਾ ਉਹ ਉਹਦੇ ਤੇ ਕੰਮ ਹੋਣਾ ਚਾਹੀਦਾ ਨਹੀਂ ਵੀਰ ਜੀ ਤੇ ਜਾਨੀ ਬਿਲਕੁਲ ਤੁਸੀਂ ਕਿਹਾ ਹਲੇ ਤੱਕ ਇਹ ਲੋ ਵੀ ਜਿਵੇਂ ਆਈਸਵਰਗ ਨਹੀਂ ਹਮ ਤਾਂ 33 ਆ ਬਹੁਤ ਕੁਛ ਥੱਲੇ ਆ ਕਿਉਂਕਿ ਇੰਨਾ ਵੀ ਨਹੀਂ ਸੀ ਪਤਾ ਸੱਚੀ ਬਹੁਤ ਹਰਾਨੀ ਹੁੰਦੀ ਆ ਵੀ ਅਸੀਂ ਇਸ ਮੁਲਕ ਚ ਵੀ ਬੈਠੇ ਸੀ ਅਸੀਂ ਇਹ ਵੀ ਸਾਂਤ ਅਸੀਂ ਪੰਜਾਬ ਦੀ ਵੀ ਸੋਚਦੇ ਆ ਸਾਰਾ ਕੁਝ ਉਹਦੇ باوجود ਕੁਛ ਵੀ ਨਹੀਂ ਸੀ ਪਤਾ ਕਿਉਂਕਿ ਇਹ ਜਿਹੜਾ ਸ਼ਰਜੰਤਰ ਆ ਇਹ ਬਦਾਈ ਨਹੀਂ ਇਹ ਬੜੀ ਬੇਦਵਤਾ ਦੇ ਨਾਲ ਖੜੀ ਅਸਲੀ ਚੀਜ਼ ਹੈ ਜਿਹਦੇ ਕਰਕੇ ਅਸੀਂ ਜਦੋਂ ਸਾਡੇ ਵੀਰ ਦਾ इवन ਉਹ ਸੇ ਪੰਜਾਬ ਦਾ ਇੱਕ ਖਾਸ ਹਿੱਸਾ ਖੜ ਜਾਂਦਾ ਕਿਉਂਕਿ ਉਹਦਾ ਜਿਹੜਾ ਸ਼ਬਕਸ਼ਣ ਚੱਕਰ ਹੀ ਬੜੇ ਹਸਾਬ ਨਾਲ ਚਲਾਇਆ ਹੁੰਦਾ ਸੋ ਇਹਦੇ ਤਾਂ ਤਾਂ ਹੈਗਾ ਜਿੰਨੇ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਗੱਲ ਕੀਤੀ ਸੀ ਇੱਕ ਤਾਂ ਹੈਗਾ ਇਤਿਹਾਸ ਲੁੱਟ ਇਤਿਹਾਸ ਉਹ ਸਮਝਣ ਦੀ ਲੋੜ ਹੈ ਕਿਉਂਕਿ ਉਹ ਤਾਂ ਹੀ ਅਸੀਂ ਆਪਦੀ ਚੀਜ਼ ਨੂੰ ਬਚਾਉਣ ਲਈ ਯਤਨਸ਼ੀਲ ਹੋਵਾਂਗੇ ਜੇ ਸਾਨੂੰ ਪਤਾ ਲੱਗੂ ਵੀ ਅਸੀਂ ਲੁੱਟੇ ਜਾ ਰਹੇ ਹਾਂ ਚੋਰ ਲੱਗੇ ਹੋਇਆ ਸਾਡੇ ਘਰ ਨੂੰ ਇੱਕ ਹੈਗਾ ਫਿਊਚਰ ਦੀਆਂ ਪਲਾਨਸ ਉਹ ਵੀ ਸਾਨੂੰ ਨਾਲ-ਨਾਲ ਦੇਖਣੀਆਂ ਪੈਣੀਆਂ ਕਿਉਂਕਿ ਇਹ ਕੰਮ ਨਾ ਇੱਕ ਤੱਕ ਲਈ ਸੋਚਿਆ ਸੀ ਜਿਵੇਂ ਤੁਸੀਂ ਕਿਹਾ ਵੀ ਉਹ ਰਾਜ ਕੀਤੇ ਤੇ ਕਰਨਗੇ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਰਾਜ ਕਰਨ ਲਈ ਇਹ ਜ਼ਰੂਰੀ ਆ ਕਿਉਂਕਿ ਜੇ ਓ ਜਿਹੜੇ ਲੋਕ ਆ ਜਿਹੜੇ ਉਸ ਰਾਜ ਨੂੰ ਜਿਹੜਾ ਇੱਕ ਰਾਜ ਹੁੰਦਾ ਜਿਵੇਂ ਆਪਾਂ ਵੀ ਇੱਥੇ ਰਾਜ ਰਾਜ ਹੁੰਦਾ ਵੀ ਤੁਸੀਂ ਲੋਕਾਂ ਨੂੰ ਪੁੱਛੜ ਕੇ ਸਿਰਫ ਆਪਣਾ ਮਨੋਰਥ ਮੂਰੇ ਰੱਖਣਾ ਉਸ ਤਰਜੀਹ ਤੇ ਆਵਦਾ ਪਰਮਾਨੈਂਟ ਕਰਨ ਲਈ ਉਹ ਜਿਹੜੀ ਸੋਚ ਆ ਉਹਦੇ ਲਈ ਇਹ ਮਜ਼ਦੂਰੀ ਆ ਲੋਕ ਮੰਦੀਆ ਤੇ ਵੀ ਰਾਤ ਹੋਈ ਜਾਂਦਾ ਬਿਲਕੁਲ ਬਿਲਕੁਲ ਇਹ ਲੋਕ ਕੋਈ ਨੀ ਹੋਊ ਅੱਜ ਜਿਹੜੀ ਆਪਾਂ ਦੇਖਦੇ ਆਂ ਫੇਸਬੁੱਕ ਤੇ ਦਿਸਣਦਾ ਤੇ ਚਰਚਾ ਪੈਂਦੀ ਆ ਕੋਈ ਕਰਦੇ ਆ ਉਹ ਲੈਵਲ ਇਸ ਲੈਵਲ ਤੇ ਪਹੁੰਚ ਗਿਆ ਇਹ ਕਿਹੜੀਆਂ ਪਾਰਟੀਆਂ ਜਿਹੜਾ ਆ ਗਿਆ ਹੁਣ ਜਦੋਂ ਆਪਾਂ ਦੇਖਿਆ ਮੱਧ ਪ੍ਰਦੇਸ਼ ਚ ਚਲੇ ਜਾਓ ਹੋਰਾਂ ਖਾਂ ਤੇ ਚਲੇ ਜਾਓ ਜਿੱਥੇ ਅਨਪੜਤਾ ਤੇ ਗਰੀਬੀ ਇੰਨੀ ਆ ਉੱਥੇ ਉਹ ਇੰਨਾ ਪolitical leader nu dehi devta nu salute karte ha kilo chaar piche vote lende es karke eh jhadiyan vi sarkara ma unna di e majboori ha vi lokan da level es tak hove taaki unna di jdi kursi nu koi hath paan wala na hove so es karke oh kar reya sara ਸਦਾਜੀ ਸਿੰਘ ਜੀ ਮੈਂ ਇਹਨੂੰ ਸ਼ਾਰਟਕਟ 'ਚ ਫਿਨਿਸ਼ ਕਰਦਾ ਜੀ ਮੈਂ ਇੱਕ ਇੱਕ ਆਪਣੇ ਸਰੋਪਿਆਂ ਨੂੰ ਗੱਲ ਜਰੂਰੀ ਦੱਸਣੀ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਦੇ ਪਾਣੀਆਂ ਦੀ ਇਹ ਵੀ ਪੰਜਾਬ ਦੀ ਜਿਹੜੀ ਗੈਰਸਬਧਾਨਕ ਵੰਡ ਦੇ ਸਮਝੌਤੇ ਦਾ ਬਹੁਤ ਰੋਲਾ ਬੰਦੇ ਨੇ ਉਹ ਸਮਝੌਤਾ ਲਿਖਿਆ ਸੀ ਗਾਨੀ ਜਿਹਨੇ ਡਰਾਫਟ ਕੀਤਾ ਉਹਦਾ ਨਾਮ ਸੀਗਾ ਕਨਵਰ ਸਿੰਘ ਉਹ ਸੀਗੇ ਐਕਸ ਚੇਅਰਮੈਨ ਆਫ ਸੈਂਟਰਲ ਵਾਟਰ ਐਂਡ ਪਾਵਰ ਕਮਿਸ਼ਨ ਮਿਸਟਰ ਕਨਵਰ ਸਿੰਘ ਨੇ ਇੰਡੀਅਨ ਐਕਸਪ੍ਰੈਸ ਇੰਟਰਵਿਊ ਦਿੱਤੀ 10 ਫਰਵਰੀ 1983 ਨੂੰ ਉਹਨਾਂ ਨੇ ਖੁਦ ਮੰਨਿਆ ਉਹਦੇ ਵਿੱਚ ਵੀ ਇਸ ਸਮਝੌਤੇ ਦੇ ਵਿੱਚ 1955 ਵਾਲੇ ਦੇ ਵਿੱਚ ਪੰਜਾਬ ਦਾ ਟੱਕਾ ਹੋਇਆ ਉਹ ਕਹਿੰਦੇ ਵੀ ਮੈਂ ਖੋਲ ਉਸ ਫਾਈਲ ਦੇ ਉੱਤੇ ਇਹ ਲਿਖੇ ਚੁਕੇ ਨੋਟ ਰਿਐਲਿਟੀਜ਼ ਅਬਾਊਟ ਦਾ ਅਸੈਸਮੈਂਟ ਆਫ ਰਿਕੁਆਇਰਮੈਂਟਸ ਮੇ ਬੀ ਵਾਲਾ ਪੇਪਰ ਹਰਜੀਤ ਸਿੰਘ ਜੀ ਉਹ ਬਾਅਦ ਵਿੱਚ ਸਰਦ ਪੀਤਨ ਸਿੰਘ ਕੋਲ ਹੋਣੀ ਉਹ ਨਿਊਜ਼ਲੈਂਡੀ 2010 ਕਹਿ ਕੇ ਪੇਪਰਾਂ ਦੇ ਵਿੱਚ ਫਾਈਲਾਂਾਂ 'ਚ ਗਿਆ ਕਈ ਸਾਲ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਾ ਗੌਰਮੈਂਟ ਦੇ ਵਿੱਚ ਇਹਨੂੰ ਸਮੇਟਦਾ ਜੀ ਇਸ ਮਸਲੇ ਨੂੰ ਅੱਜ ਦੀ ਆਪਣੀ ਗੱਲਬਾਤ ਨੂੰ ਵੀ ਸਾਰੇ ਪੰਜਾਬੀ ਇਸ ਬੰਨੋ ਮਸਲਾ ਆ ਸਾਰੇ ਪੰਜਾਬੀਆਂ ਦਾ ਰਿਗਾਰਡਲੈਸ ਆਫ ਰੀਸੈਂਟ ਰਿਲੀਜੀਅਨ ਪੰਜਾਬ ਦੀ ਜਿਹੜੀ ਆਰਥਿਕਤਾ ਪਾਣੀ ਨਾਲ ਜੁੜੀ ਹੋਈ ਆ ਪਾਣੀ ਦੇ ਨਾਲ ਜਿਹੜੀ ਕੱਲੀ ਪੰਜਾਬ ਦੇ ਪਾਣੀ ਦੇ ਨਾਲ ਤੁਹਾਡੀ ਜੀਵਨ ਰੇਖਾ ਜੁੜੀ ਆ ਪੰਜਾਬ ਦੀ ਕਿਸਾਨੀ ਜੁੜੀ ਆ ਕਿਸਾਨੀ ਦੇ ਨਾਲ ਸਾਰੇ ਆਰਥਿਕ ਜਿਹੜੇ ਲੋਕ ਉੱਤੇ ਆਰਥਿਕ ਤੁਹਾਡਾ ਧਾਰੋਵਾਰ ਜੁੜਿਆ ਹੋਇਆ ਸੋ ਇਸ ਮਸਲੇ ਨੂੰ ਸਮਝੋ ਪੰਜਾਬ ਦੇ ਪਾਣੀ ਲਈ ਇਕੱਠੇ ਹੋਵੋ ਇੱਕ ਜਾਣਕਾਰੀ ਹੋਰ ਤੁਹਾਨੂੰ ਦੇਣੀ ਚਾਹੁੰਦੇ ਆ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਵਿੱਚ ਫਾਈਨਲ ਸਾਲਟ ਡਾਕੂਮੈਂਟਰੀ ਇਸ ਸ਼ਨੀਵਾਰ ਨੂੰ 28 ਜਨਵਰੀ ਨੂੰ ਸ਼ਾਮ ਨੂੰ 8 ਵਜੇ ਦਿਖਾਈ ਜਾਣੀ ਹੈ ਜੀ ਸ਼ਾਮ ਨੂੰ 8 ਵਜੇ ਇਸ ਸ਼ਨੀਵਾਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਕਾਟ ਰੋਡ ਵਿੱਚ ਫਾਈਨਲ ਸਾਲਟ ਡਾਕੂਮੈਂਟਰੀ ਦਿਖਾਈ ਜਾਣੀ ਆਪ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਇਹਦੇ ਨਾਲ ਇੰਗਲਿਸ਼ ਸਟ੍ਰੈਕਸ਼ਨਸ ਹੈਗੀਆਂ ਵੀ ਸਮਝ ਲੱਗੂਗੀ ਆਪਣੀਆਂ ਜਨਰੇਸ਼ਨਾਂ ਨੂੰ ਦੱਸੋ ਇਸ ਮਸਲੇ ਦੇ ਉੱਤੇ ਕੰਮ ਕਰੋ ਭਰਾਓ ਇਕੱਠੇ ਹੋ ਕੇ ਚੱਲੋ ਪਾਰਟੀ ਵਾਲਿਆਂ ਨੂੰ ਕਹੋ ਵੀ ਪਾਓ ਭਰਾਓ ਇਹਦੇ ਤੇ ਸਹੀ ਰੋ ਕੇ ਕੰਮ ਕਰੋ ਤੇ ਪੰਜਾਬ ਨੂੰ ਬਚਾਉਣ ਵੱਲ ਕਦਮ ਵਧਾਓ ਜੀ ਧੰਨਵਾਦ ਜੀ ਤੁਹਾਡਾ ਤਿੰਨਾਂ ਦਾ ਤੁਸੀਂ ਸਮਾਂ ਕੱਢ ਕੇ ਆਉਨੇ ਹੋ ਅਗਲੇ ਵੀਕ ਅਗਲੇ ਸੋਮਵਾਰ ਫਿਰ ਗੱਲਬਾਤ ਕਰਾਂਗੇ ਤੇ ਇਸ ਨੂੰ ਸੰਮੇਟਣ ਦਾ ਯਤਨ ਕਰਾਂ ਕਿ ਇਸ ਦੇ ਪਿੱਛੇ ਸਾਇਕੀ ਕੀ ਆ ਚੀਜ਼ਾਂ ਕਿ ਕਿਸੇ ਨੇ ਫੇਸਬੁੱਕ ਤੇ ਚੀਜ਼ ਪਾਈ ਸੀ ਅੰਦਰ ਨਾજર ਬੈਠਾ ਐ ਕੋਲ ਚਾਹ ਉਵਲ ਰਹੀ ਆ ਉਹਦੀ ਘਰ ਵਾਲੀ ਮਾਰੋ ਕਿਨੇ ਹੁੱਕਾ ਮਾਰਿਆ ਆ ਜਾ ਹੁਣ ਰੈਲੀ ਤੇ ਚੱਲਣਾ ਉਹ ਕਹਿੰਦਾ ਵੀ ਚਾਹ ਨਹੀਂ ਬਣੀ ਕਹਿੰਦਾ ਜੇ ਚਾਹ ਤੇ ਗੁੜ ਦੇ ਦਈਏ ਕਹਿੰਦਾ ਚਾਹ ਤੇ ਗੁੜ ਦੇ ਦੋ ਰੈਲੀ ਤੇ ਜਾਵਰਦਾ ਚਾਹ ਤੇ ਗੁੜ ਉਹਨੂੰ ਦੇ ਦਿੱਤਾ ਚਾਹ ਉਹਨੇ ਬਣ ਕੇ ਉੱਠ ਕੇ ਰੈਲੀ ਤੇ ਤੁਰ ਗਿਆ ਇਹ ਲੈਵਲ ਤੇ ਗੱਲਾਂ ਜਾਂਦੀਆਂ ਕਿ ਲੋਕਾਂ ਦੇ ਘਰ ਲੁੱਟੇ ਜਾਂਦੇ ਲੋਕਾਂ ਦੇ ਘਰਾਂ ਚ ਰੋਟੀ ਹੈ ਨਹੀਂ ਰੋਟੀ ਦੇਣ ਤੋਂ ਬਾਅਦ ਹੁਣ ਤੋਂ ਕੀ ਕੁਝ ਕਰਾਇਆ ਜਾ ਰਿਹਾ ਵੇਖ ਲਓ ਜੇ ਤੁਹਾਡੇ ਘਰਾਂ ਦੇ ਵਿੱਚੋਂ ਪਾਣੀ ਉੱਥੋਂ ਮੁੱਕ ਗਿਆ ਜਿਵੇਂ 100 ਫੁੱਟ ਤੋਂ 350 ਫੁੱਟ ਤੇ ਚਲੇ ਗਿਆ ਨਾ ਸਾਡਾ ਨਹਿਰਾਂ ਦੇ ਬਿਲਕੁਲ ਕੰਡੇ ਪਿੰਡਾਂ ਦੇ ਵਿੱਚ ਜਿੱਥੇ ਨਹਿਰਾਂ ਨਹੀਂ ਵਗਦੀਆਂ ਜਿੱਥੇ ਕੋਈ ਸੀਪੇਜ ਨਹੀਂ ਹੁੰਦੀ ਉੱਥੇ ਕੀ ਹਾਲ ਹੋਊਗਾ ਪਰ ਇਸ ਗੱਲ ਨੂੰ ਮੰਨਣ ਲਈ ਲੋਕ ਰਾਜ਼ੀ ਨਹੀਂ ਇਸ ਗੱਲ ਨੂੰ ਮੰਨਿਆ ਜਾਂ ਤਕਦੀਦ ਨਾਲ ਨਾ ਲਾਇਆ ਗਿਆ ਇਸ ਹੱਲ ਉਸ ਦਿਨੇ ਹੋਏਗਾ ਜਦੋਂ ਪਤਾ ਲੱਗੇ ਕਿ ਸਾਨੂੰ ਮੁਸ਼ਕਲ ਕੀ ਵਪਾਰਕ ਸੁਨੇਸ਼ ਖਬਰਾਂ ਤੇ ਉਸ ਵਾਪਸ ਅਗਲੇ ਸੋਮਵਾਰ 12 ਵਜੇ ਫੇਰ ਇਸਦੀ ਤੀਸਰੀ ਕੜੀ ਤੁਹਾਡੇ ਸਨਮੁਖ ਹੋਏਗੀ ਧੰਨਵਾਦ ਤੇ ਤੇ ਆ ਕੇ ਬਹੁਤ ਵਿਦੁੱਤਾ ਦੇ ਨਾਲ ਪੜ੍ਹਾਈ ਕਰਕੇ ਤੇ ਤੁਹਾਡੇ ਸਨਮੁਖ ਕਰਦਣ ਤੇ ਧੰਨਵਾਦ ਇੰਗਲੈਂਡ ਤੇ ਜਰਮਨ ਦੇ ਵਿੱਚੋਂ ਮਿਸ ਮੈਸੇਜ ਆਏ ਨੇ ਜਰਮਨ ਤੋਂ ਵੀਰ ਜੀ ਕਹਿ ਰਹੇ ਨੇ ਕੁਝ ਛੋਟੀਆਂ ਟੀਮਾਂ ਬਣਨੀਆਂ ਚਾਹੀਦੀਆਂ ਨੇ ਜੋ ਹੋਰ ਅਵੇਅਰ ਕਰਨ ਪੰਜਾਬ ਦੇ ਵਿੱਚ ਇਹ ਗੱਲ ਚੱਲੇ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ ਬਿਲਕੁਲ ਜਿਸ ਦਿਨ ਮਰਜ਼ ਦਾ ਪਤਾ ਲੱਗਿਆ ਨਾ ਕਿ ਰੋਗ ਕੀ ਹੈ ਕਰਨੀ ਆਉਂਦੀ ਆ ਪੰਜਾਬੀਆਂ ਨੂੰ ਦੱਸਣਾ ਹੀ ਔਖ ਹੋਰ ਕਿਸੇ ਵਿਅਕਤੀ ਖਾਸ ਬੰਦੇ ਤਾਂ ਬੰਦਿਆਂ ਕੋਈ ਜੰਮਦੇ ਆ ਲੋਹ ਪੁਰਸ਼ ਦੇ ਮਰਦੇ ਮਜਾਹਿਰ ਨੇ ਤਾਂ ਤੇ ਜਨਰਲ ਸਿੰਘ ਦੀ ਖਾਸ ਤਾ ਪਿੰਡਾਂ ਵਾਲਿਆਂ ਨੇ ਕੁਝ ਨਹੀਂ ਕਿਸੇ ਨੂੰ ਦੱਸਿਆ ਦੱਸਿਆ ਇਹ ਸੀ ਕਿ ਤੁਹਾਡੇ ਨਾਲ ਹੋ ਕੀ ਰਿਹਾ ਤੁਸੀਂ ਕੀ ਹੋ ਰਿਹਾ ਤੇ ਕੀ ਹੋਣ ਜਾ ਰਿਹਾ ਬਾਕੀ ਹੱਲ ਦੇ ਲਈ ਤੁਰੇ ਸੀ ਔਰ ਬਹੁਤ ਵੱਡੀ ਇਹ ਤਰਾਸ ਦੀ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਤੇ ਪੰਜਾਬ ਦੇ ਵੱਧ ਅਧਿਕਾਰਾਂ ਨੂੰ ਸਿੱਖ ਮੰਗ ਦੇ ਨਾਲ ਜੋੜ ਕੇ ਸਾਡੇ ਪ੍ਰੈਸ ਨੇ ਸਾਡੇ ਲੀਡਰਾਂ ਨੇ ਸਾਡੇ ਸਨਮੁਖ ਲੋਕਾਂ ਦੇ ਕਰ ਦਿੱਤਾ ਇਹ ਅੱਜ ਤੋਂ ਬਾਅਦ ਪੰਜਾਬ ਨੌਨ ਸਿੱਖ ਲੋਕ ਨੇ ਜਿਹੜੇ ਚੁੱਪ ਕਰਕੇ ਘਰਾਂ 'ਚ ਬਹਿ ਕੇ ਸਰਕਾਰ ਵਾਲੇ ਪਾਸੇ ਦੇ ਹੋ। ਇਹ ਬਰਵਾਦੀ ਦੀ ਸਾਡੀ ਦਾਸ ਤਾਂ ਕਿਤੇ ਸਤਰ ਤੇ ਜੇ ਪਾਣੀ ਮੇਰੇ ਗਵਾਂਢ ਦੇ ਵਿੱਚ ਮੁਹੰਮਦ ਖਾਨ ਰਹਿੰਦਾ ਪਾਣੀ ਦੀ ਟੂਟੀ ਉਹਨੂੰ ਵੀ ਚਾਹੀਦੀ ਆ ਪਰਲੇ ਬੰਨੇ ਕਸਤੂਰੀ ਲਾਲ ਰਹਿੰਦਾ ਉਹਨੂੰ ਵੀ ਚਾਹੀਦੀ ਐ ਮਿਲਖਾ ਸਿੰਘ ਨੂੰ ਵੀ ਚਾਹੀਦੀ ਐ ਤਿੰਨਾ ਘਰਾਂ ਨੂੰ ਚਾਹੀਦੀ ਐ ਜੇ ਓ ਕਹੇ ਵੀ ਮਿਲਖਾ ਸਿੰਘ ਦੇ ਟੂਟੀ ਲੱਗਣੀ ਐ ਕਿਉਂਕਿ ਇਹਦਾ ਲੜਿਆ ਤੁਹਾਨੂੰ ਪਾਣੀ ਨਹੀਂ ਮਿਲਣਾ ਫਿਰ ਮੁਹੰਮਦ ਜੀ ਤੇ ਕਸਤੂਰੀ ਲਾਲ ਦਾ ਕੀ ਹੋਊਗਾ ਕੀ ਕਹਿਣਗੇ ਉਹ ਫਿਰ ਫਿਰ ਕਹਿੰਦੇ ਦਾਵਾ ਕਰਦੇ ਆ ਪਾਣੀ ਸਾਨੂੰ ਵੀ ਮਿਲਣਾ ਚਾਹੀਦਾ ਪਰ ਜਿੱਦਣ ਮੰਗਾ ਲਈ ਸ਼ੇਰਪੁੱਤ ਸਾਡਾ ਸ਼ਿਕਾਰ ਖੇਲਣ ਲਈ ਸਰਕਾਰੀ ਮਸ਼ੀਨਰੀ ਦੇ ਨਾਲ ਜਬਰਦਸਤ ਵੱਧ ਲੋਕ ਖੜ੍ਹ ਗਏ ਨਾ ਤਾਂ ਹੀ ਅਸੀਂ ਘਰ ਘਾੜ ਦੇ ਨਾਲ ਰਹੇ ਐਸ ਵਾਈ ਅੱਲਾ ਕਿੱਥੇ ਰੁਕਣੀਆਂ ਸੀ ਜਿਹੜੀਆਂ ਦਿਨ ਰਾਤ ਹਜ਼ਾਰਾਂ ਬੰਦੇ ਹਰ ਰੋਜ਼ ਇੱਕ ਇੱਕ ਕਿਲੋਮੀਟਰ ਲਾਈਨਿੰਗ ਐਸਵਾਈਐਲ ਤੇ ਹੁੰਦੀ ਮੈਂ ਦੇਖਿਆ 1 ਕਿਲੋਮੀਟਰ ਲਾਈਨਿੰਗ ਦਾ ਮਤਲਬ ਥਲੜੇ ਬੇਸ ਦੀ ਕੰਕਰੀਟ ਸਾਈਡਾਂ ਦੀ ਕੰਕਰੀਟ ਸਰੀਆ ਪਾ ਕੇ ਕੰਕਰੀਟ ਇੱਕ ਇੱਕ ਕਿਲੋਮੀਟਰ ਆ ਜਿਹੜਾ ਬਰਨਾਲਾ ਮਰਿਆ ਪਿਛਲੇ ਦਿਨੀ ਇਹਦੇ ਸਮੇਂ ਦੀ ਗੱਲ ਆ। ਤੋਂ ਮੁਸ਼ਕਲਾਂ ਨੇ ਜਿਹੜੀਆਂ ਉਹਦਾ ਦੀ ਹੁਣ ਸਾਡੀ ਪੀੜ੍ਹੀ ਪਹਿਲੀ ਤੁਰ ਗਈ ਅਸੀਂ ਪਾਣੀ ਦੀਆਂ ਘੋਟਾਂ ਪੀਂਦੇ ਤੁਰ ਜਾਾਂਗੇ ਜਿਹੜੇ 50ਵਿਆਂ ਦੇ ਵਿੱਚ 40ਵਿਆਂ ਦੇ ਵਿੱਚ ਨੇ ਪਰ ਅਗਲੀ ਪੀੜ੍ਹੀ ਲਈ ਪਾਣੀ ਉੱਥੇ ਮੁੱਕ ਜਾਣਾ ਔਰ ਇਸ ਗੱਲ ਤੇ ਵੀ ਸਰਵੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਜੇ ਇਸ ਗੱਲ ਤੇ ਖੜਾ ਕਰ ਦਿੰਦੇ ਤੁਸੀਂ ਲੋਕਾਂ ਦਾ ਭਲਾ ਮੰਗਦੇ ਹੋ ਜੇ ਪਾਣੀ ਰੇਗਿਸਤਾਨ 'ਚ ਚਲੇ ਜਾਊ ਉੱਤਰ ਕਿਉਂਕਿ ਉੱਥੇ ਰੇਗਿਸਤਾਨ ਦੇ ਵਿੱਚ ਇੱਕ ਨਹਿਰ ਨੇ ਕੱਖ ਨਹੀਂ ਕਰਨਾ ਬਹੁਤ ਹੋਰ ਵੀ ਫਰੰਟ ਨੇ ਰਾਜਸਥਾਨ ਦੇ ਪਾਣੀ ਤੋਂ ਬਾਅਦ ਸਾਡੇ ਖੇਤਾਂ ਦੇ ਵਿੱਚ ਜ਼ਹਿਰ ਜਿਹੜੀ ਅਸੀਂ ਛਿੜਕਦੇ ਹਾਂ ਉਹਨੂੰ ਬਣਾਉਣ ਲਈ ਪਾਣੀ ਬਣੀ ਬਣਾਈ ਨਹਿਰ ਤੁਹਾਨੂੰ ਪਤਾ ਨੈਸ਼ਨਲ ਫਰਟੀਲਾਈਜ਼ਰ ਤੇ ਐਨ ਐਫ ਐਲ ਦੇ ਵਿੱਚ ਪਾਣੀ ਨੂੰ ਪਾਰ ਕੇ ਉਹਦੀਆਂ ਅਲੱਗ ਗੈਸਾਂ ਕਰਕੇ ਦੋਨਾਂ ਦੀਆਂ ਉਹਦੇ ਤੋਂ ਅੱਗੇ ਯੂਰੀਆ ਤੇ ਕਿਸਾਨ ਖਾਦ ਬਣਦੀ ਹੈ ਨੰਗਲ ਵਾਲੀ ਫੈਕਟਰੀ ਜੇ ਕਿਸੇ ਨੇ ਤੁਸੀਂ ਦੇਖਿਆ ਹੋਵੇ ਬਣੀ ਬਣਾਈ ਇੱਕ ਨਹਿਰ ਘੜਕ ਹੁੰਦੀ ਆ ਉਹਦੇ ਵਿੱਚ ਦਿਨ ਰਾਤ ਉਹਦਾ ਕੰਮ ਯੂਰੀਆ আর ਕਿਸਾਨ ਖਾਦ ਬਣਾएंगे ਫਿਰ ਆਪ ਕੋ ਦੇਂਗੇ ਤੁਸੀਂ ਬਕਸੀਨ ਤੇ ਪਾਓ ਫਿਰ ਉਹਦਾ ਦੁੱਧ ਪੀਓ ਦੁੱਧ ਪੀਣ ਤੋਂ ਬਾਅਦ ਗੱਲ ਦੇ ਕੈਂਸਰ ਹੈ ਬਿਲਕੁਲ ਮੈਂ ਗੱਲ ਕਰਨੀ ਹੈ ਪ੍ਰਜੋਤ ਕੌਰ ਕੈਂਥ ਨੇ 80 100 ਤੋਂ 80 ਅਪੰਗ ਜਵਾਕ ਜੰਮੇ ਐ ਇੱਕੋ ਪਿੰਡ ਚ ਹੁਣ ਮੈਕਮਾਸਟਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਆਫ ਵਾਟਰਲੂ ਦੇ ਸੈਂਸਦਾਨ ਜਾ ਰਹੇ ਨੇ ਤੇ ਪਰ ਇਹ ਖਰਾਇਤੀ ਸੰਸਥਾ ਜਿਹੜੀਆਂ ਸਾਨੂੰ ਉਜਾੜ ਹੋਣ ਅਜਾੜੇ ਤੋਂ ਸਾਡਾ ਸ਼ਿਕਾਰ ਫਿਰ ਖੇਡ ਰਹੇ ਨੇ ਲਾਓ ਕੈਂਪ ਆਊਗੀ ਗੱਡੀ ਦਿਓ ਪੈਸੇ ਫਿਰ ਤੁਹਾਡੇ ਚਾਚੀਆਂ ਤਾਈਆਂ ਦਾ ਦੇਖਾਂਗੇ ਕੈਂਸਰ ਕਿੰਨੇ ਨੂੰ ਪਰ ਉਹਨਾਂ ਤੋਂ ਬਚਾਊ ਕੌਣ ਸਾ ਰੱਬ ਜਾਣੇ ਅਸੀਂ ਕਦ ਸਾਨੂੰ ਸੋਝੀ ਆਊ ਜਿਹੜੀ ਆ ਸਾਖਰਤਾ ਪੰਜਾਬ ਦਾ ਰਾਜਨੀਤਿਕ ਬਦਲ ਦੇ ਲਈ ਆ ਦਿਨ ਰਾਤ ਚੱਲ ਰਹੀ ਕਿਤੇ ਇਹ ਸਾਖਰਤਾ ਪਾਣੀਆਂ ਨੂੰ ਬਚਾਉਣ ਲਈ ਇਹੀ ਮੁਹਿਮ ਇਹ ਵੋਟਾਂ ਤੋਂ ਬਾਅਦ ਸ਼ੁਰੂ ਹੋ ਜਵੇ ਤੁਸੀਂ ਕੁਝ ਕਰ ਸਕਦੇ ਪਰ ਹਰ ਇੱਕ ਬੰਦੇ ਨੂੰ ਬਾਹਰ ਬੈਠਾ ਜਿਹੜਾ ਡੈਸਕਪੁਰਾ ਸਿੱਖ ਆ ਆਪ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਉਸ ਜੇ ਧਰਤ ਤੇ ਜਾਣਾ ਜੇ ਉਹ ਧਰਤ ਬਸਾਉਣੀਆਂ ਪਾਣੀ ਸਾਹਮਣੇ ਪੈਣੇ ਪਾਣੀਆਂ ਦੀ ਜਦ ਵੰਡ ਹੋਈ ਜਦ ਕਿੰਨੇ ਮਿਲੀਅਨ ਏਕੜ ਫੁੱਟ ਸੀ ਤੇ ਹੁਣ ਕਿੰਨੇ ਮਿਲੀਅਨ ਏਕੜ ਫੁੱਟ ਆ 70 ਮਿਲੀਅਨ ਏਕੜ ਫੁੱਟ ਦੇ ਕਰੀਬ ਵਿਦੇਸ਼ਾ ਜੀ ਦੱਸਦੇ ਆ ਪੰਜਾਬ ਦੇ ਨੂੰ ਜ਼ਰੂਰਤ ਹੈ ਰਹਿ ਗਿਆ ਕਿੰਨਾ 13-14 ਮਿਲੀਅਨ ਜੇ ਕਹਿੰਦੇ ਸਾਰਾ ਜਾਂਦਾ ਵੀ ਰੋਕ ਦਿਓ ਤਾਂ ਵੀ 29-30 ਮਿਲੀਅਨ ਹੁਣ ਫੇਰ ਵੀ ਘਟਦਾ ਜਾਂਦੀਆਂ ਚੀਜ਼ਾਂ ਜਿਹੜੀਆਂ ਰੋਕਣੀਆਂ ਉਹ ਅਸੰਭਵ ਨਹੀਂ ਲੋਕਾਂ ਨੂੰ ਐਕਟ ਕਰਨਾ ਚਾਹੀਦਾ ਕਵੇਰੀ ਨਦੀ ਦਾ ਤੁਸੀਂ ਵੇਖਿਆ ਆਪਸਟਰੀਮ ਜਿਹੜਾ ਸੂਬਾ ਉਹ ਕਹਿੰਦਾ ਤਪਕਾ ਵੀ ਨਹੀਂ ਦੇਣਾ ਸੀ ਆਂਧਰਾ ਵਾਲੇ ਕਹਿੰਦੇ ਤਪਕਾ ਵੀ ਨਹੀਂ ਦੇਣਾ ਤਾਮਲ ਨੂੰ ਕਹਿੰਦੇ ਹਲ ਨੂੰ ਨਹੀਂ ਦੇ ਦਿਓ ਕਹਿੰਦੇ ਖੜਾਉਣ ਨੂੰ ਵੀ ਦੇਣਾ ਹਰ ਵੀ ਸਾਡੇ ਆਉ ਦੇਣਾ ਹੀ ਰਾਜਸਥਾਨ ਨੇ ਉਹਦੇ ਤੋਂ ਵੀ ਗਾਹ ਮੰਗਿਆ ਜੀ ਉਹ ਤੁਸੀਂ ਕਿੱਥੇ ਇਸ ਦਾ ਬੈਠੇ ਸਾਨੂੰ ਕੱਖ ਨਹੀਂ ਦਿੰਦੇ ਤੁਹਾਨੂੰ ਕਿੱਥੇ ਯੂਪੀ ਵਾਲੇ ਜਿਨ੍ਹਾਂ ਦੇ ਪਰਵਾਸੀ ਮਜ਼ਦੂਰ ਤੁਹਾਡੇ ਘਰਾਂ ਚ ਆ ਕੇ ਕੰਮ ਕਰਦੇ ਨੇ ਉਹਨਾਂ ਦੇ ਸਿਆਣੇ ਸੀਐਮ ਨੇ ਕਿਆ ਕਹਿੰਦਾ ਸਾਨੂੰ ਸੱਤੀ ਉਹ ਚੰਗੀ ਐ ਦੇਸੀ ਉਹ ਬੀਜਾਂਗੇ ਅਸੀਂ ਨਹੀਂ ਕल्याण ਕਰਨ ਜਿਹੜੇ ਸੂਬੇ ਚੋਂ ਤੁਹਾਡੇ ਘਰਾਂ ਚ ਆ ਕੇ ਲੋਕ ਬਿਹਾਰ ਚੋਂ ਕੰਮ ਕਰਦੇ ਰਹੇ ਨਤੀਸ਼ ਕੁਮਾਰ ਨੇ ਆਉਣ ਵਾਲੇ ਸਾਲਾਂ ਚ ਲੋਕ ਆਉਣ ਪੰਜਾਬ ਚ ਬੰਦ ਕਰ ਦੇਣੇ ਨੇ ਉਹ ਵਧੀਆ ਆਪਣੇ ਸੂਬੇ ਨੂੰ ਬਣਾ ਰਿਹਾ ਉਹਨੂੰ ਮੈਂ ਨੇੜਿਓਂ ਵੇਖਿਆ ਸੂਬੇ ਨੂੰ 82ਵੇਂ 82 ਤੋਂ ਲੈ ਕੇ 92 ਤੱਕ 10 ਸਾਲ ਅਸਨੇ ਨੂੰ ਨੇੜਿਓਂ ਵੇਖਿਆ ਯੂਪੀ ਸਾਰੀ ਗਾਈ ਸਾਰਾ ਕੁਛ ਮੈਂ ਨੇੜਿਓਂ ਵੇਖਿਆ ਜ਼ਮੀਨੀ ਪੱਧਰ ਤੇ ਸਿਰਫ ਯੂਪੀ ਚ ਦੇਸੀ ਸ਼ਰਾਬ ਲੋਕ ਪੀ ਲੈਂਦੇ ਉੱਥੇ ਮੌਆ ਪੀ ਲੈਂਦੇ ਬਿਹਾਰ ਦੇ ਵਿੱਚ ਤੇ ਉਹਦੇ ਖਤਮ ਚੁੱਲੂ ਕਹਿੰਦੇ ਆ ਉੱਥੇ ਟ్రਾਈਬਸ ਜਿਹੜੇ ਲੋਕ ਸੀ ਨਿਸ਼ਾਦਰ ਗੁੜ ਮਿਲਾ ਕੇ दारू ਕੱਢ ਕੇ ਸੁੱਤੇ ਰਹਿੰਦੇ ਸਾਰਾ ਦਿਨ ਅੱਜ ਬਿਹਾਰ ਸਟੇਟ ਡਰਾਈ ਸਟੇਟ ਹੈ ਲੀਗਲੀ ਇੱਕ ਤੁਸੀਂ ਬੋਤਲ ਨਹੀਂ ਖਰੀਦ ਸਕਦੇ ਇਹ ਨੂੰ ਕਹਿੰਦੇ ਨੇ ਲੋਕ ਜਿਹੜੇ ਆਪਣੀ ਲੈਗਸੀ ਛੱਡ ਕੇ ਜਾਂਦੇ ਤੇ ਵੀ ਮੇਰਾ ਇਹ ਭਾਈਚਾਰਾ ਮੇਰਾ ਟੱਬਰ ਮੇਰਾ ਇਹ ਦੇਸ਼ ਬਚਿਆ ਰਿਹਾ। ਹਰ ਉਹਨੇ ਆਹ ਸਤਾਰ ਜਿਹੜੀ ਮਨਾਈ ਉਹਦੇ ਵਿੱਚ ਦਸਤਾ ਲੋਕਾਂ ਨੂੰ ਕਿ ਪਟਨਾ ਕੀ ਹੈ ਤੇ ਮੈਂ ਕਿਹਾ ਬਿਹਾਰ ਕੀ ਹੈ। ਜਿੱਥੇ ਉਹਨੇ ਗੁਰੂ ਸਾਹਿਬ ਦੀ ਦਸਤਕਾਰ ਕੀਤਾ ਉਹਨੇ ਇੱਕ ਐਡਾ ਵੱਡਾ ਟੂਰਿਜ਼ਮ ਦਾ ਸਪੋਰਟ ਖੋਲ ਤਾਂ ਜਿਵੇਂ ਹਜੂਰ ਸਾਹਿਬ ਨੂੰ ਲੋਕ ਜਾਣਗੇ ਉਸ ਤਰ੍ਹਾਂ ਹੀ ਹੁਣ ਪਤਨੇ ਨੂੰ ਜਾਇਆ ਕਰਨਗੇ ਤੁਸੀਂ ਯਾਦ ਰੱਖਿਓ ਇਹ ਗੱਲ ਹੋਵੇਗੀ ਅਸੀਂ ਆਪਣਾ ਬੰਦਾ ਸਰਦਾ ਯੋਗਦਾਨ ਪਾਈਏ ਚਾਹੇ ਉਹ ਰੇਡੀਓ ਤੇ ਬੋਲੀਏ ਚਾਹੇ ਲੋਕਾਂ ਚ ਬੈਠੀਏ ਚਾਹੇ ਕਿਤੇ ਕਰੀਏ ਪੰਜਾਬ ਤੇ ਪੰਜਾਬੀਅਤ ਨੂੰ ਜੇ ਬਚਾਉਣਾ ਪੰਜਾਬ ਦਾ ਪਾਣੀ ਜੇ ਨਾਮ ਬਚਿਆ ਉੱਜੜ ਜੂਗੇ ਥੀਹਾ ਬਣ ਜਣਗੇ ਤੁਸੀਂ ਆਪਣੇ ਅੱਖੀਂ ਵੇਖਿਆ ਹੋਇਆ ਸੱਤ ਮਿਆਂ ਦੇ ਵਿੱਚ ਕਿਹੜਾ ਪਿੰਡ ਆ ਪੰਜਾਬ ਦਾ ਜਿੱਥੇ ਟਿੱਬਾ ਨਹੀਂ ਸੀ ਜਿੱਥੋਂ ਲਿਆ ਕੇ ਆਪਾਂ ਘਰੇ ਪਰਤ ਪਾਉਂਦੇ ਸੀ ਹਰ ਪਿੰਡ 'ਚ ਥੇਹਾਂ ਸੀ ਥੇਹਾਂ ਚੱਕ ਕੇ ਅਸੀਂ ਘਰੇ ਪਾ ਦਿਆਂ ਤੇ ਜ਼ਮੀਨ ਪੱਧਰ ਕਰਤੀ ਤੇ ਪਾਣੀ ਦੇ ਗੋੜ ਲੱਗੇ ਇਹ ਕੈਰੋਂ ਨੇ ਜੀ ਕਿਊਬ ਲਵਾਤੇ ਜੀ ਇਹ ਪੱਕੀਆਂ ਖਾਲੀਆਂ ਪਵਾਤੀਆਂ ਨਾ ਕੈਰੋਂ ਨੂੰ ਪਰ ਕੈਰੋਂ ਨੂੰ ਤਾਂ ਪਤਾ ਹੋ ਜਿਨ੍ਹਾਂ ਦੇ ਦਿਗਦੇ ਸੀ 12 ਇੰਚ ਦੀ 13 ਇੰਚ ਦਾ ਬੋਰ ਉਹ ਕਹਿੰਦੇ ਬੱਲਾ ਬੱਲਾ ਬੱਲਾ ਨੱਕਾ ਮਾਰਨ ਲੈ ਕਈ ਵਾਰ ਆਪ ਹੀ ਪੈਣਾ ਪੈਂਦਾ ਨੱਕੇ ਦੀ ਜਗਾ ਤਾਂ ਮਿੱਟੀ ਲੱਗਦੀ ਐ ਦੀ ਹਿੱਕ ਪਾੜ ਕੇ ਨਿਕਲਿਆ ਦੀ 1 ਲੀਟਰ ਦੀ ਕਿੰਮੇ ਦੀ ਬੋਤਲ ਹਰ ਇੱਕ ਤੋਂ ਲੈ ਕੇ ਨਹੀਂ ਪੀ ਹੋਣੀ ਸਰਦਾਰੋ ਸਮਝ ਜੋ ਦਿਓ ਤੇ ਆਪ ਇੱਥੇ ਅਵੇਅਰ ਵੀ ਇੱਥੇ ਵੀ ਹੋਵੋ ਇੱਥੇ ਹੋਪ ਦੇ ਵਿੱਚ 2.5 ਡਾਲਰ ਦਿੰਦੇ ਆ ਸਿਰਫ ਮਿਲੀਅਨ ਲਈ ਤੋਂ 2.5 ਡਾਲਰ ਦਿੰਦੇ ਇੱਥੇ ਰੌਲਾ ਪਿਆ ਪਿਆ ਬਖੇੜਾ ਖੜਾ ਪਿਆ ਸਰਕਾਰਾਂ ਦੇ ਰਹੀਆਂ ਨੇ ਤੁਹਾਡਾ ਪਾਣੀ ਇੱਥੇ ਦਾ ਹਾਲਾਂਕਿ ਉਹ ਵਾਟਰ ਸ਼ੈਡ ਦੇ ਵਿੱਚੋਂ ਇੱਕ ਲੀਕ ਦੇ ਵਿੱਚੋਂ ਕਦੇ ਧਰਤੀ ਚੋਂ ਨਹੀਂ ਜ਼ੀਰਦੇ ਸਿੱਧਾ ਉੱਪਰੋਂ ਹੀ ਚੱਕਦੇ ਇੱਥੇ ਵਾਲੇ ਬੇਰੀ ਵਾਲਿਆਂ ਨੂੰ ਕਿਹਾ ਕਿ ਡਿਚ ਦੇ ਵਿੱਚੋਂ ਪਾਣੀ ਭਰਨਾ ਬੋਰ ਬਹੁਤ ਘੱਟ ਅਪਰੂਵ ਹੋਣ ਦੇ ਨਾਲੇ ਸਭ ਤੋਂ ਵੱਧ ਪਾਣੀ ਸਾਡੇ ਦੇਸ਼ 'ਚ ਹੈ ਜਿੱਥੇ ਬੋਰ 350 ਫੁੱਟ ਤੇ ਮੱਛੀ ਮੋਟਰ ਸੇ 6 ਮਹੀਨੇ ਬਾਅਦ ਪਾਣੀ ਛੱਡ ਦਿੰਦੀ ਐ ਉੱਥੇ ਆਲੇ ਨੂੰ ਪਤਾ ਤਾਂ ਹੈ ਹੁਣ ਕੀ ਹੋ ਰਿਹਾ ਉਹਦਾ ਸੋਲੂਸ਼ਨ ਨਹੀਂ ਸਰਕਾਰਾਂ ਚੰਗੀਆਂ ਆ ਜਾਣ ਕੋਈ ਵਧੀਆ ਮੁੱਖ ਮੰਤਰੀ ਆ ਜਾਵੇ ਤੇ ਉਹ ਇਸ ਗੱਲ ਤੇ ਵਜਿੱਦ ਹੋਵੇ ਬਾਕੀ ਕੰਮ ਪਿੱਛੇ ਮੈਂ ਪੰਜਾਬ ਦਾ ਪਾਣੀ ਬਚਾਉਣਾ ਫੇਰ ਕੁਝ ਹੋ ਸਕਦਾ ਜੇ ਅੱਜ ਸ਼ੁਰੂ ਕਰੇ ਤਾਂ ਦਸਾਂ ਸਾਲਾਂ ਦਾ ਸਮਾਂ ਚਾਹੀਦਾ ਕੁਝ ਕਰਨ ਕੋਈ ਕੋਡਕਟ ਡੰਡਾ ਤੇ ਝੋਨਾ ਬੀਜਣਾ ਬੰਦ ਫਸਲੀ ਚੱਕਰ ਬਦਲਣ ਲਈ ਡ੍ਰਿਪਿੰਗ ਸਿਸਟਮ ਬਹੁਤ ਕੁਝ ਕਰਨ ਦੀ ਲੋੜ ਹੈ ਉਸੀਂ ਇੱਥੇ ਦੇ ਤੌਰ ਤੇ ਇੱਕੋ ਹੀ ਕਰ ਸਕਦੇ ਆ ਜਿਨ੍ਹਾਂ ਨੂੰ 50 50 ਹਜ਼ਾਰ ਕੀਲੇ ਦਾ ਲੈ ਕੇ ਹਾਲਾ ਕੇ ਉਹਨਾਂ ਨੂੰ ਲੈਣਾ ਮੇਰੀ ਜ਼ਮੀਨ 'ਤੇ ਝੋਨਾ ਨਾ ਲਾਈਂ ਹੀਰ ਜਮਾਉਣ ਨੂੰ ਤਿਆਰ ਦੇ ਹੀਰ ਜਮਨ ਦੀ ਸੋਹਣੀ ਲੱਗਦੀ ਹੈ ਕਿਸੇ ਨੇ ਵੀ ਨਹੀਂ ਕਰਨਾ ਤੁਸੀਂ ਤੁਸੀਂ ਤਾਂ ਉਹੀ ਠੇਕੇਦਾਰਾਂ ਦਾ ਜਾ ਕੇ ਬਾਗੀਆਂ ਪਾਉਣੇ ਆ ਉੱਥੇ ਸਾਲ ਬਾਅਦ 10 ਕੀਲੇ ਨੇ 5 ਲੱਖ ਆਇਆ ਮਹੀਨਾ 1 ਦਾ 30 ਤੇ 5 ਲੱਖ ਰੁਪਈਆ ਆਪਣੇ ਕੋਲ ਹੁਣ ਤਾਂ ਉਸ ਪਰ ਪਰ ਕੇ ਨੋਟ ਖਰਚਣਾ। ਛੇ ਮੁੜ ਜਾਣਾ ਉੱਥੇ। ਜੇ ਆਪਾਂ ਸਹਿਰਦਾਂ ਤੋਂ ਕੁਝ ਕਰ ਸਕਦੇ। ਸਾਹ ਹਰਜੀਤ ਸਿੰਘ ਦੀ ਲਾਈਨ ਨੰਬਰ 2। ਅੰਮ੍ਰਿਤਪਾਲ ਜੀ। ਜੀ। ਅਰਜੀਤ ਭਾਈ ਹੋ ਰਹੇ ਹੈ ਬਈ ਮੈਂ ਰਾਜਸਥਾਨ ਪਰ ਬਿਲੋਂਗ ਕਰਦਾ। ਹੂੰ। ਦੀ ਗੱਲ ਹੋ ਰਹੀ ਸੀ ਕਿ ਐਂਡਕ ਸੁਪੀਆਂ ਕਹੀ ਜਿਹੜੇ ਰਿਜ਼ਲਟ ਆਏ ਆ ਆਪਾਂ ਭਾਈ ਉਹਨੇ ਪਹਿਲਾਂ ਗੱਲ ਕਰਕੇ ਗਏ ਉਹਨਾਂ ਨੇ ਕਾਨੂੰਨ ਕਰ ਦੋ ਬੰਦ ਕਰ ਦੋ ਨਵੰਦੇ ਬੰਦ ਕਰ ਦੋ ਉਹਦਾ ਆਪਾਂ ਦਾ ਮਤ ਹੋਏ ਭਾਈ ਆਪਾਂ ਦੇ ਦੂਜੀ ਹਲ ਚੱਕੇ ਡਾਂਗੜੇ ਯੋਜਨਾ ਹੈ ਬਿਲਕੁਲ ਉਤਰਾਏ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਉਹ ਕਦੀ ਇਹਨਾਂ ਨੇ ਲੱਗਦੀ ਕਲੀ ਕਰਾਈ ਹੈ ਪਾਣੀ ਤਾਂ ਹੀ ਚੋਰੀ ਕਰੀ ਜਾਂਦਾ 50 ਸਾਲੋਂ ਸਾਨੂੰ ਆ ਜਿਹੜਾ ਇਹਨਾਂ ਦੇ ਦਰਿਆਵਾਂ ਦਾ ਪੰਜਾਬ ਦਾ ਵੀ ਹਾਲ ਆ ਉਹ ਦੇਖ ਤੁਹਾਡੇ ਸਾਹਮਣੇ ਇਹ ਵੀ ਕਿਹੜੇ ਕੰਮ ਆ ਆ ਚੱਕਰ ਦੀ ਗੱਲ ਕਰਕੇ ਹਟਿਆ ਪਰ ਸਰ ਜੀ ਇੱਕ ਨਹਿਰ ਜਿਹੜੀ ਜਾਂਦੀ ਆ ਉਹ ਬਾਧੂ ਜਾ ਸਕਦਾ ਸੀ ਪਾਣੀ ਪੜ ਜਾ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਉਹ ਜਾਊਗਾ ਕਿੱਥੇ ਨੂੰ ਗਲਤ ਇਹ ਪਲੀਜ਼ ਹੁਣ ਤੁਸੀਂ ਡਾਗ ਲੈ ਕੇ ਰਾਜਸਥਾਨ ਵਾਲੇ ਪਾਸੇ ਨਾ ਖੜਾ ਹੋ ਮੈਂ ਪੰਜਾਬ ਵਾਲੇ ਪਾਸੇ ਨਹੀਂ ਖੜਾ ਹੋ ਰਿਹਾ ਨਾ ਮੈਂ ਰੋਕ ਰਿਹਾ ਤੁਹਾਡੀ ਨਹਿਰ ਮੈਂ ਤਾਂ ਤੱਥ ਪੇਸ਼ ਕਰ ਰਹੇ ਨੇ ਉਹ ਅਸੀਂ ਜਾ ਕੇ ਕੱਲ ਨੂੰ ਨਕਾ ਲਾਉਣਾ ਹਰੀ ਕੇ ਤੇ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਇਸੇ ਤਰ੍ਹਾਂ ਹੈ ਸਾਗਰ ਮੇਰ ਸਿੰਘ ਦੀ ਲਾਈਨ ਨੰਬਰ 3 ਅੱਸੀ ਆ ਗਿਲ ਸਾਹਿਬ ਅਸੀਂ ਕੱਲ ਜੀ ਜੈਲ ਸਾਹਿਬ ਪਾਣੀ ਦਾ ਆਪਣਾ ਦਾਸ ਹੀ ਸੰਭਾਲਿਆ ਨਾ ਸਾਡੇ ਜਿਹੜੇ ਕੋਈ ਲੀਡਰ ਆ ਮੁੱਖ ਮੰਤਰੀ ਆ ਦਾ ਗੌਂਦ ਦਾ ਲੀਡਰ ਆ ਕਿਸੇ ਨੇ ਵੀ ਇਸ ਬਾਰੇ ਸੋਚਿਆ ਜੀਗਾ ਵੀ ਦੇ ਦੋ ਪਾਣੀ ਦੇ ਦੋ ਦੇ ਦੋ ਉਹਨਾਂ ਨੇ ਸਰਸਵਤੀ ਦੀ ਇੱਕ ਕਿੰਨੇ ਵਗੀ ਆ ਕਿ ਸਿੱਧਾ ਪਾਣੀ ਚੱਕ ਕੇ ਲੈ ਜਾਣਾ ਇਹਨਾਂ ਨੇ ਰਾਜਸਥਾਨ ਵਿੱਚ ਦੀ ਉਹ ਗੱਦਬੀ ਰਾਜੂ ਲੈ ਜਾਣਾ ਉਹ ਤੋਂ ਆਪਣੇ ਕੋਲੇ ਪਾਣੀ ਔਰ ਰਾਵੀ ਬਿਆਸ ਦਾ ਉਹ ਨਹੀਂ ਦੇਣਾ ਪਾਣੀ ਇਹਦਾ ਵੀ ਇਹ ਪ੍ਰਪੋਜ਼ਲ ਹੈ ਕਿ ਹੋਵੇ ਸਰਭੇ ਇੱਕ ਕੌਂਸਲ ਨਾਲ ਸ਼ੁਰੂ ਹੋ ਗਿਆ ਥੈਂਕ ਯੂ ਜਿਹੜੇ ਆਪਾਂ ਪੰਜਾਬ ਅਜ਼ੀਜ਼ ਦੇ ਆਪਣਾ ਵਫਾਦਾਰ ਆਪਾ ਸੂਬੇ ਦੇ ਵਾਸਤੇ ਬਿਲਕੁਲ ਕੋਈ ਵੀ ਹੈ ਜੀ ਹਰਿ ਗੁਰੂ ਆਪ ਦੀ ਪਈ ਆ। ਉਹ ਲੀਡਰ ਹੁਣ ਵੇਖੋ ਵੀ ਜਿਹੜੀ ਆ ਲੈਡ ਰਿਕੁਇਰਮੈਂਟ ਜਹੀਦਾਰ ਦੀ ਹਿੰਦੀ ਆ ਇਹਨਾਂ ਨੇ ਬੀਜੇਪੀ ਦੇ ਨਾਲ ਆਪਣਾ ਵੋਟ ਦਿੱਤੀ ਆ ਤੇ ਕਾਂਗਰਸ ਦੇ ਉਹਦੇ ਪਰਖਲਾਵ ਦਿੱਤੀ ਆ ਤੇ ਜਿਹੜੇ ਸ਼ਿਲਸ਼ਹਾਰਾ ਨੇ ਵੀ ਉਲਟ ਦਿੱਤੀ ਆ ਅਲਸ ਦਾਲ ਦੀ ਪਾਰਟੀ। ਹੁਣ ਸਿੰਘ ਦੀ ਲਾਈਨ ਨੰਬਰ 4 ਇਨਸਾਨ ਸ਼ਾਸਤਰੀ ਸਸੀ ਕਾਲਜੀ ਬਾਈ ਜੀ ਸਸੀ ਕਾ ਅੱਜ ਗੱਲਬਾਤ ਤੁਸੀਂ ਦੇਖਿਆ ਆਪਣੇ ਵੀਰ ਆਏ ਸੀਗੇ ਰਾਜਸਥਾਨ ਦੇਖੋ ਆਪਾਂ ਪਹਿਲਾਂ ਗੱਲਾਂ ਬਾਤਾਂ ਸੁਣੀਆਂ ਪੜੀਆਂ ਸਿਆਣੀਆਂ ਗੱਲਾਂ ਬਾਤਾਂ ਸਾਰੀਆਂ ਸਾਡੇ ਸਾਹਮਣੇ ਨੇ ਆਪਾਂ ਤਾਂ ਰਹੇ ਜੀ ਪੰਜਾਬੀਆਂ ਨੂੰ ਟੋੜਨ ਦੀ ਗੱਲ ਸਾਡੇ ਤੇ ਐਡਾ ਰਫੜ ਪਾਦਾ ਸੀ ਆਪਸ ਵਿੱਚ ਹੀ ਬੰਦੇ ਗਿਆ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ ਬਿਹਾਰ ਚੋਂ ਕੋਲਾ ਆਉਂਦਾ ਧੱਕੇ ਦਾ ਫ੍ਰੀ ਲੈਣਾ ਉਹਨਾਂ ਨੂੰ ਪੇ ਕਰਦੀ ਆ ਪੰਜਾਬ ਗਵਰਨਮੈਂਟ ਤੇ ਚੀਜ਼ਾਂ ਨੇ ਗੱਲ ਸਾਹਿਬ मैं ਇਹ ਕਹੂੰਗਾ ਵੀ ਆਪਾਂ ਕਹਿੰਦੇ ਨਾ ਜੀ ਕੋਈ ਮੁੱਖ ਮੰਤਰੀ ਨਹੀਂ ਆਇਆ ਇਹ ਤਾਂ ਉਲਟਾ ਸੀ ਕੋਈ ਮੁੱਖ ਮੰਤਰੀ ਆਪਦਾ ਬਣਾਇਆ ਹੀ ਨਹੀਂ ਅੱਜ ਅਸੀਂ ਮੈਂ ਗੱਲ ਕਹਿਣਾ ਦੇਖੋ ਆਪਾਂ ਹੀ ਗੱਲ ਕਰਦੇ ਆ ਰੋਜ਼ ਕੇਜਰੀਵਾਲ ਕਹਿੰਦਾ ਪੰਜਾਬ ਤੇ ਪਾਣੀ ਤੇ ਦਿੱਲੀ ਦਾ ਹੱਕ ਆ ਆ ਉਹਨੂੰ ਮਾਰਿਆ ਉਹਨੂੰ ਬੇਵਕੂਫ ਸਮਝਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇ ਉਹ ਚਿੱਤ ਕੇ ਆਪਣੇ ਹੱਕ ਦੀ ਉਹਨੇ ਗੱਲ ਕੀਤੀ ਗਿਲਸਾਹ ਉਹ ਵੀ ਇਹਨਾਂ ਨੇ ਉਲਟ ਕਿਹਾ ਸਾਡੇ ਨੇ ਇਹ ਤਾਂ ਜੀ ਮੂਰਖਾ ਗੱਲ ਕਰਨ ਦੀ ਜਿਹੜਾ ਸਾਨੂੰ 'ਚ ਵੀ ਨਹੀਂ ਖੜ ਸਕਦੇ ਤੇ ਕੌਮ ਦਾ ਮੈਂ ਇਹ ਬੇਨਤੀ ਕਰਦਾ ਦੇਖੋ ਗਿਲਸਾਹ ਤੁਹਾਡੇ ਘਰ ਚੋਰੀ ਹੁੰਦੀ ਆ ਸਭ ਤੋਂ ਪਹਿਲਾਂ ਮੈਨੂੰ ਉਹ ਚੰਗੀ ਨਹੀਂ ਲੱਗੀ ਜਿਹੜੀ ਕਹਿੰਦੇ ਨੇ ਸਿੱਖਾਂ ਨੇ ਸਿੱਖਾਂ ਦਾ ਮੁੱਦੂ ਮੁੱਦਾ ਬਣਾਤਾ ਧਰਮ ਯੁੱਧ ਮੋਰਚਾ ਬਣਾਤਾ ਓਏ ਕਿਉਂ ਉਹਨਾਂ ਦੀ ਬਣਨਾ ਚਾਹੀਦਾ ਗੱਲ ਤਾਂ Papa ਰੋਕਦਾ ਕਿਸੇ ਪੰਜਾਬੀ ਨੂੰ ਨਹੀਂ ਆ ਨਾ ਲਓ ਸਾਰੇ ਹਿੰਦੂਆ ਨੇ ਵੀ ਉਹਦੇ ਚ ਭਾਗ ਲਿਆ ਮੁਸਲਮਾਨਾਂ ਨੇ ਵੀ ਉਹਦੇ ਚ ਭਾਗ ਲਿਆ ਦੇ ਉੱਤੇ ਸਿੱਖਾਂ ਝੰਡਾ ਚੱਕਿਆ ਨੇ ਕਿਹਾ ਨਹੀਂ ਇਹਨਾਂ ਨੇ ਕੱਲਿਆਂ ਨੇ ਚੱਕ ਲਿਆ ਇਹ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਪਿੱਛੇ ਛੱਟਣ ਵਾਲੀਆਂ ਨੇ ਔਰ ਮੈਂ ਇੱਕ ਬੇਨਤੀ ਕਰ ਚੱਲਿਆ ਠੀਕ ਆ ਜਿਹੜੇ ਗੁਲਾਮ ਸਿੱਖਾਂ ਨੂੰ ਨਹੀਂ ਹੈ ਤਾਂ ਪਤਾ ਨਾ ਹੋ ਗਏ ਉਹਨਾਂ ਨੂੰ ਲੱਗੜਾ ਬਣੀ ਪਰ ਸੰਤ ਬਾਬਾ ਜਰਨੈਲ ਸਿੰਘ ਨੇ ਇੱਕ ਲਕੀਰ ਖਿੱਚਤੀ ਆ ਜੀ ਜਿੱਦਣ ਉਹ ਆਪਣੇ ਗੂੜੀਆਂ ਖਾਤੀਆਂ ਨੇ ਜਿੱਦਣ ਉਹਨੇ ਸੀਨੇ ਚ ਪਈ ਸਿਕੋ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ ਜੇ ਮਿਲਣਾ ਕਰਕੇ ਬੰਦ ਕਰਨ ਲੱਗਿਆ ਦਾ ਦੁਕਾਨ ਤੇ ਖੰਡ ਉਹਨੂੰ ਮਿਲਦੇ ਨੇ ਪਟਾਕੇ ਇਹ ਇਹਨਾਂ ਦੀ ਇਹ ਹਾਲਤਾ ਕੁਛ ਮੰਗੀਆਂ ਜਿਹੜੇ ਇਹਨਾਂ ਨੂੰ ਲੁੱਟਣ ਆਲੇ ਉਹਨਾਂ ਕੋਈ ਮਗਦੇ ਫਰੀ ਜਾਂਦੇ ਆ ਇਸ ਕਰਕੇ ਜਿੱਦਣ ਸਾਡਾ ਰਾਜ ਬਣ ਗਿਆ ਗੱਲ ਸਾਹਿਬ ਇਹ ਹਾਲ ਉਦੋਂ ਹੀ ਹੋਣੇ ਆ ਤੁਹਾਡੀ ਕੋਈ ਮਿਹਰ ਨਹੀਂ ਰੁਕਣੀ ਉਹੀ ਕੁਛ ਨੀ ਹੋਣਾ ਜਿੰਨਾ ਮਰਜ਼ੀ ਰੌਲਾ ਪਾ ਲੈਣਗੀ ਅੱ ਲਈ ਮੇਰੀ ਬੇਨਤੀ ਆ థాంਕ ਯੂ ਤੁਹਾਡਾ ਤੁਸੀਂ ਫੇਰ ਵੀ ਅਵੇਅਰਨੈਸ ਕਰਦੇ ਹੋ ਸ਼ਾਇਦ ਸਾਡੇ ਗ੍ਰਾਮ ਸਿੱਖਾਂ ਦੇ ਮਨ ਦੇ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਜੀ ਦੇਖੋ ਪਾਣੀ ਦੋ ਗੱਲਾਂ ਕਰਨਾ ਚਾਹੁੰਦਾ ਕਰੋ ਪਾਣੀ ਜਿਹੜਾ ਕੁਝ ਡਿਸੀਜਨ ਸਰਕਾਰਾਂ ਨੇ ਲੈਣੇ ਆ ਕਿ ਕੁਛ ਡਿਸੀਜਨ ਜਿਹੜੇ ਆ ਲੋਕਾਂ ਨੇ ਲੈਣੇ ਆ। ਸਰਕਾਰਾਂ ਜਦੋਂ ਲੈਣ ਗਿਆ ਸੋ ਲੈਣ ਗਿਆ। ਜਿਹੜੇ ਲੋਕ ਲੈ ਕਰਕੇ ਸਮੱਸਿਆ ਨੂੰ ਦੂਰ ਕਰ ਸਕਦੇ ਆ। ਮੈਂ ਉਦਾਹਰਨ ਦੇਣਾ ਤੁਹਾਨੂੰ ਅੱਜ ਤੋਂ ਕੋਈ 28 ਸਾਲ ਪਹਿਲੇ ਨਾਲ ਪੀਨੇ ਗਿਆ। ਬੀਨੇ ਉੱਥੋਂ ਮੇਰਾ ਇੱਕ ਦੋਸਤ ਸੀਗਾ ਬਲਡੋਜੇ ਚਲਾਉਂਦਾ ਸੀ ਰਾਜੂ। ਔਰ ਉਹ 700-800 ਡਾਲਰ ਘੰਟੇ ਦਾ ਲੈਂਦਾ ਸੀ ਬਲਡੋਜੇ ਚਲਾਉਣੇ ਦਾ। ਉਹ ਮਾਇਆਪੁਰੀ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਕਹਿੰਦਾ ਕੁਲਵੰਤ ਸਿੰਘ ਆ। ਉੱਥੇ ਬਠਾ ਕੀ ਕਰਦਾ ਚੱਲ ਉੱਥੇ ਪੀਨੇ ਮੇਰੇ ਨਾਲ ਕਹਿੰਦਾ ਉੱਥੇ 2 ਲੱਖ ਦਾ ਬੁਲਡੋਜ਼ਰ ਪਾਈ 10,000 800 ਡਾਲਰ ਘੰਟੇ ਦੇ ਚੱਲਦਾ ਮੈਂ ਕਰਦੇ ਕੀ ਆ ਮੈਂ ਉਹਦੇ ਨਾਲ ਚਲਾ ਗਿਆ ਜੀ ਜਾ ਲੱਗੀ ਆ ਕੋਈ ਉਹ ਨਹੀਂ ਪੰਪ ਵਗੈਰਾ ਕੁਝ ਨਹੀਂ ਲੱਗਿਆ ਉਹ ਸਿਰਫ ਤਲਾਬ ਖੋਦਦੇ ਨੇ ਉਹ ਪਾਣੀ ਜਮਾ ਕਰ ਲੈਂਦੇ ਆ ਨਾਲ ਹੀ ਉਹ ਖੇਤੀਬਾੜੀ ਕਰਦੇ ਆ ਫਿਰ ਸੋ ਜਿੱਥੇ ਕਿਸ ਜਗ੍ਹਾ ਤੇ ਪੰਪੀ ਨਹੀਂ ਲੱਗਦੀ ਉੱਥੇ ਵੀ ਹੁੰਦੀ ਵੀ ਆ ਲekin utthe do fadla beej deya ek kaale chhole te ek swaadheen ode naal ek saada ji gall meri jagah ch jagah kehdi hai bina bina ji eh bina wala ilaaka mp madhya pradesh da ilaaka hai theek theek thank you haan ji te utthe zameenan iniyan sastiyan da dono us ਮਤਲਬ ਜਿੱਤੇ ਪਾਣੀ ਵਾਲੀ ਜ਼ਮੀਨ ਸੀਗੀ ਉਹ ਜ਼ਮੀਨ ਤੇ ਉੱਥੇ ਮੈਂ ਤੇ ਉਹ ਕਹਿੰਦਾ ਵੀ 400 1 ਲੱਕ ਤੇ ਤੁਹਾਨੂੰ ਪੱਥਰ ਹੀ ਮਿਲਣਾ ਇੱਥੇ। ਤੇ ਬੰਪੀ ਦੇ ਲਗਾੜਾ ਦੇ ਉਹਨਾਂ ਲੱਖਾਂ ਰੁਪਏ ਲੈ ਕੇ ਲੋਕ ਇੱਥੇ ਬੈਠੇ ਨੇ। ਤੋਂ ਕਹਿੰਦਾ ਮਤਲਬ ਲੋਕ ਜਿਹੜੇ ਨੇ ਡਿਸੀਜਨ ਲੈ ਸਕਦੇ ਆ ਕਿ ਅਸੀਂ ਫਜ਼ਲਾ ਚੇਂਜ ਕਰੀਏ। ਜਿਹੜਾ ਝੋਨਾ ਐ ਨਹੀਂ ਪਾਣੀ ਮੰਗਦਾ ਇਹਨਾਂ ਉਹ ਸਾਰਾ ਪਾਣੀ ਤਾਂ ਉਹੀ ਖਿੱਚ ਜਾਂਦਾ ਹੁਣ ਹਰ ਇੱਕ ਕਿਸਾਨ ਉਸੇ ਝੋਨਾ ਬੀਜੀ ਨਾਲ ਖਤਮ ਹੀ ਹੋਣਾ ਵਾ ਤੁਸੀਂ ਮੁੱਦਾ ਇਹ ਲੋਕ ਲੋਕਾਂ ਦਾ ਡਿਸੀਜਨ ਲੈਣਾ ਬਾਕੀ ਜਿਹੜਾ ਸਰਕਾਰ ਆ ਜੋ ਨੂੰ ਜਾਂਦਾ ਜਾਂ ਸਰਕਾਰਾਂ ਦੇ ਡਿਸੀਜਨ ਸਰਕਾਰਾਂ ਦੇ ਬਾਅਦ ਚੱਲਦੀਆਂ ਰਹਿਣੀਆਂ ਪਰ ਲੋਕ ਦਾ ਡਿਸੀਜਨ ਲੈ ਕੇ ਆਪਣੀਆਂ ਫਸਲਾਂ ਚੇਂਜ ਕਰ ਸਕਦੇ ਜੀ ਥੈਂਕ ਯੂ ਜੀ ਥੈਂਕ ਯੂ मोहन सिंह जी लाइन नंबर 2 हेलो कल साहब सत श्री अकाल जी सत श्री अकाल जी के साहब जे जमीन थी जो साची रही हाड़े पे से ਲੋਕਾ ਲੋਕ ਬੜਸ ਦੇ ਮਾਰੇ ਖੂਨ ਵੀ ਹੋਏ ਪਾਣੀ ਇਹ ਦੇਰ ਨੇ ਪਾਣੀ ਬਲੇ ਪਰ ਮੈਂ ਆਪਣੇ ਖਤੇ ਦੀ ਦੇ ਨਗੜਾ ਦਾ ਗਵਰਨਮੈਂਟ ਜਾਣ ਨਹੀਂ ਜਿਹਨਾਂ ਪੰਜਾਂ ਪਾਣੀ ਜਾਣ ਨਹੀਂ ਦੇ ਅੱਡ ਠੀਕ ਨਹੀਂ ਆਉਣਾ ਪਾ 500 ਫੁੱਟ ਜਦੋਂ ਮੁੱਕ ਗਿਆ ਫੇਰ ਹੀ ਟਿਕਾਣੇ ਆ ਕੇ ਬੈਠਾ ਉਦਾਂ ਨਹੀਂ ਹਟ ਸਕਦੇ ਸਸੀ ਕਾਲਜੀ ਸਾਹਿਬ ਸਸੀ ਕਾਲਜੀ ਕਲਾਸ ਸਾਹਿਬ ਇਹ ਪਜੀ ਸਾਰੀ ਗੱਲ ਬਾਤ ਸੁਣੀ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੰਜੀਦਾ ਮੁੱਦਾ ਆ ਇਹਨਾਂ ਮੇਰੇ ਮੇਰੀ ਮੇਰੇ ਨਾ ਵਾਟਰ ਕ੍ਰਾਈਸਿਸ ਪੇਜ ਬਣਾਇਆ ਹੋਇਆ ਨਾ ਮੇਰਾ ਕੰਮ ਮੈਂ ਲਾਈਕ ਵੀ ਕੀਤਾ ਵਾਟਰ ਕ੍ਰਾਈਸਿਸ ਹਾਂ ਮੇਰੇ ਕੋਲ 2000 ਲਾਈਕ ਹੀ ਆ ਉਹਦੇ ਉੱਤੇ ਸਿਰਫ ਆਵਾਜ਼ ਨਹੀਂ ਹੁਣ ਲੋਕ ਨਹੀਂ ਦੇਖਦੇ ਜੀ ਹੁਣ ਕਿਹ ਨੂੰ ਕਹੀ ਦੱਸੀ ਤੇ ਜਾਣੇ ਆ ਲੋਕ ਉਹਨੂੰ ਚੈੱਕ ਨਹੀਂ ਕਰਦੇ ਹਾਂ ਨਹੀਂ ਇਹਨਾਂ ਨੂੰ ਭਾਜੀ ਉਹਨਾਂ ਨੂੰ ਕਹੋ ਬੂਸਟ ਕਰਨ ਔਰ ਹੁਣ ਜਿੱਦਾਂ ਕੋਈ ਵੀ ਕਲਾ ਲੈ ਲਓ 10 ਸਾਲ ਲੱਖ ਉਹਨਾਂ ਦੇ ਲਾਈਕ ਹੁੰਦੇ ਉਹਨਾਂ ਦੇ ਆ ਜੀ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਮੈਂ ਉਹ ਭਲਾਰ ਜੀ ਉਹ ਬਹੁਤ ਕੁਝ ਹੁੰਦਾ ਐ ਐਨੀ ਵੇਜ਼ ਤੁਸੀਂ ਐ ਦੱਸੋ ਵੀ ਤੁਸੀਂ ਅਵੇਰਨੈਸ ਜਿਵੇਂ ਹੁਣ ਤੁਹਾਨੂੰ ਕੋ ਪਤਾ ਲੱਗਦਾ ਯੂ ਟੇਕ ਕਹਾਣੀ ਆਉਂਦੀ ਆ ਦਿਮਾਗ ਦੇ ਵਿੱਚ ਬਹੁਤ ਜਿਆਦਾ ਆਉਂਦੀ ਆ ਜਦੋਂ ਵੀ ਗੱਲਬਾਤ ਕਰੀਦੀ ਆ ਪਰ ਹੁਣ ਇੰਡੀਆ ਕੀ ਕਰਨ ਕੋਈ ਉਹਨਾਂ ਕੋ ਸਾਧਨ ਨਹੀਂ ਹੈ ਨੀਗਾ ਰੋਟੀ ਕਿੱਥੋਂ ਖਾਣਾ ਨਾ ਖਾਤੇ ਬਹੁਤ ਆ ਕੋਈ ਮਦਦ ਪਾਣੀ ਮੁੱਕ ਗਿਆ ਖਾਣਗੇ ਫੇਰ ਜਿੱਦਾਂ ਕਹਿੰਦੇ ਹੁੰਦੇ ਬੰਦਿਆਂ ਨਾਲ ਸਾਡੇ ਮੰਨ ਲਗੇ ਫਿਰ ਹੋਰ ਚੀਜ਼ ਹੋ ਜਾਈ ਤੇ ਪਰ ਉਹ ਭਾਜੀ ਹੁਣਾਂ ਨੂੰ ਕਿਉਂਕਿ ਥੋੜਾ ਜਿਹਾ ਜਿੱਦਾਂ ਬਿਲਕੁਲ ਦੇ ਨਾ ਥੋੜਾ ਜਿਹਾ ਥੋੜਾ ਜਿਹਾ ਕਰਨ ਹੋਰ ਥੋੜਾ ਵੀ ਹੋ ਜਾਂਦੀ ਆ ਨਾਲ ਪਤਾ ਲੱਗੂਗਾ ਘੱਟ ਤੋਂ ਘੱਟ 2-3 ਲੱਖ ਚਾਹੀਦੇ ਆ ਮਮੁੱਲੀ ਚਾਹੀਦੇ ਆ ਨਾਲ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਨੰਬਰ ਹਨੋ 사ਸ리카 사ਸ리카ਪਾਲ ਜੀ ਹਾਂਜੀ ਭਾਈ ਆਪਾਂ ਡਿਸਕਸ ਕਰ ਰਹੇ ਸੀ ਆਪਨੂੰ ਇਕਨੋਮਿਕਲੀ ਆਪਨੂੰ ਕਿਸਾਈ ਬਣਾਇਆ ਜਾ ਰਿਹਾ ਹੈ ਉਹੀ ਮੇਰੇ ਖਿਆਲ ਸੋਸ਼ਲ ਜਾਂ ਰਿਲੀਜੀਅਸ ਸਟਰਕਚਰ ਨੂੰ ਵੀ ਰਿਲੀਜੀਅਸ ਮੀਡੀਆ ਦੇ ਥਰੂ ਐਂਟਰਟੇਨਮੈਂਟ ਥਰੂ ਐਂਡ ਵੀ ਕਹਿੰਦਾ ਤੁਸੀਂ ਰਿਲੀਜਨ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਫੈਮਿਲੀ ਜਾਂ ਦੀ ਗੱਲ ਕਰ ਕਰ ਸਕਦੇ ਇਹ ਮੇਰੇ ਜਿਹੜੀ ਹੁਣ ਆਪਣੀ ਇੱਕ ਨਵੀਂ ਪਾਰਟੀ ਹੈਗੀ ਇਹ ਇਹਨੂੰ ਖਤਮ ਕਰਨਾ ਹੈ ਆਪਣੀ ਫੈਮਿਲੀ ਦਾ ਸੋਸ਼ਲ ਰਿਲੀਜੀਅਸ ਸੈਂਸ ਨੂੰ ਜਿਹੜੇ ਆਪਣੇ ਰੋਲਾ ਪਾਉਂਦੇ ਆ ਖਾਲਸਾ ਨਹੀਂ ਲੱਗ ਗਿਆ ਤੇ ਇਹਨਾਂ ਨੂੰ ਵੀ ਆਪਣੇ ਰਿਲੀਜੀਅਨ ਦਾ ਪਤਾ ਲੱਗ ਜਾ ਵੀ ਕੀ ਬੰਦਾ ਹੋਵੇ ਮੈਂ ਇਹ ਕਹਿੰਨਾ ਚਾਹੁੰਦਾ ਹਾਂ ਚੰਗਾ ਜੀ ਵਪਾਰਕ ਸਿੰਘ ਇੱਕ ਸਟੱਡੀ ਸ਼ਾਪੀ ਹੈ ਜੀ ਮਾਨ ਸਰ ਜੀ ਮਾਨ ਸਰ ਸਾਹਿਬ ਲਾਈਨ ਨੰਬਰ 4 ਸਸੀ ਗਾਲ ਜੀ ਸਸੀ ਗਾਲ ਮਾਨ ਸਰ ਸਾਹਿਬ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪੰਜਾਬ ਵਾਟਰਸ ਚੱਲਦਾ ਸੀ ਇੱਕ ਦਿਨ ਤੁਹਾਡੇ ਨਾਲ ਮੈਂ ਗੱਲ ਕਰਾਂਗਾ ਜੀ ਤੁਸੀਂ ਇਸ ਐਜੂਕੇਸ਼ਨ 'ਚ ਰਹੇ ਹੋ ਕਿਸੇ ਦਿਨ ਆਪਾਂ ਸੈੱਟ ਕਰਾਂਗੇ ਮਾਨ ਸਰ ਸਾਹਿਬ ਤੁਸੀਂ ਆਪਣਾ ਵੀ ਵਰਸ਼ਨ ਦਿਓ ਹੁਣ ਕੀ ਕਹਿਣਾ ਚਾਹੁੰਦੇ ਮੈਂ ਇਹ ਦੱਸਣਾ ਚਾਹੁੰਨਾ ਜੀ ਕਿ ਪੰਜਾਬ ਦੇ ਵਿੱਚ ਦੋ ਸਰੋਤ ਸੀ ਪਾਣੀ ਦੇ ਇੱਕ ਸਬਸਰਫਿਸ ਵਾਟਰ ਇੱਕ ਸਰਫੇਸ ਸਰਕਾਰ ਕੋਲ ਨਹਿਰਾਂ ਸੁੱਕ ਗਈਆਂ ਦਰਿਆ ਸੁੱਕ ਗਏ ਜਿਹੜੀ ਵਿਸ਼ਵਾਵ ਜਲੰਧਰ ਵੱਲੋਂ ਜਾਂਦੀ ਲਹਿਰ ਉਸ ਨਹਿਰ ਦੇ ਵਿੱਚ ਕਿਤੇ ਸਾਲ ਸੇ ਮਹੀਨਾਕ ਪਾਣੀ ਚੱਲਦਾ ਬਾਕੀ ਸਾਰਾ ਸਾਰਾ ਸਾਲ ਸੁੱਕੀ ਰਹਿੰਦੀ ਹੈ ਜਿਹੜੀ ਆਪਣਾ ਸਰਾਂ ਨਿਕਨਾਲ ਮੇਨ ਫੀਡਰ ਹੈ ਪੰਜਾਬ ਦੀ ਓਦੇ ਵਿੱਚ ਪਾਣੀ ਜਿਹੜਾ ਉਹ ਅੱਧਾ ਛੱਡਿਆ ਜਾਂਦਾ ਹੈ ਸਾਲ ਉਹ ਬੰਦ ਰੱਖੀ ਜਾਂਦੀ ਹੈ ਉਹਨੂੰ ਬੰਦੀ ਕਹਿੰਦੇ ਆ ਬੰਦੀ ਆ ਗਈ। ਸੋ ਸਰਕਾਰਾਂ ਨੇ ਖੋਲਿਆ ਤੇ ਸਬ ਸਰਫੇਸ ওয়াটার ਅਸੀਂ ਜਾਇਆ ਕਰ ਦਿੱਤਾ ਹੈ। ਜਿਹੜੇ ਲੋਕ ਝੋਨਾ ਲਾਉਂਦੇ ਨੇ ਜੀ ਉਹ ਕਿੱਲੇ-ਕਿੱੱਲੇ ਤੇ ਟਿਊਬਲ ਲਾਏ ਹੋਏ ਉਹਨਾਂ ਨੇ ਤੇ ਉਹਨਾਂ ਟਿਊਬਲਾਂ ਨੂੰ ਉਹ ਇੰਜਾਂ ਨਾਲ ਚਲਾਉਂਦੇ ਨੇ ਜਦੋਂ ਉਹ ਕਿੱਲਾ ਭਰ ਗਿਆ ਅਗਲੇ ਕਿੱਲੇ ਵਾਲੇ ਟਿਊਬਵਲ ਤੇ ਚਲੇ ਗਏ ਉੱਥੇ ਚਲਾ ਲਿਆ ਜੋ ਉਹ ਕਿੱਲਾ ਭਰ ਗਿਆ ਇੱਕ ਇੱਕ ਜ਼ਿਮੀਂਦਾਰ ਨੇ 5-5 ਟਿਊਬਰ ਲਾਏ ਹੋਏ ਨੇ ਜਿਹੋ ਦੀ 10 ਏਕੜ ਜ਼ਮੀਨ ਹੈ ਤੇ 5 ਹੋਏ ਨੇ ਝੋਨਾ ਝੋਨਾ ਝੋਨੇ 'ਲ ਪਾਣੀ ਪਾਉਣ ਲਈ ਸੋ ਗੱਲ ਇਹ ਵੀ ਪਾਣੀ ਤਾਂ ਅਸੀਂ ਆਪ ਹੀ ਵੇਸਟ ਕਰ ਦਿੱਤਾ ਹੈ 1964 ਦੇ ਪੰਜਾਬ ਦੇ ਵਿੱਚ 40000 ਟਿਊਬਲ ਸੀ ਜਿਨ੍ਹਾਂ ਜੋ 120 ਟਿਊਬਲ ਸਟੇਟ ਟਿਊਬਲ ਸੀ ਵੱਡੇ ਟਿਊਬਲ ਬਾਕੀ ਛੋਟੇ ਟਿਊਬਲ ਸੀ ਜ਼ਿਮੀਂਦਾਰਾਂ ਦੇ ਇਹਦੇ ਵਿੱਚ ਓਪਨ ਵੈਲਜ਼ ਵੀ ਆ ਜਾਂਦੇ ਸੀ ਟਿਊਬਲ ਹਲਤਾ ਵਾਲੇ ਅੱਜ ਕੱਲ ਪੰਜਾਬ ਦੇ ਵਿੱਚ 13 ਲੱਖ ਟਿਊਬਲ ਨੇ ਤੇ 13 ਲੱਖ ਟਿਊਬਲ ਚ ਜਿਹੜੇ ਨੇ 72800 ਟਿਊਬਲ ਹੀ ਨੇ ਬਾਕੀ ਸਾਰੇ ਜ਼ਿਮੀਦਾਰਾਂ ਦੇ ਓਨ ਟਿਊਬਲਸ ਨੇ ਔਰ ਇੰਨੀ ਬੇਰਹਿਮੀ ਨਾਲ ਪਾਣੀ ਵਰਤਿਆ ਜਾ ਰਿਹਾ ਹੈ ਕਿ ਇੱਕ ਵਾਰੀ ਮੋਟਰ ਔਨ ਕਰਕੇ ਘਰ ਚਲੇ ਜਾਣਾ ਰੋਟੀ ਪਾਣੀ ਖਾਣ ਉੱਤੇ ਬੈਗ ਲਾ ਕੇ ਪੈ ਜਾਣਾ ਟਿਊਬਲ ਚੱਲਦਾ ਤੇ ਚੱਲ ਰਿਹਾ ਕੋਈ ਗੱਲ ਨਹੀਂ ਆਪਾਂ ਪਾਕੇ ਨੇ ਬਿਲਡਿੰਗ ਨੇ ਬਿਜਲੀ ਦੇ ਨਾਲ ਬਿਲਡਿੰਗ ਬਿਜਲੀ ਦਾ ਬਿਲ ਦਿੰਨੇ ਆ ਪਾਣੀ ਦਾ ਬਿਲ ਦਿੰਨੇ ਆ ਬਿਜਲੀ ਵੀ ਮੁਫਤ ਹੈ ਪਾਣੀ ਵੀ ਮੁਫਤ ਹੈ ਸੋ ਗੱਲ ਇਹ ਵੀ ਪਾਣੀ ਦੀ ਸੰਭਾਲ ਆਪ ਹੀ ਕਰਨੀ ਪੈਣੀ ਹੈ ਸਾਨੂੰ ਕਿਸੇ ਨੇ ਆ ਕੇ ਸਮਝਾਉਣਾ ਨਹੀਂ ਕਿ ਪਾਣੀ ਦੇਖੋ ਇੱਕ ਵਾਰੀ ਮੈਂ ਹੁਸ਼ਿਆਰਪੁਰ ਤੋਂ ਚੱਲੀ ਜਾ ਰਿਹਾ ਸੀ ਤੇ ਜਦੋਂ ਅਸੀਂ ਇੱਕ ਟਿਊਬਵੈੱਲ ਦੇਖਿਆ ਉਹ ਟਿਊਬਵੈੱਲ ਦੇ ਕੋਠੇ ਤੋਂ 10 ਫੁੱਟ ਉੱਚੀ ਪਾਈਪ ਰੱਖੀ ਹੋਈ ਸੀ ਉਹਨੇ ਅਜੀ ਪਿੰਡ ਜਾ ਕੇ ਉਹ ਜ਼ਿਮੀਦਾਰ ਦਾ ਘਰ ਲੱਭਿਆ ਉਹਨੂੰ ਪੁੱਛਿਆ ਤੂੰ ਕੀ ਗੱਲ ਇਹ ਕੋਠੇ ਰੱਖੀ ਐ ਦੇਖੋ ਜੀ ਕਹਿੰਦਾ ਨਜ਼ਰ ਆਉਂਦਾ ਵੀ ਬਿਜਲੀ ਹੈਗੀ ਐ ਦੱਸੋ ਇਸ ਤਰ੍ਹਾਂ ਪਾਣੀ ਵਸ ਰਿਹਾ ਜੀ ਮੈਂ ਆਖਿਆ 10 ਫੁੱਟ ਉੱਚੀ ਰੱਖਣਾ ਇੱਕ ਤਰ੍ਹਾਂ ਪਾਣੀ 10% ਘਟ ਗਿਆ ਦੂਜੀ ਤੋਂ 20% ਬਿਲੀਵਾਦ ਬਤ ਕਰ ਰਹੇ ਆ ਸੋ ਸਾਨੂੰ ਆਪਣੇ ਕਫਾਇਤ ਆਪ ਕਰਨੀ ਚਾਹੀਦੀ ਹੈ ਪਾਣੀ ਨੂੰ ਇਸ ਤਰੀਕੇ ਜੁਡੀਸ਼ਲ ਤਰੀਕੇ ਨਾਲ ਵੱਡੋ ਜਿਹੜਾ ਸੀ ਚੈਨਲ ਚ ਪਾਣੀ ਜਾਂਦਾ ਨਾ ਟਿਊਬਵੈਲਾਂ ਦਾ ਉਹਦੇ ਵਿੱਚ ਵੀ 17-18% ਪਾਣੀ ਗਿਆ და ਉਹ ਟ੍ਰਾਂਸਪੋਰਟ ਐਪਰ ਪਰ ਦਾ ਪਾਣੀ ਹੈਗਾ ਤਾਂ ਉਹ ਉੱਥੇ ਤੁਹਾਡਾ ਟਿਊਬਵੈਲ ਦਾ ਪਾਣੀ ਜਿਹੜਾ ਖੇਤਾਂ 'ਚ ਉਹ 12500 ਗੈਲਨ ਜਾ ਰਿਹਾ ਬਾਕੀ ਰਸਤੇ 'ਚ ਲਾਸ ਹੋ ਰਿਹਾ ਸੋ ਸਾਨੂੰ ਤੁਸੀਂ ਹੁਣ ਮੱਛੀ ਮੋਟਰਾਂ ਦੀ ਦੇਖ ਲਓ ਮੱਛੀ ਮੋਟਰਾਂ ਜਿਹੜੀਆਂ ਆਮ ਤੌਰ ਤੇ ਅਸੀਂ ਉਦੋਂ ਜਦੋਂ ਮੈਂ ਸਰਵਿਸ ਸੀ ਅਸੀਂ ਕਹਿੰਦੇ ਸੀ ਕਿ ਜੇ 45 ਫੁੱਟ ਤੋਂ ਜ਼ਿਆਦਾ ਡੂੰਘਾ ਪਾਣੀ ਹੈ ਤਾਂ ਉੱਥੇ ਮੱਛੀ ਮੋਟਰ ਲਾਓ ਕਿਉਂਕਿ 45 ਬੜਾ ਔਖਾ ਕੰਮ ਸੀ ਕੋਣ ਮੋਟਰ ਮੱਛੀ ਮੋਟਰਾਂ ਜਿਹੜੀਆਂ ਨੇ ਉਹ ਪਾਣੀ ਦਾ ਘਰ ਸੀ ਦੁਆਬਾ ਉਹ ਦੁਆਬੇ ਦੇ ਘਰ-ਘਰ ਹੁਣ ਮੱਛੀ ਮੋਟਰਾਂ ਲੱਗੀਆਂ ਕਿਉਂਕਿ ਪਾਣੀ ਚੁੱਕੀਆਂ ਨਹੀਂ ਦੂਜੇ ਮੋਟਰ ਸੋ ਅਸੀਂ ਆਪ ਹੀ ਜ਼ਿੰਮੇਵਾਰ ਪਾਣੀ ਦੇ ਲਾਸਸ ਜੇ ਜੇ ਪਾਣੀ ਨੂੰ ਸੀ ਯੂਬਿਸ਼ੀਅਲੀ ਨਹੀਂ ਯੂਜ਼ ਕਰਾਂਗੇ ਤਾਂ ਜਿਹੜਾ ਉਹ ਜਿਸ ਦਾ ਕਹਿ ਰਹੇ ਹੋ ਪਾਣੀ ਜਿਹੜਾ ਡਾਊਨ ਗਿਆ ਹੈ ਇਹ ਪਿਛਲੇ 10 ਸਾਲਾਂ ਵਿੱਚ ਗਿਆ ਹੈ ਆਜੂ 10 ਸਾਲ ਪਹਿਲਾਂ ਦੁਆਬੇ ਵਿੱਚ ਇੰਨਾ ਪਾਣੀ ਸੀ ਬਈ 20 25 ਫੁੱਟ ਤੇ ਸੇਮ ਆ ਜਾਂਦੀ ਸੀ ਹੁਣ ਤੁਸੀਂ ਨਲਕਾ ਪੱਟਣਾ ਸ਼ੁਰੂ ਕਰੋ 70 ਫੁੱਟ ਤੋਂ ਬਾਅਦ ਸੇਮ ਆਉਂਦੀ ਹੈ ਤੇ 70 ਫੁੱਟ ਤੋਂ ਬਾਅਦ ਸੇਮ ਆਉਣ ਨਾਲ ਨਲਕਾ ਜਿਹੜਾ 120 ਫੁੱਟ ਤੇ ਲੱਗ ਜਾ ਕੇ ਜੇ ਕਿ ਸਵੇਲੇ ਦੁਆਬੇ ਦੇ ਵਿੱਚ ਲੱਗੇ ਹੁੰਦੇ ਸੀ ਆ ਪਾਣੀ ਨੂੰ ਜੁਡੀਸ਼ੀਅਸਲੀ ਵਰਤੋ ਪਾਣੀ ਨੂੰ ਵੇਸ ਨਾ ਕਰੋ ਦੀ ਲੋੜ ਹੈ ਜ਼ਮੀਨ ਲਈ 10 ਏਕੜ ਦੇ ਟੀ ਜ਼ਮੀਨ ਲਈ ਤੁਹਾਨੂੰ ਅੱਧੇ ਕਿਸ਼ਕ ਹਾਫ ਕਿਸ਼ਕ ਦਾ ਟੀ.ਯੂ.ਐਲ ਚਾਹੀਦਾ ਹੈ ਹਾਫ ਕਿਸ਼ਕ ਵਿੱਚ ਹੁੰਦੇ ਨੇ ਧੰਨਵਾਦ ਸੋ ਜੇ ਅਸੀਂ ਹਜ਼ਾਰ 11000 ਗੈਲਨ ਵਾਲਾ ਟਿਊਬ ਲਾ ਲੈਨੇ ਨਾ 10 ਏਕੜ ਮੋਰ ਦਨ ਪਰ 10 ਏਕੜ 'ਚ ਪੰਜ-ਪੰਜ ਪੀਓਰ ਨੇ ਲਾਇਆ ਹੋਏ ਨੇ ਜਿਸ ਕਰਕੇ ਪਾਣੀ ਜਿਹੜਾ ਉਹ 10 11000 ਏਕੜ ਕਿਸ਼ਤ ਦੀ بجائے 25000 ਕਿਸ਼ਤ ਪਾਣੀ ਵਰਤ ਰੇ ਨਾ ਮੇਰੀ ਕੋਸ਼ਿਸ਼ ਕਰ ਨੈਕਸਟ ਵੀਕ ਆਓਗੇ ਕਰ ਸਕਾਂ ਪਾਣੀ ਦਾ ਬਚਾਓ ਅਸੀਂ ਆਪ ਹੀ ਕਰਨਾ ਸਾਨੂੰ ਨਹਿਰ ਦਾ ਪਾਣੀ ਕਿਸੇ ਨੇ ਵੱਧ ਨਹੀਂ ਦੇਣਾ ਐਸਵਾਈਐਲ ਵੀ ਪੱਟੀ ਜਾਣੀ ਐ ਐਸਵਾਈਐਲ ਇੱਕ ਧੋਖੇ ਵਾਲੀ ਨਹਿਰ ਐ ਨਾ ਤਾਂ ਉਹਦੇ ਚ ਪੰਜਾਬ ਨੂੰ ਪਾਣੀ ਮਿਲਦਾ ਨਾ ਹਰਿਆਣਾ ਨੂੰ ਪਾਣੀ ਮਿਲਦਾ ਜਿਵੇਂ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹਦਾ ਨਾ ਹੀ ਐਸਵਾਈਐਲ ਸਤਲੁ ਜਮਨਾ ਲਿੰਕ ਐ ਇਹਦੇ ਚ ਨਹਿਰ ਦਾ ਇਹਦੇ ਚ ਹਰਿਆਣਾ ਦਾ ਕੋਈ ਚੱਲੇ ਜੀ ਨਹੀਂ ਆਉਂਦਾ ਸੋ ਵਾਕੀ ਗੱਲ ਠੀਕ ਐ ਕਿ ਇਸ ਨਹਿਰ ਚੋਂ ਨਾ ਤਾਂ ਹਰਿਆਣਾ ਨੂੰ ਕੋਈ ਡਿਸਟ੍ਰਿਬਿਊਟੂ ਦਿੱਤੀ ਗਈਆਂ ਨਾ ਪੰਜਾਬ ਨੂੰ ਡਿਸਟ੍ਰਿਬਿਊਟੂ ਦਿੱਤੀ ਜਾਣੀਆਂ ਇਹ ਜਮਨਾ ਦਾ ਪਾਣੀ ਸਪਲੀਮੈਂਟ ਕਰਕੇ ਅੱਗੇ ਯੂਪੀ ਤੱਕ ਜਾਣਾ ਹੈ ਹਰਿਆਣਾ ਦੀ ਨਹਿਰ ਤਾਂ ਆਲਰੇਡੀ ਨਾ ਉਹਦਾ ਪਾਣੀ ਵਧਾਇਆ ਜਾ ਰਿਹਾ ਜਮਨਾ ਕਨਾਲ 1/3 ਜਿਹੜੀ ਹੈ ਉਸੇ ਟੀ ਨਾਲ ਭਰੀ ਹੋਈ ਹੈ ਜੋ ਸਿਲਟ ਖਾਲੀ ਕਰ ਲਈ ਜਾਵੇ ਤਾਂ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੀ ਨਹੀਂ ਇੰਨਾ ਪਾਣੀ ਨਹਿਰ ਚ ਆ ਜਾਂਦਾ ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਗੱਲਾਂ ਵਿਚਾਰਮੇ ਵਾਲੀਆਂ ਨੇ ਸੋਚਣ ਵਾਲੀਆਂ ਨੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਟਾਈਮ ਦੇਣ ਲਈ ਮੈਂ ਇਸ ਬਾਰੇ ਫੇਰ ਵੀ ਕਿੰਦਾ ਗੱਲ ਕਰਾਂਗਾ ਥੈਂਕ ਯੂ ਵੈਰੀ ਥੈਂਕ ਯੂ ਜੀ ਸਿਲਟ ਗਲਤ ਗਲਤਾਂ ਬਰਬਾਦੀ ਦੀ ਸਿਲਟ ਹੋ ਜਾਏਗੀ ਵਾਲੀ ਨਹਿਰ ਵੀ ਕਹਿੰਦੇ ਪਹਿਲਾਂ ਕਹਿ ਕੇ ਗਏ ਹਰਦੀਪ ਸਿੰਘ ਕਦੇ ਸਾਫ਼ ਨਹੀਂ ਹੋਈ ਮੈਂ ਰਿਟਾਇਰਮੈਂਟ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਥੋੜੀ ਜੀ 20 ਮਿੰਟ ਜੋਧ ਤੁਸੀਂ ਜੀ ਜੋਧ ਸਿੰਘ ਜੀ ਐਨੀਵੇਸ ਇੱਕ ਰਿਸਰਚ ਜਿਹੜੀ ਛਪੀ ਹੈ ਅਮਰੀਕਾ ਵਾਲੇ ਪਾਸੇ ਉਸ ਦੀ ਗੱਲ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ ਹੈ ਕਿ ਉਸ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਡਾਕਟਰ ਸਟਿੰਗਲ ਨੇ ਇੱਕ ਜਿਹੜੇ ਮੈਂਬਰ ਨੇ ਨੈਸ਼ਨਲ ਕਾਉਂਸਲ ਆਫ ਚਾਈਨੀਜ਼ ਇੰਸਟੀਚਿਊਟ ਆਫ ਇੰਜੀਨੀਅਰਸ ਅਮਰੀਕਾ ਗ੍ਰੇਟਰ ਨਿਊਯਾਰਕ ਚੈਪਟਰ ਦੇ ਉਹਨਾਂ ਨੇ ਇੱਕ ਸਟੱਡੀ ਕੀਤੀ ਕਿ ਜਿਹੜੀ ਪੈਨਸ਼ਨ ਫੰਡਸ ਨੇ ਉਹ ਉਹ ਵਰਤੋਂ ਚ ਨਹੀਂ ਆ ਰਹੇ ਕਿਉਂਕਿ ਲੋਕ 65 ਸਾਲ ਤੱਕ ਕੰਮ ਕਰਦੇ ਤੇ ਦੇ ਕੰਮ ਤੋਂ ਬਾਅਦ ਉਹਨਾਂ ਦੇ ਕੋਲ ਜਿਉਣ ਦਾ ਜਿਹੜੀ ਰਿਸਰਚ ਹੈ ਉਹ ਸਾਲ ਹੀ ਉਹ ਲੈਂਦੇ ਨੇ ਉਹਦੇ ਬਾਅਦ ਇਹ ਤੁਰ ਜਾਂਦੇ ਨੇ ਬੋਇੰਗ ਲੋਕੀਡ ਮਾਰਟਨ ਐਟੀਐਨਟੀ ਇਹ ਹੋਰ ਵੱਡੀਆਂ ਜਿਹੜੀਆਂ ਕੰਪਨੀਆਂ ਕੋਲ ਬਹੁਤ ਫੰਡਸ ਜਿਹੜੇ ਜਮ੍ਹਾਂ ਹੋ ਗਏ ਕਿਉਂਕਿ ਉਹਨਾਂ ਦੇ EMPLOYEES ਜਿਹੜੇ 60 ਤੇ ਰਿਟਾਇਰ ਹੁੰਦੇ ਨੇ ਉਹਨਾਂ ਦਾ ਲਾਇ ਸਪੈਨ ਜਿਹੜਾ ਔਨੇ ਦੋ ਸਾਲ ਦਾ 66.8 ইয়ারਸ ਤੇ ਉਹ ਐਵਰੇਜ ਲਾਈਫ ਸਪੈਨ ਤੇ ਮਰ ਜਾਂਦੇ ਉਹਨਾਂ ਨੇ ਇਹ ਅੰਕੜੇ ਇਕੱਠੇ ਕੀਤੇ ਸਾਲ ਤੇ ਰਿਟਾਇਰ ਹੁੰਦੇ ਨੇ ਉਹਨਾਂ ਦੀ ਐਵਰੇਜ ਲਾਈਫ ਸਪੈਨ 86 ਸਾਲ ਉਹਨਾਂ ਨੇ ਲੱਭੀ ਹੈ ਜਿਹੜੇ 55 ਤੇ ਹੁੰਦੇ ਨੇ ਉਹ 80 ਸਾਲ ਤੱਕ ਜੀਉਂਦੇ ਬੋਇੰਗ ਦੇ ਵਿੱਚ ਐਕਸਪੀਰੀਅੰਸ ਹੋਇਆ ਕਿ ਜਿਹੜੇ EMPLOYEES ਉਹਨਾਂ ਦੇ ਰਿਟਾਇਰ ਹੋਏ ਨੇ 65 ਸਾਲ ਦੀ ਉਮਰ 'ਚ ਸਿਰਫ 18 ਤੋਂ 19 ਸਾਲ 18 ਤੋਂ 19 ਹਫ਼ਤੇ ਮਹੀਨੇ ਉਹ ਐਵਰੇਜ ਉਹਨਾਂ ਨੇ ਪੈਨਸ਼ਨ ਨੇ ਡਾਕਟਰ ਕੰਪਨੀ ਤੇ ਲੋਕੀਡ ਮਾਰਟਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਚੈੱਕ ਕੀਤਾ ਕਿ ਉਦਾਕਾਰ ਨੇ ਇਹ ਹੈ ਕੇ ਜ਼ਿੰਦਗੀ ਦਾ ਬਰਡਨ ਇਹ ਹੈ ਉਹਨਾਂ ਤੇ ਕੰਮ ਦਾ ਸਰੀਰ ਜਵਾਬ ਦੇ ਜਿੰਦਾ ਸਰੀਰ ਦਾ ਜਦ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦਾ ਤੇ ਜ਼ੋਰ ਕਰਦੇ ਹਾਂ ਉਹਦੇ ਬਾਅਦ ਜਿਹੜੇ 55 ਤੇ ਰਿਟਾਇਰ ਹੁੰਦੇ ਨੇ 80 ਸਾਲ ਦੀ ਉਮਰ ਤੱਕ ਉਹ ਵਧੀਆ ਜੀਵਨ ਬਹੋਲਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਦ ਤੱਕ ਤੁਸੀਂ ਪ੍ਰੈਸ਼ਰ ਕੁੱਕਰ ਦੇ ਵਿੱਚੋਂ ਜਿਹੜਾ ਹਾਈ ਸਪੀਡ ਬੈਟਲ ਗਰਾਉਂਡ ਹੈ ਉਦੇ ਵਿੱਚੋਂ 55 ਸਾਲ ਦੀ ਉਮਰ ਤੇ ਦੇ ਨਹੀਂ ਬਾਹਰ ਨਿਕਲਦੇ ਤੁਸੀਂ ਨਹੀਂ ਲੰਬਾ ਜਿਊ ਸਕਦੇ 50 ਤੋਂ 55 ਸਾਲ ਰਿਟਾਇਰਮੈਂਟ ਏਜ ਨੇ ਕਹੀ ਹੈ ਪਰ ਸਾਲ ਦੀ ਉਮਰ ਤੇ ਜਿਨ੍ਹਾਂ ਨੇ ਵੀ ਬੈਨੀਫਿਟ ਜਿਹੜੇ ਦਿੱਤੇ ਆ ਪੈਸੇ ਦਿੰਦੇ ਆ ਉਹ ਕਹਿੰਦੇ 2 ਕੁ ਸਾਲ ਹੀ ਲੈਂਦੇ ਆ ਤੇ ਉਹਦੇ ਬਾਅਦ ਖਤਮ ਉਹ ਕਹਿੰਦੇ 10 ਐਕਸਟਰਾ ਸਾਲ ਜਿਹੜੇ ਤੁਸੀਂ 55 ਤੋਂ ਹੋ ਉਹ 20 ਸਾਲ ਤੁਹਾਡੀ ਉਮਰ ਦੇ ਖਾ ਜਾਂਦਾ 50 ਤੋਂ ਪਲੱਸ ਜਾ ਕੇ ਤੁਹਾਡੀ ਜ਼ਿੰਦਗੀ ਹੈ ਜਿਹੜੀ ਸਰੀਰ ਜਿਹੜਾ ਡਾਊਨ ਹੋ ਜਾਂਦਾ ਹੈ ਤੇ ਤੁਸੀਂ ਮਿਹਨਤ ਉਨੀ ਕਰਦੇ ਰਹਿੰਦੇ ਹੋ ਸਟ्रेस ਉਨੀ ਹੋਈ ਜਾਂਦੀ ਹੈ ਤੇ ਉਸ ਤੋਂ ਬਾਅਦ ਜ਼ਿੰਦਗੀ ਦਾ ਜਿਹੜਾ ਸਪੈਨ ਆ ਖਤਮ ਹੋ ਜਾਂਦਾ ਹੁਣ ਇਹ ਤਾਂ ਸਿਰਫ ਇੱਕ ਅੰਕੜੇ ਪਰ ਜ਼ਿੰਦਗੀ ਦੇ ਖਰਚੇ ਜਿਹੜੇ ਨੇ ਕੰਟਰੋਲ ਤੁਸੀਂ ਕਰਕੇ ਮੇਰੇ ਖਿਆਲ ਦੇ 50 55 ਭਾਗੋ ਦੇ ਬੰਦ ਨਹੀਂ ਬਣੇ ਮੈਨੂੰ ਤਾਂ 65 ਵੀ ਨਹੀਂ ਬਣਨੇ ਪਿਛਲੇ 10 ਸਾਲਾਂ ਦਾ ਫਿਰ ਜੁੱਤੀ ਘੜੀ ਸਹੀਆਂ ਆਪਾਂ ਇਹ ਰਕੜੀ ਜੇ 55 ਤੱਕ ਨਾ ਕਰ ਸਕੇ ਕਿਉਂਕਿ 30 ਸਾਲ ਦੇ ਤੋਂ ਕਮਾਉਣ ਲੱਗੇ ਸਾਲਾਂ ਦੇ ਵਿੱਚ ਜੇ ਛੱਤ ਨਾ ਬਣੀ ਸਮਾਨ ਨਾ ਬਣਿਆ 55 ਤੋਂ 65 ਸਾਲ 10 ਸਾਲਾਂ ਦੀ ਉਮਰ ਦੇ ਵਿੱਚ ਅਸੀਂ ਕੀ ਕਰ ਲਾਂਗੇ ਕੋਈ ਪਲਾਨ ਉਸ ਨੂੰ ਹਰ ਇੱਕ ਇਨਸਾਨ ਦਾ ਵੱਖਰਾ ਪਲਾਨ ਆ ਡਾਊਨ ਸਾਈਜ਼ ਕਰਕੇ ਵੱਡਿਆਂ ਘਰਾਂ ਤੋਂ ਛੋਟੇ 'ਚ ਲੈ ਕੇ ਬਾਲ ਬੱਚਿਆਂ ਨੂੰ ਸੈੱਟ ਕਰਕੇ ਜੇ ਤੁਸੀਂ ਕੰਮ ਤੋਂ ਰਿਟਾਇਰ ਹੋ ਕੇ 2000 ਇਨਕਮ ਕੋਈ ਸੈੱਟ ਕਰਕੇ ਕਿਵੇਂ ਨਾ ਕਿਵੇਂ ਚਾਹੇ ਪਿੱਛੋਂ ਚਾਹੇ ਇੱਥੋਂ ਕਿਵੇਂ ਨਾ ਪਰ ਇਹ ਮਸਟ ਰਟਾਇਰ ਹੁਣ ਕਈ ਜਿਹੜੇ ਵਰਕ ਅਲਕੋਹਲਿਕ ਨੇ ਜਿਹੜੇ ਨੇ ਭੱਜੇ ਫਿਰਨਾ ਆਦਤ ਬਣ ਗਈ ਉਹਨਾਂ ਦੇ ਕੀ ਕਹਾਣੀ ਹੋ ਸਕਦੀ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਪਰ ਇਹ ਅੰਕੜਿਆਂ ਨੇ ਇੱਕ ਨਵੀਂ ਜਿਹੜੀ ਆਪਣੇ ਅੰਕੜਿਆਂ ਨੇ ਨਵੀਂ ਬਹਿਸ ਛੇੜੀ ਹੈ ਕਿ ਆਰਾਮ ਫਿਰ ਕਦ ਉਹਨੇ ਬਹੁਤ ਜ਼ਿਆਦਾ ਵਧੀਆ ਅੰਕੜਿਆਂ ਦੇ ਰਾਹੀਂ ਚਾਈਨੀਜ਼ ਇਹ ਜਿਹੜੇ ਕੌਂਸਲ ਦੇ ਮੈਂਬਰ ਨੇ ਉਹਨਾਂ ਨੇ ਨਿਊਯਾਰਕ ਦੇ ਵਿੱਚ ਇਸ ਨੂੰ ਛਾਪਿਆ ਕਿ ਯੂ ਮਸਟ ਰਿਟਾਇਰ ਜੇ ਤੁਸੀਂ 80 ਸਾਲ ਦੀ ਉਮਰ ਭੋਗਣਾ ਚਾਹੁੰਦੇ ਹੋ ਅਦਰਵਾਈਜ਼ ਤਾਂ 55 ਤੋਂ 65 ਦਾ ਤੁਹਾਡੇ 20 ਸਾਲ ਜ਼ਿੰਦਗੀ ਦੇ ਖਾ ਜਾਂਦਾ ਦੋਕਸਾਲ ਇਹ ਕਹਿੰਦੇ ਸਟੈਪ ਲਏ ਹੁੰਦੇ ਆ ਪੈਨਸ਼ਨ ਪਲਾਨ ਦੇ ਉਹਦੇ ਬਾਅਦ ਆਰਾਮ ਨਾਮ ਸੱਤ ਹੈ ਵਪਾਰ ਖੰਦੇਸ਼ ਦੋਨ ਹਨ Praminder 10604827213@thinkinsurance.ca Alberta de vich state te tado insurance diyan se baba dende hai 6048287213@thinkinsurance.ca Praminder 10 Ramandeep Singh Soorta te Praminder 10 de yodi tadi seva ch OS windows 6045975033@osswindows.com bade project jada town house condo vadkar ਇਕ ਘਰ ਮਲਟੀ ਫੈਮਿਲੀ ਕੁਝ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ 6045975033 ososwindows.com ਤੇ ਸਾਰੀ ਜਾਣਕਾਰੀ ਲੈਣ ਸੁਦੇ ਆਪਣੇ ਏਰੀਆ ਦੇ ਸੇਲਸ ਪਰਸਨ ਨੂੰ ਸੰਪਰਕ ਸਕਦੇ ਹੋ ਅਵਾਰਡ winning windows 26 ਸਾਲ ਹੋ ਗਏ ਤੁਹਾਡੀ ਸੇਵਾ ਚ ਗਗਨ ਸਿੰਘ 6043491313 ਜੁਨ ਨੰਬਰ 100 28340 12 ਕੈਸੀ ਵੀਜ਼ਾ ਜਿੱਥੇ ਮਿਲਦਾ ਹੈ ਭਾਰਤ ਦਾ ਉਹਦੇ ਥੱਲੇ ਨਰਨ ਸਿੰਘ ਦਾ ਦਫ਼ਤਰ ਹੈ ਸਕਾਟ ਰੋਡ ਤੇ 6043491313 ਗਗਨ ਸਿੰਘ ਡਾਲਰ ਇਧਰੋਂ ਭੇਜਣੇ ਨੇ ਜਾਂ ਰੁਪਏ ਡਾਲਰਾਂ ਚ ਲੈ ਕੇ ਆਉਣੇ ਆ ਤਾਂ 6043491313 ਤੇ ਗਗਨ ਸਿੰਘ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਫਾਈਬਰ ਰਿਵੈਕਸਕਵੇਟਿੰਗ ਹਰਪੀ ਸਿੰਘ ਕਾਂਗ 647270424 ਗਰਦੀਪ ਗਰਦੀਪ ਸਿੰਘ ਦਰਵਾ 717 846 9942 ਲੋਟ ਕੋਈ ਪਟਾਉਣੀ ਹੈ ਕੋਈ ਕੱਟ ਹੋਣਾ ਹੈ ਕੋਈ ਬਜਰੀ ਦਾ ਕੰਮ ਹੈ ਕੋਈ ਐਕਸਕੇਵੇਟਿੰਗ ਦਾ ਕੰਮ ਹੈ ਕੁਛ ਰੇਤਾ ਚਾਹੀਦਾ ਟਰੱਕਿੰਗ ਦਾ ਕੰਮ ਐ ਐਕਸਕੇਵੇਟਰ ਦਾ ਕੰਮ ਹੈ ਬਹੁਤ ਤਸੱਲੀ ਵਕਸ਼ ਸੇਵਾਵਾਂ ਹੈ ਲੋਕ ਸਰ ਦਾ ਹਵਾਲਾ ਦਿਓ ਖਾਸ ਡਿਸਕਾਊਂਟ 6047270424 ਗ੍ਰੀਨ ਇੰਡੀਅਨ ਮਨਜੀਤ ਸਿੰਘ ਉਹਨਾਂ ਦਾ ਏ ਫੋਨ ਨੰਬਰ ਹੈ ਜੁਨਿਟ 112 125 65 88 ਐਵੇਨਿਊ ਨਵਾਂ ਜਿਹੜਾ ਪਲਾਜ਼ਾ ਬਣਿਆ ਵਾਲਮਾਰਟ ਪਲਾਜ਼ੇ ਦੇ ਨਾਲ ਉਹਦੇ ਵਿੱਚ ਇੱਕ ਰੈਸਟੋਰੈਂਟ ਹੈ ਜਿੱਥੋਂ ਤੁਸੀਂ ਪਾਰਟੀ ਖਾਣੇ ਉਸ ਤੋਂ ਪੀਜ਼ਾ ਉਸ ਤੋਂ ਬਾਅਦ ਚੀਜ਼ਾਂ ਇੱਕੋ ਸਵੀਟ ਸ਼ਾਪ ਵੀ ਉੱਥੇ ਪੀਜ਼ਾ ਏਰੀਆ ਵੀ ਉੱਥੇ ਹੈ ਤੇ ਖਾਣਾ ਆਰਡਰ ਕਰਿਓ ਜਾਂ ਬੈਠ ਕੇ ਖਾ ਕੇ ਆਓ ਬਹੁਤ ਵਧੀਆ ਰੈਸਟੋਰੈਂਟ ਬਣਾਇਆ ਗ੍ਰੀਨ ਇੰਡੀਅਨ ਕੋਈ ਪੰਜਾਬ ਬੈਂਕ ਉਠਾਲ 64598 7611 ਪੰਜਾਬ ਬੈਂਕ ਖਡਾਲ ਦੇ ਵਧੀਆ ਪਾਰਟੀਆਂ ਸ਼ਾਮਾ ਗਿੱਲ 6045987611 ਪਾਇਲ ਬਿਜ਼ਨਸ ਸੈਂਟਰ ਚ ਨਵੀਂ ਰੈਨੋਵੇਸ਼ਨ ਨਵਾਂ ਸਾਰਾ ਫਰਨੀਚਰ ਕੀਮਤਾਬਾਜ਼ਬ ਸਿਰੇ ਦੀ ਪਾਰਟੀ ਵਧੀਆ ਸੇਵਾ 6045987611 ਪੰਜਾਬ ਬੈਂਕ ਖਡਾਲ ਕੈਪਟਨ ਮੀਟ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਦੂਸਰੀ ਲੋਕੇਸ਼ਨ ਮੀਟ ਖਰੀਦਣਾ ਜਾਂ ਕੋਈ ਵੀ ਨਾਨਵੇਜ ਸਮਾਰਟ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨਾਂ ਦੇ ਕੋਲ ਫਰੈਸ਼ ਵਧੀਆ ਕੁਆਲਟੀ ਦਾ ਮੀਟ 6045030070 ਕੈਪਟਨ ਮੀਟ ਰਿਟਾਇਰਮੈਂਟ ਸੋ ਇਹ ਜਿਹੜੇ ਅੰਕੜੇ ਨੇ ਤੁਹਾਡੇ ਸਦਮੋ ਕੀਤੇ ਆ ਜੀ ਇਹ ਗੱਲ ਬੜੇ ਜ਼ੋਰ ਨਾਲ ਚੱਲ ਰਹੀ ਹੈ ਕਿ 55 50 ਤੋਂ ਬਾਅਦ ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਹੈ 55 ਤੇ ਤੁਸੀਂ ਸੇਵਾ ਮੁਕਤ ਹੋਣੇ ਚਾਹੀਦੇ ਹੋ ਉਹ 50 ਸਾਲਾਂ ਦੇ ਵਿੱਚ ट्रांजिशन ਕਰੋ ਵੜਿਆਂ ਤੋਂ ਛੋਟਾ ਘਰ ਬਣਾ ਲਓ ਜਿੰਨੇ ਜਿੱਥੇ ਅਫੋਰਡ ਕਰਦੇ ਹੋ ਮਾਰਗੇਜ ਕਰਕੇ ਜਾਂ ਕੁਝ ਨਾ ਕੁਝ ਜਿਹੜਾ ਕੀਤਾ ਜਾਵੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਜੇ ਪੂਰੀਆਂ ਉਹ ਸਾਲ ਦੇ 25 ਸਾਲ ਦੇ ਵਿਆਹ ਜਨ ਨੂੰ 30 ਸਾਲ ਦੇ ਬੱਚੇ ਪੈਦਾ ਸਾਲਾਂ ਦੇ 20 ਹੋ ਜਾਂਦੇ ਪਰ ਕੁਝ ਨਾ ਕੁਝ ਪਲਾਨ ਕਰਕੇ ਇੱਥੋਂ ਜਾਂ ਉੱਥੇ ਜਿੱਥੇ ਵੀ ਰਿਟਾਇਰਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਥੇ ਰਿਟਾਇਰ ਹੋਣਾ ਚਾਹੁੰਦੇ ਹੋ ਸੇਵਾ ਮੁਕਤ ਹੋ ਕੇ ਤੁਸੀਂ ਜਿੱਥੇ ਤੁਹਾਡਾ ਜੀ ਕਰੇ ਰਹਿ ਸਕਦੇ ਹੋ ਪਰ ਕਾਮ ਤੋਂ ਨਿਕਲ ਨਾ ਪਉ ਜੇ ਕੰਮ ਸੇਮ ਰੇਂਜ ਤੇ ਸੇਮ ਪੇਸਟ ਤੇ ਚੱਲਦੇ ਹੋ ਇਸ ਤੋਂ ਬਾਅਦ ਵੀ ਤੁਹਾਡੀ ਸਿਹਤ ਲਈ ਬੜਾ ਖਤਰਨਾਕ ਸਿੰਘ ਜੀ ਲਾਈਨ ਨੰਬਰ 2 ਹਲੋ ਜੀ ਗੱਲ ਸਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੀ ਦਾ ਖਾਲਸਾ ਹਿੰਦੂ ਫਤਿਹ ਸਿੰਘ ਸਾਹਿਬ ਮਹਾਰਾਜ ਜੀ ਪਾਣੀਆਂ ਦੇ ਮੁੱਦਿਆਂ ਤੇ ਹੁਣ ਦੂਜੀ ਸ਼ੁਰੂ ਹੋ ਗਈ ਮੈਂ 10 ਵਜੇ ਦਾ ਫੋਨ ਲਾ ਰਿਹਾ ਚਲੋ ਮੈਂ ਗੱਲ ਕਰਨਾ ਚਾਹੁੰਦਾ ਕੀ ਇਹ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਪਾਣੀਆਂ ਦਾ ਮੁਰਦਾ ਲੈ ਕੇ ਆਉਨੇ ਆ ਪਰ ਸਾਡੇ ਕੋਲੇ ਖੁਦ ਦੀ ਪੈੜੀ ਨਹੀਂ ਹੈਗੀ ਨਾ ਵਾਹਨੇ ਆ ਪਰ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਸੁਣ ਕੇ ਆਪਣੀ ਮਾਤਾ ਜੀ ਨੂੰ ਇੰਡੀਆ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਫਿਲਟਰ ਜਿਹਦਾ ਆਪਾਂ ਘਰ ਚ ਲਾਉਨੇ ਆ ਕਿ ਚੰਦੇ ਵਿੱਚ ਤੇ ਉਹ ਜਿਹੜਾ ਪਾਣੀ ਐਕਸਟਰਾ ਉਹਨਾ ਇਕੱਠਾ ਨਹੀਂ ਹੁੰਦਾ ਜਿੰਨਾ ਵਗ ਜਾਂਦਾ ਤੇ ਮਾਹੋ ਕੀ ਕਰਦੇ ਆ ਕਹਿੰਦੇ ਉਹ ਵਗੀ ਜਾਂਦਾ ਮੈਂ ਕਹਾ ਜੀ ਇਦਾਂ ਕਰਿਆ ਕਰੋ ਕਿ ਉਹਦੇ ਥਲੇ ਬਾਲਟੀ ਰੱਖ ਲਓ ਜਾਂ ਕੋਈ ਸਾਰਾ ਡੱਬਾ ਤੇ ਉਹ ਪਾਣੀ ਜਿਹੜਾ ਇਕੱਠਾ ਹੁੰਦਾ ਉਹਦੇ ਨਾਲ ਝਾੜੂ ਪੋਚਾ ਕਰ ਲਿਆ ਕਰੋ ਤੇ ਨਾਲ ਜੇ ਵੱਧ ਵੀ ਜਾਵੇ ਤਾਂ ਫੁੱਲ ਬੂਟਿਆਂ ਨੂੰ ਪਾ ਲਿਆ ਕਰੋ ਤੇ ਸੋ ਮੈਂ ਇਹ ਆਪਣੇ ਦਿਮਾਗ ਨਾਲ ਵੀ ਸੋਚਿਆ ਬਾਅਦ ਫੇਸਬੁੱਕ ਤੇ ਇੱਕ ਫੋਟੋ ਵੀ ਦੇਖੀ ਸੀ ਕਿ ਪ੍ਰਤੀ ਉਹਨਾਂ ਨੇ ਜਿੱਦਾਂ ਪੈਸੇ ਆਫਿਸ ਦੇ ਵਿੱਚ ਵੱਡੀਆਂ ਢੇਲਣਾ ਹੁੰਦੀਆਂ ਉਹ ਥੱਲੇ ਰੱਖੀ ਸੀ ਉਹਨਾਂ ਨੇ ਪਾਣੀ ਇਕੱਠਾ ਕਰਨ ਵਾਸਤੇ ਤੇ ਬਾਅਦ ਜਦ ਉਹਦੇ ਤੇ ਦੱਸਿਆ ਸੀ ਕਿ ਇਹ ਆਪਾਂ ਇਹਦਾ ਯੂਜ਼ ਕਰ ਸਕਦੇ ਆ ਮੈਂ ਆ ਕਿਹਾ ਮੈਂ ਵੀ ਆਪਣਾ ਹਿੱਸਾ ਪਾਈ ਲਵਾਇਆ ਇਸ ਗੱਲ ਪ੍ਰਤੀ ਤੇ ਜੇ ਇਹ ਵੀ ਪਹਿਲੀ ਹੈਗੀ ਸਾਡੇ ਵਾਂਗੂ ਸੋ ਆਪਦੇ ਘਰ ਦੇ ਵਿੱਚੋਂ ਵੀ ਆਪਾਂ ਜਿਦਾ ਕਈ ਬੀਬੀਆਂ ਜਾਂ ਘਰਾਂ ਦੇ ਵਿੱਚ ਮੋਟਰ ਛੱਡ ਕੇ ਹੋਰ ਕੰਮ ਕਰਨ ਲੱਗ ਜਾਂਦੇ ਤੇ ਪਾਣੀ ਕਿੰਨਾ ਕਿੰਨਾ ਵਗ ਜਾਂਦਾ ਤੇ ਨਾਲ ਬਿੱਲ ਆਉਂਦਾ ਸੋ ਮੈਂ ਤਾਂ ਆਪਣੀ ਮਾਤਾ ਜੀ ਨੂੰ ਕਿਹਾ ਤੁਸੀਂ 15 ਮਿੰਟ ਭਾਵੇਂ ਖੜ ਕੇ ਮੋਟਰ ਭਰ ਲਿਆ ਕਰੋ ਟੈਂਕੀ ਭਰ ਲਿਆ ਕਰੋ ਤੇ ਪਾਣੀ ਇੱਕ ਵੇਸ ਨਾ ਹੋਵੇ ਤੇ ਨੰਬਰ 2 ਤੇ ਬਿੱਲ ਵੀ ਘੱਟ ਬਚ ਜਾਵੇ ਮੇ ਦਾਦੀ ਮਹੀਨੇ ਬਾਅਦ ਹੀ 3000 ਆ ਗਿਆ ਜੀ 4 ਆ ਗਿਆ 5000 ਆ ਗਿਆ ਹਨਾ ਜੀ ਸੋ ਇਹੀ ਇੰਨੇ ਕੀ ਬੇਨਤੀ ਸੀ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਗੋਪੀ ਵਾਹਿਗੁਰੂ ਜੀ ਕਾ ਫਤਿਹ ਇਹ ਸੌਜੀ ਹੋਣੀ ਚਾਹੀਦੀ ਹੈ ਉੱਥੇ ਵਾਟਰ ਵਰਕਸ ਲਾਤੇ ਜੀ ਤੁਹਾਡੇ ਵਾਟਰ ਵਰਕਸ ਲਾਤੇ ਜੀ ਟੂਟੀਆਂ ਬੰਦ ਨਹੀਂ ਕਰਦੇ ਉਹ ਖੁੱਲੀਆਂ ਹੀ ਨੇ ਖੇਲਾਂ ਨੂੰ ਲਾਈਆਂ ਹੋਈਆਂ ਨੇ ਉਹ ਘਰਾਂ ਦੇ ਵਿੱਚ ਜਦੋਂ ਭਰ ਗਈ ਤਾਂ ਉੱਪਰੋਂ ਜਾਈ ਜਾਂਦਾ ਤੇ ਉਹ ਭਰੇ ਹੋਏ ਬਸ ਖਤਮ ਕਹਾਣੀ ਬੰਦ ਕਰ ਲੋ ਬੰਦ ਕਾਨੂੰ ਕਰਨੀ ਪਿੱਛੋਂ ਜੇ ਪਾਣੀ ਬੰਦ ਹੋ ਗਿਆ ਤਿੰਨ ਘੰਟੇ ਬਾਅਦ ਬੰਦ ਹੋ ਜਾਣੀ ਵਪਾਰਕ ਸੰਦੇਸ਼ਕ ਹੋਰ ਲੈ ਲਈਏ ਜੀ 1:56 ਮਿੰਟ ਹੋਏ ਜੀ ਗ੍ਰੈਂਡ ਟਾਰ ਸਰੀ ਦਾ ਤਾਜ ਐ ਸਿੰਘ ਖਿਆੜਾ ਹਰਪਾਲ ਸਿੰਘ ਸੂਚ ਸੇਚਾ ਸਿੰਘ ਪੱਡਾ ਵੱਡੀ ਪਾਰਟੀ ਕੀਤੀ ਜਾਂਦੀ ਹੈ 84 ਤੇ 128 ਤੇ ਚੜ੍ਹਦੇ ਵਾਲੇ ਪਾਸੇ ਪੁਰਾਣਾ ਪਹਿਲਾ ਬੈਂਕ ਉਠਾਲ ਵਧੀਆ ਪਾਰਟੀ ਸੇਵਾ ਭਾਵਨਾ ਪੂਰੀ ਬਜਟ ਤੁਹਾਡਾ ਸੇਵਾਵਾਂ ਦੀ 604 612 84 84 604 592 43 42 ਮਹਿਕ ਰੈਸਟੋਰੈਂਟ 94 ਤੇ ਸਕਾਟ ਤੇ ਪੁਰਾਣੀ ਪੁਰਾਣੀ ਜਗਾ ਉਸੇ ਜਗਾ ਪਹਿਲਾ ਮਹਿਕ ਰੈਸਟੋਰੈਂਟ ਸੀ ਬਹੁਤ ਵਧੀਆ ਰੈਸਟੋਰੈਂਟ ਸੀ ਹੋ ਨਵੀਂ ਮੈਨੇਜਮੈਂਟ ਥੱਲੇ ਸੇਵਾ ਤੁਹਾਡੀ ਕਰਦੇ ਆ ਪੂਰੀ ਇੱਕ ਵਾਰ ਜਾ ਕੇ ਖਾਣਾ ਖਾ ਕੇ ਆਇਓ ਜਾਂ ਆਰਡਰ ਕਰਕੇ ਲੈ ਕੇ ਆਇਓ ਮੈਕ ਰੈਸਟੋਰੈਂਟ 604 585 3331 ਮੈਕ ਰੈਸਟੋਰੈਂਟ ਏਸੀ ਜੱਡਾ ਪ੍ਰੋਗਰਾਮ ਅ ਅਲੱਗ-ਅਲੱਗ ਮੁੱਦਿਆਂ ਤੇ ਆਪਾਂ ਗੱਲ ਕਰਦੇ ਆਂ ਪੰਜਾਬ ਵਾਟਰ ਵਾਟਰ ਦੇ ਨਾਲ ਕ੍ਰਾਈਸਿਸ ਇਹ ਕਮ ਸੇ ਕੱਲ-ਕੱਲਾ ਸੁਣਦਾ ਹੈ ਬਹੁਤ ਵੱਡੀ ਗਿਣਤੀ ਤੁਸੀਂ ਸੁਣਦੇ ਹੋ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਇਹਨੂੰ ਕਮ ਸੇ ਕਮ ਟਕੋ ਟਕਾਟਰ ਕਮ ਸੇ ਕਮ ਨਹੀਂ ਘਟੋ ਘਟ ਇੱਕ ਇੱਕ ਬੰਦੇ ਦੇ ਨਾਲ ਗਾਂ ਸ਼ੇਅਰ ਕੀਤਾ ਜਾਵੇ ਤੇ ਲੋਕ ਪੜਨ ਤਾਂ ਸਹੀ ਕਿ ਹੋਇਆ ਕੀ ਹੈ ਕਿਤਾਬਾਂ ਇੰਨੀਆਂ ਪੜਨ ਦੇ ਨਾਲੋਂ ਪੋਸਟਾਂ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਗੱਲ ਕੀ ਹੈ ਸਰਦ ਕਿਰਪਾ ਸਿੰਘ ਦਰਬੀ ਦੀ ਇੱਕ ਕਿਤਾਬ ਆ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਗੱਲ ਉਹ ਛੋਟੀ ਜੀ ਕਿਤਾਬ ਹੈ ਕੋ ਲਿਆ ਕੇ ਪੜ੍ਹੀ ਜਾ ਸਕਦੀ ਅਖੀਰ ਚ ਗੱਲ ਹਰਦੀਪ ਦਾ ਬਾਈ ਦਾ ਇੱਕ ਗੀਤ ਜਿਹਦੇ ਵਿੱਚ ਉਹਨਾਂ ਨੇ ਤਾਨਾ ਮਾਰਿਆ ਪੰਜਾਬ ਦੇ ਮੁੰਡਿਆਂ 'ਤੇ ਤੁਹਾਡੇ ਸਦਮੁਖ ਕੱਲ ਨੂੰ 11 ਵਜੇ ਫੇਰ ਮਿਲਦੇ